ਤੇਰਾ ਜੁਗ ਕੋਈ ਘਰ ਹੈ ਨਹੀਂਗਾ ਇਸ ਕਰਕੇ ਤੈਨੂੰ ਕਿਸੇ ਟੀਨਾ ਲਗਾਉ ਬਈ ਹੈ ਨਹੀਂ ਕਿਸੇ ਕੇ ਹੁੰਦਾ ਘਰ ਘਰ શરીર ਅਸਲ ਨਹੀਂ ਘਰ શરીર ਹੈ ਘਰਵੇਂ ਘਰ ਤਾਂ ਖਾਏ ਤੇ ਸੋਤ ਸਤਪੁਰ ਪੁਰ ਇਸ ਕਰਕੇ શરીર ਦਾ ਤੇਰਾ ਦਰਬੋਹ ਵੀ ਹੈ ਨਹੀਂ શરીર ਨਹੀਂ ਤਾਂ ਬੋਲੀ ਨਾ ਤੇ ਕੋਈ ਹੈ ਨਾ ਮੇਤਰੰਗ ਨ ਮੰਤਰੇ ਨਾ ਸ਼ੋਕ ਆ ਨਾ ਸ਼ੋਕੰ ਨਾ ਸਕਨ ਨਾ ਤੈਨੂੰ ਕੋਈ ਅਫਸੋਸ ਆ ਕਿਸੇ ਚੀਜ਼ ਦਾ ਨਾ ਕੋਈ ਰਿਸ਼ਤੇਦਾਰ ਆ ਤੇਰਾ ਇਹ ਜੋ ਸ਼ਰੀਰ ਵਾਲਾ ਸ਼ਰੀਰ ਵਾਲੇ ਦਾ ਸ਼ਰੀਰ ਵਾਲੇ ਰਿਸ਼ਤੇਦਾਰ ਹੂ ਮਨੁੱਖੀ ਬੰਦਗੀ ਤੋਂ ਪਰੇ ਸੰਸਾਰ ਤੋਂ ਵੀ ਪਰੇ ਰਹਿਣਾ ਸੰਸਾਰ ਤੋਂ ਪਰੇ ਆ ਪਵਿੱਤਰ ਪਵਿੱਤਰ ਕੀ ਪੁਨੀਤ ਹੈ ਪਵਿੱਤਰ ਪੁਨੀਤੰ ਪੁਦੇਤੰ ਪਵਿੱਤਰ ਤੋਂ ਵੀ ਅੱਗੇ ਹੈ ਪਵਿੱਤਰ ਤਾਂ ਹੈ ਹੈ ਉਹ ਤੋਂ ਪੁਨੀਤ ਹੈ ਪਰ ਪੁਨੀਤ ਹੁੰਦਾ ਜਿਹਨੂੰ ਕਲੰਕ ਨਹੀਂ ਲੱਗਦਾ ਪਵਿੱਤਰ ਹੁੰਦਾ ਜਿਹੜਾ ਪਹਿਲਾਂ ਮੈਲ ਸੀ ਧੋ ਜਿਹਨੇ ਮੈਲ ਧੋ ਪਵਿੱਤਰ ਹੋ ਗਿਆ ਪਵਿੱਤਰ ਹੁੰਦਾ ਜਿਹਦਾ ਇੱਕ ਹੋ ਗਿਆ ਤਾਂ ਪਵਿੱਤਰ ਹੋ ਗਿਆ ਇੱਕ ਹੋ ਗਿਆ ਜਾ ਇੱਕੋ ਕੇ ਉੱਗਿਆ ਆ ਨਾ ਜਿਹਦੇ ਅੰਦਰੋਂ ਗਿਆਨ ਪੈਦਾ ਹੋਣ ਲੱਗਿਆ ਉਹ ਬਣੀ ਤੋ ਜਿੰਨਾ ਜਿਹੜਾ ਅੰਦਰੋਂ ਗਿਆਨ ਨਹੀਂ ਪੈਦਾ ਹੁੰਦਾ ਉਹ ਨਾਲ ਜਦ ਕਿਸੇ ਬਾਹਰ ਲੈ ਜਾਂਦਾ ਸਭ ਹੋ ਸਕਦਾ ਜਿਵੇਂ ਚੰਦਰੋਂ ਪਰਗਟ ਹੁੰਦਾ ਫਿਰ ਵਾਰ ਲੈਦਾ ਸਰਦੀ ਹੁੰਦਾ ਝੂੜਦਾ ਫਿਰ ਦੀ ਹਸਨ ਹੁੰਦਾ ਤੇ ਜਿੰਨਾ ਜਿਹੜਾ ਆਪਣੇ ਅੰਦਰੋਂ ਗਿਆਨ ਨਹੀਂ ਪੈਦਾ ਹੁੰਦਾ ਸੱਚ ਨਹੀਂ ਆਪਣੇ ਅੰਦਰੋਂ ਸੱਚ ਨਹੀਂ ਪੈਦਾ ਹੁੰਦਾ ਉਹ ਨਾਲ ਜਰ ਕਿਸੇ ਡੁਪਲੀਕੇਟ ਸੱਚ ਦਾ ਕਿਸੇ ਹੋਰ ਸੱਚ ਨੂੰ ਘਟਿਆ ਸੱਚ ਨੂੰ ਸੱਚ ਮੰਨ ਸਕਦਾ ਘਟਿਆ ਸੱਚ ਨੂੰ ਵੀ ਸੱਚ ਮੰਨ ਸਕਦਾ ਜਾਂ ਪਿਓਰ ਸੱਚ ਆਪਣੇ ਅੰਦਰੋਂ ਪੈਦਾ ਹੁੰਦਾ ਫਿਰ ਘਟਿਆ ਦਾ ਅਸਰ ਨਹੀਂ ਹੁੰਦਾ ਇਸ ਕਰਕੇ ਉਹ ਬਣ ਜਾਂਦਾ ਫਿਰ ਫਿਰ ਉਹਨਾਂ ਦਾ ਦੇ ਕਲੰਕ ਤੇਰੇ ਉੱਤੇ ਕੋਈ ਨਿਗਾਹ ਵੀ ਨਹੀਂ ਰੱਖ ਰਿਹਾ ਕਿਸੇ ਦੀ ਦੇਖ ਰੱਖ ਦੇ ਵਿੱਚ ਨਹੀਂ ਤੂੰ ਚੱਲ ਰਿਹਾ ਤੇਰੇ ਉੱਤੇ ਕੋਈ ਲਗਿਆ ਨਹੀਂ ਹੋਇਆ ਹੋਰ ਤੈਨੂੰ ਵਾਸਤੇ ਤੇਰੇ ਵਾਸਤੇ ਕੱਢਣ ਵਾਸਤੇ ਨਾ ਨ ਮਿੱਤਰੰਗ ਨ ਮੰਤਰੇ ਨਾ ਸਰੀਰ ਤੇਰਾ ਨਾ ਤੇਰਾ ਕੋਈ ਗੋਜ ਜਾਤ ਹੈ ਸੁਝਾ ਲਈ ਨ ਮਿੱਤਰੰਗ ਨ ਮੰਤਰੇ ਨ ਬਿੱਤਰਾ ਕੋਈ ਤੇਰਾ ਨਾਂ ਤਾਂ ਹੈ ਕਿਸਨਾਂ ਸਲਾਹ ਕਰਨੀ ਹੈ ਬਿੱਤਰ ਨਾ ਸਲਾਹ ਦੇਈ ਦੀ ਨਾ ਨਾ ਬਿੱਤਰ ਨਾ ਕੋਈ ਮੰਤਰੀ ਹੈ ਜਿਹੜਾ ਸਲਾਹ ਕਰਨ ਵਾਲਾ ਬੁੱਤਰ ਕਰਨਾ ਸਲਾਹ ਕਰਨ ਨੂੰ ਹੈ ਨਾ ਬੁੱਤਰੀ ਵੀ ਸਲਾਹ ਦਾਈ ਨਾ ਹੁੰਦਾ ਮੰਤਰੀ ਸਲਾਹ مشورہ ਕਰਦੇ ਹਸੀਂ ਨਮੋ ਇੱਕ ਤੰਤਰੇ ਨਮੋ ਇੱਕ ਤੰਤਰੇ ਨਮੋ ਇੱਕ ਤੰਤਰੇ ਨਮੋ ਇੱਕ ਤੂੰ ਇੱਕ ਆਂ ਔਰ ਤਰਿਆ ਹੋਇਆ ਤਾਨਾ ਤੇਰਾ ਤੇਰਾ ਜਿਹੜਾ ਸਰੀਰ ਦੇਹੀ ਅਦੂ ਹਮੇਸ਼ਾ ਮਾਇਆ ਤੋਂ ਪਰਾਂਦੀ ਹੈ ਤੰਤਰੇ ਤਰੇ ਹੋਏ ਤਰਵਣ ਦੁਬਿਆ ਜਿਹੜੀ ਜਿਹੜੀ ਤੇਰਾ ਕੱਤੇ ਵੀ ਮਾਇਆ ਚ ਪੈਦਾ ਨਹੀਂ ਹੈ ਤੂੰ ਉੱਪਰ ਆਣ ਮਾਇਆ ਤੋਂ ਉੱਠ ਕੇ ਹੋਵੇ ਮਾਇਆ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਲਿਪਤ ਰਹਿਣਾ ਉੱਪਰ ਰਹਿਣਾ ਨਾ ਧਰਮੰਗ ਨਾ ਭਰਮੰਗ ਨਾ ਸ਼ਰਮੰਗ ਨਾ ਸਾਕੇ ਕਿਉਂਕਿ ਤੇਰੇ ਅੰਦਰ ਭਰਮ ਕੋਈ ਨਹੀਂ ਇਸ ਕਰਕੇ ਤੈਨੂੰ ਧਰਮ ਦੀ ਲੋੜ ਨਹੀਂ ਨਾ ਧਰਮੰਗ ਨਾ ਭਰਮੰਗ ਜੇ ਭਰਮ ਹੈ ਤਾਂ ਧਰਮ ਦੀ ਲੋੜ ਹੈ ਜੇ ਭਰਮੇ ਕੋਈ ਨਹੀਂ ਧਰਮ ਦੀ ਕੀ ਲੋੜ ਹੈਗੀ ਜਿਹਰਾਂ ਦੇ ਮਨ ਵਿੱਚ ਭਰਮ ਹੈ ਉਹਨਾਂ ਨੂੰ ਧਰਮ ਦੀ ਲੋੜ ਹੈ ਭਰਮ ਦਾ ਇਲਾਜ ਹੈ ਧਰਮ ਹੋਰ ਕੁਝ ਨਹੀਂ ਹੈ ਉਹ ਭਰਮ ਦਾ ਇਲਾਜ ਦਾ ਧਰਮ ਜਿੱਥੇ ਭਰਮ ਹੈ ਨਹੀਂ ਉੱਥੇ ਧਰਮ ਵੀ ਹੈ ਜੀ ਜਦੋਂ ਪਰਮ ਰਹਤ ਹੋ ਜਾਂਦਾ ਫਿਰ ਸਾਰੇ ਧਰਮ ਇੱਕ ਹੋ ਜਾਂਦੇ ਨੇ ਪਹਿਲਾਂ ਆਪਣਾ ਧਰਮ ਚੰਗਾ ਲੱਗਦਾ ਹੁੰਦਾ ਦੂਏ ਜਿੱਦੇ ਲਈ ਲੱਗਦੇ ਪਰਮੰਦਰ ਹਾਂ ਜਿੱਨਾ ਜਰ ਪਰਮਾ ਆਪਣਾ ਧਰਮ ਚੰਗਾ ਹੁੰਦਾ ਜਿਹੜਾ ਜਿਵੇਂ ਚੰਗਾ ਵਾਲਾ ਹੈ ਹੈ ਪਰ ਉਹਨੂੰ ਸਭ ਤੋਂ ਹੀ ਚੰਗਾ ਲੱਗਦਾ ਹੁੰਦਾ ਉਹ ਮੰਨਣ ਵਾਲੇ ਨੂੰ ਉਹਦੇ ਦੇਸੀ ਦੀ ਵਧੀਆ ਹੁੰਦਾ ਜਦ ਪਰਮ ਰਹਤ ਹੋ ਜਾਂਦਾ ਫਿਰ ਸਾਰੇ ਇੱਕ ਹੋ ਜਾਂਦੇ ਨੇ ਤਰ ਖੜੀਆ ਵਧੀਆ ਬਾਬੇ ਹੁੰਦੇ ਨੇ ਖੜੀਆ ਵਧੀਆ ਜਾਂ ਮੈਨੂੰ ਪਤਾ ਹੁੰਦਾ ਵੀ ਆ ਖੜੀਆ ਵਧੀਆ ਪਰ ਆ ਤਾਂ ਉਹਦੋਂ ਮੇਰੇ ਰਹੇ ਨੇ ਸਾਰੇ ਕੋਈ 10 ਗੱਲਾਂ ਪਿੱਛੇ ਆ ਰਿਹਾ ਕੋਈ 10 ਗੱਲਾਂ ਅੱਗੇ ਜਾ ਰਿਹਾ ਲੈਨ ਤੇ ਕੁਝ ਲੱਗੇ ਹੋਏ ਨੇ ਨਾ ਜਾਂ ਤਾਂ ਉਹਦੋਂ ਮੇਰੇ ਰਹੇ ਨੇ ਸਾਡੇ ਧਰਮ ਇਹ ਜਾਂ ਕੋਈ 10 ਗੱਲਾਂ ਪਿੱਛੇ ਕੋਈ 10 ਗੱਲਾਂ ਅੱਗੇ ਉਸੇ ਤੇ ਹੀ ਫਰਕ ਹੈ ਫਿਰ ਕੋਈ ਸਾਰੇ ਦੋਗੇ ਅਸਲ ਵਿੱਚ ਹੁਣ ਤੇ ਦੇਖਿਆ ਜਾਵੇ ਜਿਹੜਾ ਆਦਰ ਹੈਗਾ ਸਿੱਖੀ ਹੈ ਇਹ ਲੀਡ ਕਰਦੀ ਹੈ ਸਾਰਿਆਂ ਨੂੰ ਇਹ ਅੱਗੇ ਲਗੀ ਇਹ ਤਾਂ ਮਤਰੇ ਨਹੀਂ ਸੀ ਕਿ ਸਾਰੇ ਲੋਕੇ ਨੇ ਸਿੱਖੀ ਦਾ ਨਾਲ ਲੋਕੇ ਸਿੱਖ ਦਾ ਘਾਨੀ ਦੋਹਰਾਂ ਵੀ ਬਹੁਤ ਪਿੱਛੇ ਨੇ ਉਹ ਤਾਂ ਮੰਨਣ ਤੇ ਐਡਵਾਂਸ ਕਰਦਾ ਉਹ ਸਿੱਖ ਕੀ ਬੰਦਾ ਕੀ ਨਹੀਂ ਬੰਦਾ ਸਿੱਖੀ ਦਾ ਨਾਲ ਲੋਕੇ ਇਹ ਵਿਚਾਰਧਾਰਾ ਅੱਗੇ ਹੈ ਲੀਡ ਕਰਦੀ ਹੈ ਇਹਨੂੰ ਮੰਨਣ ਵਾਲਾ ਅੱਗੇ ਜਾਏ ਕੋਈ ਹੋਵੇ ਮੁਸਲਮਾਨ ਹਿੰਦੂ ਕੋਈ ਇਹ ਨਹੀਂ ਕੋਈ ਮਤਲਬ ਇਹ ਧਰਮ ਉਹ ਦੇ ਇਸ ਕੀ ਲੀਡ ਕਰੂਗੇ ਇਹਦੇ ਸਾਰੇ ਪਿਛਲੇ ਰੁਕਸ ਦੂਰ ਪਿਛਲੇ ਹੰਦਲਤੀਆਂ ਜਿਹੜੀਆਂ ਨੇ ਸਾਰੇ ਉਹ ਵਿੱਚ ਹੈ ਨਹੀਂ ਕੁਝ ਵੀ ਇਹ ਭਰਮ ਦਾ ਨਾਸ ਕਰਨ ਦਾ ਸਬਰਥ ਬਾਕੀ ਕੋਈ ਹੋਰ ਧਰਮ ਭਰਮ ਦਾ ਨਾਸ ਕਰਨ ਦਾ ਸਬਰਥ ਨਹੀਂ ਪਰ ਉਹ ਦਾ ਨਾਸ ਕਰਨ ਦਾ ਸਬਰਥ ਕਿਉਂ ਕਿ ਕਿਉਂਕਿ ਜਤਮ ਉਹ ਫੇਰ ਪਰਪੜਹਿ ਗਿਆ ਆਤਮਾ ਬਾਰੇ ਆਤਮਾ ਬਾਰੇ ਪਰਮੇਥੀ ਅਗੀ ਚਖੂ ਆਤਮਾ ਬਾਰੇ ਪਰ ਰਹਿ ਜੂਗਾ ਹੋਰ ਜਿਨੇ ਵੀ ਧਰਮ ਨੇ ਸਾਰੇ ਚ ਕੋਈ ਨਹੀਂ ਹੈ ਤੇ ਫਿਰ ਉਹ ਸ਼ਰਮ ਕੀ ਕਰਨੀ ਉਹ ਚ ਕਰਨਾ ਕਰਮ ਕਾਢ ਕੀ ਕਰਨਾ ਜਬ ਤੱਕ ਕੀ ਕਰਨਾ ਸਰਵਖੰਡ ਕੀ ਬਾਣੀ ਹੈ ਨਾ ਉਸ ਕਿਸੇ ਮਾਂ ਤੋਂ ਦੀ ਲੋੜ ਨਹੀਂ ਧਰਮ ਦਾ ਕਰਮ ਕਿਸੇ ਧਰਮ ਤੇ ਕਰਮ ਦੀ ਲੋੜ ਹੀ ਨਹੀਂ ਦੱਸ ਆਕੇ ਦੱਸ ਹੈ ਕਿਸੇ ਜਾਂ ਆ ਕਿਸੇ ਜਾਂ ਕੋਈ ਸੁਭਦੀ ਹੋ ਸਾਖ ਹੈ ਨਹੀਂ ਖਾਤਰ ਵੀ ਨਹੀਂ ਕਰਨ ਦੀ ਲੋੜ ਨਾ ਬਰਮ ਨਾ ਚਰਮ ਨਾ ਕਰਮ ਨਾ ਵਾਕੇ ਨਾ ਬਰਮ ਨਾ ਚਰਮ ਜਾਦ ਸਰੀਰ ਇਹ ਹੈ ਨਹੀਂ ਚਰਮ ਹੈ ਰੀ ਇਹ ਚਰਮ ਢਾਲ ਲੂਂਦੇ ਸਰੀਰ ਹੁੰਦਾ ਆ ਜਿਹੜਾ ਸਰੀਰ ਚੰਬ ਦਾ ਨਾ ਇਹ ਚਰਮ ਹੈ ਤੇ ਚਰਮ ਹੈ ਨਹੀਂ ਸਰੀਰ ਹੈ ਤਾਂ ਉਹਨੇ ਜੀ ਸਰਾਖੇ ਮੇ ਹੋਜੂ ਬਰਮਗੇ ਮੇ ਹੋਜੂ ਬਰਮਗ ਤਾਂ ਨਹੀਂ ਹੁੰਦਾ ਉਹਦੇ ਸਰੀਰ ਹੈ ਜੀ ਸਰੀਰ ਹੈ ਜੀ ਤੁਸੀਂ ਸਰਾਖ ਕਰਨ ਇਹਨਾਂ ਬਰਮਦਾ ਕਰਤਾ ਸਜੋ ਚਰਮ ਦਾ ਕਰਤਾ ਢਾਲ ਲੋਟੀ ਜਾਂ ਲੋੜ ਦੇ ਕਰਦੀ ਹੁਣ ਇਹਦਾ ਕਾਰਨ ਨਾ ਕਿ ਉਹ ਜੁੜ ਗਿਆ ਉਹ ਫਾਇਰਲ ਜੁੜ ਗਿਆ ਜਾ ਕੇ ਚੱਡੀ ਦੀਵਾਰ ਦੀ ਲੜਾਈ ਨਾਲ ਜੁੜ ਗਿਆ ਇੱਥੇ ਆ ਕੇ ਕੀ ਕਰੋ ਕੋਈ ਇੱਥੇ ਤਾਂ ਲੜਾਈ ਹੈ ਨਹੀਂ ਇਹ ਤਾਂ ਪਰਮਿਸ਼ਨ ਦੀ ਗੱਲ ਹੈ ਉੱਥੇ ਤਾਂ ਲੈ ਕੇ ਚੱਲੇ ਸੀ ਸਰੀਰ ਨੂੰ ਇੱਥੇ ਸਰੀਰ ਉਹ ਨਾਲ ਜਿਹੜਾ ਵਰਮਚਰ ਦੇ ਹੱਥੋਂ ਤੇ ਤਾਂ ਬਦਲੇ ਸੀ ਇੱਥੇ ਬਦਲੇ ਹੋਏ ਇੱਥੇ ਕੀ ਕਰੋਗੇ ਇੱਥੇ ਲੜਾਈ ਹੈ ਨਹੀਂ ਇਹ ਕੋਈ ਜ਼ਬੀਰ ਨਹੀਂ ਜਦ ਨਰਾਕਾਰ ਨਹੀਂ ਗੱਲ ਹੈ ਉੱਥੇ ਲੜਾਈ ਤਾਂ ਹੈ ਉਹ ਉਹ ਲੜਾਈ ਤਾਂ ਇੱਥੇ ਵੀ ਆਊਗੀ ਹੁਣ ਕੀ ਹੁੰਦੀ ਆ ਹਾਂ ਨਾ ਬਰਮੰਗ ਨਾ ਚਰਮੰਗ ਨਾ ਕਰਮੰਗ ਨਾ ਵਾਕੇ ਨਾ ਕੋਈ ਕਰਮ ਹੈ ਤੇ ਸਰੀਰ ਨਹੀਂ ਕਰਮ ਦਾ ਬਸੁਰ ਵੀ ਨਹੀਂ ਨਾ ਕੋਈ ਕਰਮ ਨਾਲ ਜੁੜਿਆ ਹੋਇਆ ਕਰਮੰਗ ਨਾ ਵਾਕੇ ਜੁੜਿਆ ਹੋਇਆ ਹੈ ਹੋਇਆ ਹੈ ਨਾ ਬੰਧਣਾ ਕੋਈ ਨਾ ਕਰਮਾ ਨਾ ਛਤਰੰਗ ਨਾ ਮਿੱਤਰੰਗ ਨਾ ਪੁੱਤਰੰਗ ਸਰੂਪੇ ਨਾ ਕੋਈ ਸ਼ਤਰੂ ਆ ਨਾ ਕੋਈ ਮਿੱਤਰ ਹੈ ਨਾ ਪੁੱਤਰ ਨਾ ਕੋਈ ਪੁੱਤਰ ਸਰੂਪ ਹੈ ਪੁੱਤਰ ਸਰੂਪ ਵੀ ਕੋਈ ਨਹੀਂ ਹੈ ਇੱਥੇ ਨਾ ਕੋਈ ਕਿਸੇ ਦਾ ਪੁੱਤਰਾ ਨਾ ਧੀ ਹੈ ਉਹ ਤਾਂ ਆਇਆ ਲੈਵਲ ਕੋਈ ਪੁੱਤਰ ਸਰੂਪ ਹੋ ਗਈ ਆਤਮਾ ਲੈਵਲ ਦੀ ਗੱਲ ਚੱਲਦੀ ਹੈ ਨਾ ਕੋਈ ਪੁੱਤਰਾ ਕਿਸੇ ਦਾ ਕੋਈ ਕਿਸੇ ਤੋਂ ਪੈਦਾ ਨਹੀਂ ਹੋਇਆ ਆਇਆ ਆਪਣੇ ਬੂੜ ਚੋਂ ਆ ਬੜਕੜਿਆ ਹੋਇਆ ਆਪਣੇ ਬੂੜ ਨੂੰ ਕਹ ਤੋ ਮੇਰਾ ਬਤਾ ਤੂੰ ਮੇਰਾ ਮਾਤਾ ਤੇ ਆਪਣਾ ਬਾਪ ਆਪ ਹੀ ਆ ਪਿਆ ਹੈ ਇਹ ਆਪੇ কুরਚੇ ਲਾਇਆ ਚੇਲਾ ਕਹਣ ਹੁੰਦਾ ਚੇਲਾ ਵਿੱਚੋਂ ਚੇਲਾ ਪੁੱਤਰ ਪੁੱਤਰ ਬਰਾਬਰ ਹੁੰਦਾ ਚੇਲਾ ਬਣ ਗੁਰ ਜਿਹੜਾ ਹੈਗਾ ਜੀ ਤੋਂ ਪੈਦਾ ਹੋਇਆ ਹੈ ਨਮੋ ਆਦ ਰੂਪੇ ਨਮੋ ਆਦ ਰੂਪੇ ਨਮੋ ਆਦ ਰੂਪੇ ਨਮੋ ਆਦ ਰੂਪੇ ਹੁਣ ਆਦ ਰੂਪੇ ਆਇਆ ਇੱਥੇ ਉੱਤੇ ਨਮੋ 1 ਰੁਪਏ ਆਇਆ ਸੀ ਇਥੇ ਨਮੋ ਆਧ ਰੂਪ ਹੈ ਪਰ ਨਮੋ ਇੱਕ ਰੁਪਏ ਨਮੋ ਇੱਕ ਰੁਪਏ ਇਥੇ ਨਮੋ ਆਧ ਰੂਪ ਉਹ ਨਮੋ ਇੱਕ ਰੁਪਏ ਸੀ ਉਹ ਦੂਆ ਰੂਪਾ ਤਾਂ ਹੋਇਆ ਹੀ ਨਹੀਂ ਤਾਂ ਦੂਆ ਰੂਪ ਇਹ ਆਦ ਰੂਪ ਹੈ ਇਹ ਆਦ ਰੂਪੇ ਹੋਰ ਚੀਜ਼ ਹੈ ਇੱਕ ਰੁਪਏ ਮੇਰੇ ਇੱਕ ਆਦ ਰੂਪੇ ਦੋ ਰੂਪ ਹੋ ਗਏ ਇੱਕ ਸ੍ਰਿਸ਼ਟੀ ਜਦ ਪੈਦਾ ਹੋਈ ਹੈ ਉਦੋਂ ਰੂਪ ਹੋਇਆ ਇੱਕੋ ਸੱਚ ਕਰਨ ਵਾਲਾ ਰੂਪ ਲੱਗ ਸੀ ਉਹ ਇਹਦਾ ਨਾ ਆਦ ਰੂਪੇ ਲੱਗਿਆ ਇੱਕ ਰੂਪੇ ਨਹੀਂ ਲੱਗਿਆ ਆਦ ਰੂਪੇ ਦਾ ਦੋ ਰੂਪ ਨੇ ਇੱਕ ਰੂਪੇ ਐ ਇੱਕ ਰੂਪ ਐ ਇਹ ਆਦ ਰੂਪੇ ਐ ਸ੍ਰਿਸ਼ਟੀ ਤੇੜ ਪੈ ਤਾਂ ਹੀ ਸ੍ਰਿਸ਼ਟੀ ਪੈਦਾ ਹੋਈ ਜੇ ਤੇੜਾ ਨਾ ਪੈਦੀ ਤਾਂ ਸ੍ਰਿਸ਼ਟੀ ਕਿਵੇਂ ਪੈਦਾ ਹੁੰਦੀ ਆਧ ਰੂਪੇ ਦਾ ਉਹ ਤੇੜਿਆ ਹੋਇਆ ਜਿਹੜਾ ਸੀ ਨੋ ਤੇੜੜ ਪੈ ਗਈ ਸੀ ਉਹ ਕਾਰਨ ਆ ਸ੍ਰਿਸ਼ਟੀ ਦਾ ਆਧ ਰੂਪੇ ਉਹ ਜਿਹੜਾ ਰੂਪ ਹੈ ਉਹ ਪਹਿਲਾ ਰੂਪ ਹੈ ਜਿਹੜਾ ਪਗੜਿਆ ਹੋਇਆ ਤੇੜ ਪੈਣ ਵਾਲਾ ਫਿਰ ਦੂਆ ਰੂਪ ਕੀ ਹੈ ਦੂਆ ਰੂਪ ਗਰਵਾਲਾ ਅਰਦਵਾਲਾ ਤਿਆਰੂਪ ਕੀਆ ਤਿਆ ਫੇਰ ਇੱਕ ਰੂਪ ਹੈ ਫੇਰ ਇੱਕ ਹੋ ਗਿਆ ਦੂਤੀ ਅਰਧ ਅਰਧ ਸਮਾਨਾ ਇੱਕ ਰਹਿਆ ਤਾਂ ਇੱਕ ਹੋ ਜਾਂਦਾ ਪਰ ਜਦ ਇੱਕ ਫੇਰ ਹੁੰਦਾ ਫੇਰ ਤੇੜ ਨਹੀਂ ਰਹਿੰਦੀ ਜਦ ਫੇਰ ਕੋ ਨਾ ਦੂਈ ਵਾਰ ਤੇੜ ਵੀ ਕ ਤੇੜ ਤੋਂ ਖਰਬ ਆ ਗਿਆ ਅਸਲੀ ਦੋ ਟੁਕੜੇ ਹੋ ਗਏ ਜਿਦੋਂ ਤੇੜਾ ਹਥੋਂ ਅੱਡੇ ਹੋ ਗਿਆ ਜਿਵੇਂ ਭੱਲ ਕੇ ਜੋੜੀ ਲਾ ਕਿਸੇ ਚੀਜ਼ ਨੂੰ ਤੇੜ ਦੇ ਦੋ ਬਣਾ ਲਏ ਦੋ ਤੇ ਫਿਰ ਇੱਕ ਬਣਾ ਲਿਆ ਤੇੜ ਵੀ ਬਿਢੀ ਜਾਂ ਇੱਕ ਬਣਾ ਲਿਆ ਫਿਰ ਤੇੜ ਨਹੀਂ ਰਹੀ ਫਿਰ ਉਹ ਤੇੜ ਸੀ ਦੁਬਾਰਾ ਇੱਕ ਬਣਾ ਲਿਆ ਤਾਂ ਖਜ਼ਾਨੇ ਪੈ ਤੇੜ ਕਰਕੇ ਖਜ਼ਾਨੇ ਚ ਆਇਆ ਸੀ ਤੇੜ ਬਟਾ ਕੇ ਖਜ਼ਾਨੇ ਚ ਪੇ ਆਇਆ ਵੀ ਇੱਕੇ ਸੀ ਗਿਆ ਵੀ ਇੱਕੇ ਸੁਣ ਲਈ ਪਰ ਲਕੀਰ ਪੈ ਗਈ ਸੀ ਵਿੱਚ ਉਹ ਲਕੀਰ ਖਤਮ ਕੀਤੀ ਇੱਥੇ ਏ ਗਰੂਪੇ ਇੱਕ ਰੁਪਇਆ ਲਕੀਰ ਪੈ ਗਈ ਸੀ ਭਰਮ ਦੀ ਲਕੀਰ ਪੈ ਗਈ ਇੱਕ ਰੁਪਾ ਹੋ ਗਿਆ ਵਖਰਾ ਰੁਪਾ ਹੋ ਗਿਆ ਨਾ ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ਦੇਖੋ ਜਦੋਂ ਤੇੜ ਪੈ ਗਈ ਸਰੀਰ ਚ ਆ ਗਿਆ ਟਿਕੇ ਟਿਕੇ ਗੱਲ ਸ਼ੁਰੂ ਹੋ ਗਈ ਹੁਣ ਇਹ ਭਰਮ ਢੂਲੇ ਆਇਆ ਭਰਮ ਢੂਲੇ ਆ ਮਤਲਬ ਆਇਆ ਜੈ ਉੱਪਰੋਂ ਆਇਆ ਜ ਨਹੀਂ ਦਿਖਾਇਆ ਹੈ ਉਪਲੈ ਕੋ ਹੈ ਰਖਾਇਆ ਸ੍ਰਿਸ਼ਟੀ ਜੋ ਜਿਹੜਾ ਇੱਕ ਹੋ ਗਿਆ ਨਾ ਸ੍ਰਿਸ਼ਟੀ ਦੇ ਵਿੱਚੇ ਹੀ ਇੱਕ ਹੋ ਗਿਆ ਜਿਹੜਾ ਇਹ ਘਰ ਆਇਆ ਜਿਹੜਾ ਗਿਆ ਹੈ ਘਰ ਇੱਕ ਹੋ ਕੇ ਜਿਹਦੇ ਵਾਸਤੇ ਜੈਜਾਕਾਰ ਹੋ ਰਹੀ ਹੈ ਜਿਹੜਾ ਜਿੱਤ ਕੇ ਆਇਆ ਯਕਨ ਸਤ ਕਿਉਂ ਰੋਏ ਜੋਗ ਰਹੇ ਆਪਣੇ ਜਾਏ ਜਿਹੜਾ ਆਪਣੇ ਘਰ ਨੂੰ ਗਿਆ ਤਾਂ ਉਹਦੀ ਗੱਲ ਹੈ ਇੱਕ ਤਾਂ ਉਹਦੀ ਗੱਲ ਹੈ ਪਹਿਲਾਂ ਜਦੋਂ ਸਰੀਰ ਤੇ ਹੁੰਦਾ ਜਗੜਾ ਕੋਰਸ ਤੇ ਦਰ ਹੁੰਦਾ ਉਹਦੇ ਜਾਦਵੀ ਇਹੀ ਗੁਣ ਨੇ ਜਿਹੜੇ ਉੱਤੇ ਆ ਗਏ ਉਹਦੇ ਗੁਣੇ ਇਹੀ ਹੁੰਦੇ ਸਾਰੇ ਉਹ ਸਰੀਰ ਤੇ ਰਹਿੰਦਾ ਜੀ ਵੀ ਉਹੀ ਗੁਣ ਨੇ ਸਰੀਰ ਤੇ ਬਿਨਾਂ ਵੀ ਉਹੀ ਗੁਣ ਨੇ ਉਹ ਤਾਂ ਕੋਣੋ ਦੇ ਸੁਭਾਅ ਦੇ ਨੇ ਕਹੂੰ ਇੱਕ ਤੀਜਾ ਹੋਂ ਰੂਪ ਹੈ ਹੋਰ ਇਹ ਧਾਰਮਿਕ ਬੰਦੇ ਦਾ ਰੂਪ ਹੈ ਕਹੂੰ ਕਾਜ ਕੇ ਮੰਜ ਕੇ ਪਰਮ ਭੂਲੇ ਮੰਜ ਕੇ ਪਰਭੂਲੇ ਅਕਾਲ ਜੀ ਸਰੀਰ ਹੈ ਨਾ ਸਭ ਦੀ ਅਕਾਲ ਨਹੀਂ ਹੁੰਦੀ ਇਹ ਨੂੰ ਵੰਜਣ ਲੱਗਿਆ ਹੋਇਆ ਇਹ ਦੇ ਪਰਮਜੇ ਭੁੱਲੇ ਬਸ ਸ਼ਰੀਰ ਨੂੰ ਬਵਿੱਤਰ ਕਰੀ ਜਾਂਦਾ ਧੋਤੀ ਅੰਦਰੋਂ ਵੀ ਦੇ ਭਾਰੋਂ ਵੀ ਕਰਦਾ ਤਾਂ ਧਰਮ ਹੈ ਕਾਇਆ ਵੰਜਣ ਲੱਗਿਆ ਹੈ ਸ਼ਰੀਰ ਵੰਜਣ ਲੱਗਿਆ ਹੋਇਆ ਸੇਲ ਦੀ ਸ਼ੁੱਧੀ ਕਰਨ ਦੇ ਵਿੱਚ ਇਹ ਬੰਦੀ ਸ਼ੁੱਧੀ ਸਮਝ ਰਿਹਾ ਹੈ ਪਰਮਾਸਤ ਹੈ ਤੇ ਪੂਰਾ ਸਤੋਜਾ ਵੀ ਮੈਂ ਕੁਝ ਕਰ ਰਿਹਾ ਪਰ ਮਰ ਭੁੱਲੇ ਜੇ ਕੋਈ ਹਟਾਉਂਦਾ ਤਾਂ ਉਹ ਗੁੱਸਾ ਵੀ ਲੱਗਦਾ ਤੇ ਉਹ ਬੁਰਾ ਵੀ ਲੱਗਦਾ আর ਉਹਦੇ ਨਾਲ ਗੁੱਸੇ ਵੀ ਹੁੰਦਾ ਬੁਰਾ ਲੱਗਦਾ ਅਰ ਉਹਨੂੰ ਭੱਜ ਕੇ ਵੀ ਪੈਂਦਾ ਉਹਦੇ 'ਚ ਮਸਤ ਹੈ ਹੁਣ ਕੰਝ ਕੇ ਮੰਜ ਕੇ ਪਰਮਭੁੱਲੇ ਪਰਮਭੁੱਲੇ ਹਾਲਾਂਕਿ ਪਰਮਭੁੱਲੇ ਨੇ ਕਿਹਾ ਮਿਲਣਾ ਉਹਨੂੰ ਤਾਂ ਕੁਝ ਨਹੀਂ ਹੈ ਪਰ ਉਹ ਸੰਤੋਸ਼ ਠਾਹ ਉਹ ਕਨਾਂ ਮਾਤਾ ਤਰਫ ਦਾ ਖੰਭ ਕਰ ਰਹੇ। ਕਸਦਾਉ ਬਿਲਕੁਲ। ਧਰਮ ਦੇ ਨਾਲ ਐਸਾ ਫਿਰ ਹੋਇਆ ਹਾਂ ਆ ਰਾਜੇ ਵੀ ਹੋਏ ਨਾ ਪ੍ਰਭੂ ਗਿਆਨੀ। ਆਪਣੇ ਭਗਤ ਵੀ ਹੋਏ ਨੇ ਉਹ ਸੰਸਾਰੀ ਤੌਰ ਤੇ ਧਰਮ ਕੇ ਦੀ ਸੰਸਾਰੀ ਰਾਜ ਰੰਗ ਦੀ ਗੱਲ ਹੈ ਨਾ ਚਾਹੇ ਗਰੀਬ ਹੈ ਸੰਸਾਰ ਦੇ ਵਿੱਚ ਚਾਹੇ ਰਾਜਾ ਧਰਮ ਦੇ ਨਾਲ ਐ ਕੇ ਪੇਸ ਕੇ ਧਰਮ ਧਾਮ ਹੈ ਕਿਤੇ ਦੇਸ ਦਾ ਜਿਹੜਾ ਪੇਸ ਹੈ ਜੋ ਆਪਣੇ ਸਿਖਾਣਾ ਪੇਸ ਆ ਲੱਗਾ ਉਥਲ ਬਾਨਾ ਦਾ ਲੱਗਾ ਹੈ ਹੋਰ ਬੋਧੀਆਂ ਦਾ ਲੱਗਾ ਹੈ ਉਹਦੇ ਦਾ ਰਪੇ ਰਾ ਧਰਮ ਉਹਦੇ ਦਾ ਧਰਮਰ ਭੇਖ ਹੈ ਉਹਦੇ ਨਾਲ ਹੀ ਬਾਤ ਉਹਦੇ ਚ ਰਚੇ ਵਿਚਿਆ ਹੋਇਆ ਧਰਮ ਧਾਮ ਹੈ ਉਹਦੇ ਧਰਮ ਧਾਮ ਦੇ ਵਿੱਚ ਅਰੰਧਾ ਉੱਥੇ ਹੀ ਆਪਣਾ ਕਹਿੰਦੇ ਹਾਲ ਹੀ ਧਰਮ ਕਾ ਦੂਜੀ ਯਾਨੀ ਤਸੱਲੀ ਹੈ ਦੀ ਉੱਥੇ ਠੀਕ ਹੈ ਮੈਂ ਠੀਕ ਲਾਈਨ ਤਿਰੂ ਜਾ ਰਹੇ ਚਾਹੇ ਉਹ ਪ੍ਰਾਪਤੀ ਹੋਵੇ ਨਾ ਹੋਵੇ ਪਰ ਉੱਥੇ ਇਹਨੂੰ ਨਹੀਂ ਪਤਾ ਹੈਗਾ ਵੀ ਮੈਂ ਨੂੰ ਮਿਲ ਨਹੀਂ ਰਿਹਾ ਇਹ ਉਹਦੇ ਧਰਮ ਧਾਮ ਦੇ ਵਿੱਚ ਖੇਲੀ ਜਾਂਦਾ ਉੱਥੇ ਸੰਤੋਸ਼ਤਾ ਸੰਤੋਸ਼ਤਾ ਜਿਹੜਾ ਸੰਤੋਸ਼ ਨਹੀਂ ਹੁੰਦਾ ਉੱਥੇ ਰਹਿੰਦਾ ਨਹੀਂ ਫਿਰ ਤਖਦਾ ਨਹੀਂ ਜੇ ਸੰਤੋਸ਼ ਨਹੀਂ ਜਾਂਦਾ ਫਿਰ ਹੋਰ ਤੋਂ ਫਿਰਦਾ ਤੁਰਿਆ ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ਕਿਤੇ ਰਾਜ ਸਾਜ ਦੇ ਵਿਚੁਰਜਿਆ ਹੈ ਰਾਜ ਦਾ ਸਾਜ ਬਾਜ ਆਏ ਇਹਦੇ ਚੇਦੀ ਮਿਲਦਾ ਉਹ ਭਲਾਣੇ ਨੇ ਭਲਾਲੀ ਮਜ਼ਾਇਲ ਬਣਾਈ ਆਪਾਂ ਹੋਰ ਬਣਾਈਏ ਉਹਨੇ ਉਹ ਲਿਆਂਦੀ ਆਪਾਂ ਉਹਦਾ ਰਾਜ ਕਰੀਏ ਹਲੇ ਜੁੜ ਜਾ ਹੋਇਆ ਕਉ ਰਾਜ ਕੇ ਸਾਜ ਕੇ ਬਾਜ ਤਾਮੇ ਸਾਜ ਬਾਜ ਰਾਜ ਦਾ ਇਹ ਜੀ ਵਧਿਆ ਹੋਇਆ ਇਹਦੇ ਵਿੱਚੋਂ ਵਿਲ ਨਹੀਂ ਮਿਲਦਾ ਕਉ ਅੱਖਰ ਕੇ ਪਛਰ ਕੇ ਸਿੱਧ ਸੱਧ ਕਉ ਦੇਖੋ ਅੱਖਰ ਜਿਹੜੇ ਅੱਖਰ ਇਹਨਾਂ ਨੂੰ ਛਿਲ ਛਿਲ ਕੇ ਨਾ ਬਰੀਕੀ ਇਹਨਾਂ ਦੇ ਵਿੱਚੋਂ ਹੱਥ ਪੜਨ ਬਿਲਿਆ ਵਿਚਾਰੀ ਅੱਖਰਾਂ ਨੂੰ ਤੋ ਜਿਹੜੀ ਮੈਣ ਲੱਗੀ ਨਾ ਲਾਲ ਲਾਲ ਪਛ ਪਛ ਦੇਖਦਾ ਥੱਲੇ ਕੀ ਐ ਥੱਲੇ ਹੱਥ ਕੀ ਨੇ ਡੁੱਗੇ ਅੱਖਰਾਂ ਦੀ ਗਹਿਰਾਈ 'ਚ ਜਾ ਕੇ ਦੇਖਦਾ ਪਛ ਹੋਣਾ ਕੀ ਚਾਹੀਦਾ ਅੱਖਰ ਅੱਖਰ ਪਛਰ ਪਛਕਾ ਉਰ ਪਛ ਬੀਬੀ ਆਸ ਤੁਸੀਂ ਦੱਸੋ ਗੜਾ ਲਾਉ ਪਛ ਨਹੀਂ ਲੇਖੋ ਗਣਾ ਸੱਦ ਉਹਦੀ ਸਿੱਧੀ ਉਹ ਜੋ ਸਮਝ ਲੈ ਰਿਹਾ। ਫੇਰ ਸਮਝ ਰਿਹਾ ਵੀ ਅਸਲ ਗੱਲਾ ਹੈ। ਤੇ ਇਹ ਕੰਮ ਕਰਿਆ। ਵੀਡੀ ਖੋਜ ਹੈ, ਹੋਈ ਕਾਦੀ ਹੈ। ਇਹਨਾਂ ਅਖਰਾਵਾਂ ਵਿੱਚ ਕੋਈ ਗੁਰਮੁਖ ਖੋਜੇ, ਖੋਜੂਗੇ ਪਛਗਈ ਖੋਜੂ ਅਖਰਾਂ ਨੂੰ। ਖੋਜੀ ਦੀ ਕੋਈ ਚੀਜ਼ ਅਧੇੜ ਗਈ ਖੋਜੀ ਦੀ ਵਿੱਚੋਂ। ਉਹਨਾਂ ਦੀ ਸੰਧੀ ਵਿਸ਼ੇਸ਼ ਕਰੂਗਾ। ਫੇਰ ਦੇਖੂ ਵੀ ਇਹਦੇ ਅਰਥ ਕੀ ਨੇ। ਅਚਰ ਕੇ ਪਛਰ ਕੇ ਉਹ ਅਚਰ ਬਚਲੂ ਲੋਕ ਪਰ ਲੋਕ ਕਰਤਾ ਇਹਨੂੰ ਦੱਸੋ ਗੱਲ ਕੀ ਐ ਲੋਕ ਪਰ ਲੋਕ ਦੀ ਗੱਲ ਮਾਰੀ ਚੱਕੀ ਪਤਾ ਨਹੀਂ ਲੱਗਿਆ ਗੱਲ ਕੀ ਐ ਕੋ ਡਿਕਸ਼ਨਰੀ ਦਿੱਤੇ ਦਿਮਾਗ ਚ ਆਇਆ ਹੋ ਕਰਤੇ ਕਹੂੰ ਸਿੱਧ ਕੇ ਬੁੱਧ ਕੇ ਅਗਲੀ ਗੱਲ ਕਹੂੰ ਸੱਦ ਕੇ ਜੋ ਸਮਝਾਏਗੀ ਬੁੱਧ ਕੇ ਬੁੱਧ ਕੇ ਜਿਹੜੀ ਸਮਝ ਪਹਿਲਾਂ ਹੈਗੀ ਜਿਹੜੀ ਬੁੱਧੀ ਕੋਲ ਹੈ ਉਹਦੇ ਚ ਹੋਰ ਬੁੱਧੀ ਦਾ ਲਾਭ ਉਠਾ ਰਿਹਾ ਉਹ ਚ ਹੋਰ ਐਡ ਕਰ ਰਿਹਾ ਗਿਆ ਜੇ ਅੱਖਰ ਕੇ ਪੱਛਰ ਪੈਦਾ ਹੋਊਗਾ ਨਾ ਅੱਖਰਾਂ ਦੀ ਖੋਜ ਕਰ ਰਿਹਾ ਔਰ ਬੁੱਧੀ ਨੂੰ ਬਲਵਾਨ ਕਰ ਰਿਹਾ ਬੁੱਧੀ ਚ ਵਿਰਧੀ ਕਰ ਰਿਹਾ ਹੈ ਲਾਦੇ ਲਾਭ ਪ੍ਰਾਪਤ ਕਰਨਾ ਹੁੰਦਾ ਨਾ ਲਾਵ ਪ੍ਰਭੂ ਕਰ ਲੈ ਕਹੂੰ ਅੰਗ ਕਹੋ ਅੰਗ ਕੇ ਰੰਗ ਕੇ ਸੰਗ ਦੇਖੇ ਜੋ ਮਾਇਆ ਜੋ ਮਨ ਕਹਿੰਦਾ ਦੇ ਨਾਲ ਸਹਿਮਤ ਸੰਗ ਦੇਖੇ ਮਾਇਆ ਦੇ ਅੰਗਾ ਜੇ ਲਪਟੇ ਖਤਮ ਹੋ ਜਾਏ ਮਾਇਆ ਦੇ ਰੰਗਾਂ ਦੇ ਵਿੱਚ ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ਕਿਤੇ ਜਿਹੜੇ ਮਾਇਆ ਦੇ ਰੰਗ ਨੇ ਉਹਦੇ ਵਿੱਚ ਹੀ ਦੁੰਦਾ ਘਰਿਆ ਕਿਤੇ ਮਾਇਆ ਲੁ ਜਾਂਦਲ ਰਿਆ ਬਕਾਰਾਂ ਨੂੰ ਕਿਤੇ ਬਕਾਰਾਂ ਨੇ ਆਨੰਦ ਕਰਲੇ ਕਿਤੇ ਬਕਾਰਾਂ ਮੇ ਨਾਲ ਲੜ ਕੇ ਆਨੰਦ ਕਰਲੇ ਕਿਤੇ ਬਕਾਰਾਂ ਦੇ ਸਾਬ ਜਾਗ ਕਰ ਰਿਹਾ ਦੋ ਰੂਪ ਦਿਖਾਤੇ ਇਸੇ ਰੂਪ ਨੇ ਦੋ ਕਦੇ ਵਾਇ ਤੋਂ ਖੜਾ ਛਡਾਉਂਦਾ ਫਿਰਦਾ ਜਦੋਂ ਵਾਇ ਜਫੀਆਂ ਪਾਉਂਦਾ ਫਿਰਦਾ ਇਹ ਕੋਈ ਹੈ ਨਾ ਇਹ ਇਹਦੇ ਹੁਣ ਇੱਕ ਨਹੀਂ ਦੋ ਰੂਪ ਆਏ ਨੇ ਇਹ ਇੱਕ ਨਹੀਂ ਖੋਜ ਕਰਨੀ ਹੈ ਜਿਹਦੇ ਦੋ ਰੂਪ ਨੇ ਇਹ ਲੱਭਣੇ ਹੈ ਇਹ ਆਤਮਦਰਸ਼ਨ ਉਹ ਦੋ ਇਹ ਨਹੀਂ ਅਸੀਂ ਲੱਭਣੇ ਜਿਹੜੇ ਪਹਿਲੇ ਛੜਤੇ ਜਿਹੜੇ ਪਹਿਲੇ ਛੜਤੇ ਦੋ ਉਹ ਨਹੀਂ ਸਾਡੀ ਸਟੱਡੀ ਸਾਡੀ ਸਟੱਡੀ ਚ ਆਇਆ ਹੈ ਜਿਹੜਾ ਤੀਆ ਏ ਆਪੇ ਹੈ ਜਿਹੜਾ ਪੜ ਰਿਹਾ ਹੈ ਜਿਹੜਾ ਪੜ ਰੋੜੇ ਇਹ ਆਪ ਹੈ ਇਹ ਵੀ ਹੋ ਜਾ ਅਸਲ ਚ ਸਾਡੀ ਉਹ ਦੂਏ ਨਹੀਂ ਹੋਜਣੀ ਹੈ ਦੂਏ ਨਾਤਾ ਦਾ ਸੁਭਾਅ ਅਸੀਂ ਆਪਣਾ ਸੁਭਾਅ ਬਣਾ ਕੇ ਠੀਕ ਹੋਣਾ ਆਪਣਾ ਸੁਭਾਅ ਦੇ ਨਾਲ ਬਣਾਉਣਾ ਹੈ ਉਹ ਜੇ ਬੜਨ ਵਾਸਤੇ ਉਹਦਾ ਰੂਪ ਤਾਂ ਅਸੀਂ ਦੇਖਿਆ ਉਹਦਾ ਰੂਪ ਜਿਹੜਾ ਸਮਝਿਆ ਉਹ ਜੇ ਬੜਨ ਵਾਸਤੇ ਬੜਣਾ ਨਹੀਂ ਆਪ ਹੈ ਤੇ ਦਰਸ਼ਨ ਦਾ ਅਤਮ ਕਰਨਾ ਉਹਨਾਂ ਦਾ ਫਿਰ ਉਹ ਤਾਂ ਅਸੀਂ ਉਹੀ ਬੜਿਆ ਆਈ ਤੋਈ ਬੁਲ ਲੈ ਜੋ ਕੁਝ ਬੁਲ ਲੈ ਆਈ ਰੋਲ ਬੜਦੇ ਕਹੂੰ ਵੰਗ ਕੇ ਰੰਗ ਕੇ ਸੰਗ ਦੇਖੇ ਉਹ ਜੰਗ ਕੇ ਰੰਗ ਕੇ ਰੰਗ ਕੇ ਕੇ ਲੜ ਰਿਹਾ ਉਹ ਜੰਗ ਲੜ ਰਿਹਾ ਜਿਹੜੀ ਉੱਥੇ ਚੰਡੀ ਦੀ ਚ ਲੜ ਰਿਹਾ ਜੰਗ ਵਿਕਾਰਾਂ ਦਾ ਵੀ ਲੜ ਰਿਆ ਬਾਹਰ ਵੀ ਲੜ ਰਿਆ ਉਹ ਜੰਗ ਕੇ ਰੰਗ ਵੇਖੇ ਇਥੇ ਆਸੀ ਚਰਮਗਬਰਮ ਹੋ ਗੋ ਇਥੇ ਆ ਗਏ ਹੀ ਗਲੋਥੇ ਲੋ ਬਸਰ ਬਟ ਹਾਲ ਪਹਿਲੇ ਦਿੱਤੀ ਨਾ ਆਕੇ ਉਹ ਤਾਂ ਦਿੱਤੇ ਲਫਦ ਕੇ ਉੱਥੇ ਜਾ ਕੇ ਇਹਨਾਂ ਨੂੰ ਪ੍ਰੋਬਲਮ ਬਣਾਵੇ ਕਿਉਂਕਿ ਇਹ ਤੋਂ ਬਾਅਦ ਹੋਇਆ ਇਹ ਪਹਿਲਾਂ ਅਕਾਲ ਉਸਤਦ ਪਹਿਲਾਂ ਉਹ ਬਾਅਦ ਦੇ ਵਿੱਚ ਛੰਡੀ ਚ ਇੱਧਰ ਆ ਪੀ ਉੱਥੇ ਜਾ ਕੇ ਕਹਿੰਦੇ ਦੂਏ ਪਾਸੇ ਦੂਰ ਚਲੇ ਜਾਣ ਜਿਨਾਂ ਇਹ ਨਹੀਂ ਪੜਿਆ ਸਵਾਰ ਕੇ ਉੱਥੇ ਕੇ ਮੇਲ ਕਰ ਲੂ ਜਿਵੇਂ ਗੁਰਬਾਣੀ ਨੂੰ ਸਾਜ ਨੂੰ ਸਵਾਰ ਕੇ ਨਹੀਂ ਪੜਿਆ ਅਰਥ ਕਰ ਮੈਂ ਕਰ ਲੂ ਇੱਥੇ ਵੀ ਇਹੀ ਗੱਲ ਹੈ ਦੋਏ ਜਗਾ ਕੋਈ ਦਾ ਵਿਸ਼ਾ ਇੱਥੇ ਵੀ ਕੋਈ ਦਾ ਵਿਸ਼ਾ ਹੈ ਇੱਥੇ ਵੀ ਬਹੁਤ ਕੋਈ ਦੱਸਿਆ ਹੈ ਵਿੱਚ ਇਹਦੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਤੋ ਹੂ ਕੋ ਕਦੇ ਧਰਮ ਦੇ ਜਿਹੜੇ ਕਰਮ ਨੇ ਉਹ ਤਾਂ ਘਰ ਹੈ ਹਰਬ ਕਰ ਲੂਗਾ ਇਹਨੇ ਟਖਾਣਾ ਘਰ ਧਰਮ ਜਾਣ ਨੇ ਧਰਮ ਦੇ ਕਰਮਾਂ ਨੂੰ ਜਾਣ ਲੈ ਧਰਮ ਦੇ ਕਰਮ ਨੇ ਉਹਨਾਂ ਤੇ ਸਾਰਾ ਧਿਆਨ ਲੱਗਿਆ ਹੋਇਆ ਇਥੇ ਘਰ 'ਚ ਰਹਿਣ ਧਰਮ ਦੇ ਕਰਮਾਂ ਨੂੰ ਜਾਣਨ ਦੇ ਘਰ 'ਚ ਬੈਠਾ ਰਹਿਣ ਇਥੇ ਘਰ ਨਿਵਾਸ ਰੱਖਦੇ ਕਹੂੰ ਧਰਮ ਕੇ ਕਰਮ ਕੇ ਭਰਮ ਮੰਨੈ ਕਿਤੇ ਗੰਦੇ ਧਰਮ ਦੇ ਕਰਮਾਂ ਨੂੰ ਪਰਬੁੱਲਦੇ ਕਿਤੇ ਧਰਮ ਦੇ ਕਰਮਾਂ ਜਿਹੜੇ ਜਾਲਾ ਨੇ ਸਾਰਾ ਦਿਮਾਗ ਇਹ ਰਹਿਦਾ ਵੀ ਆਹ ਨਹੀਂ ਆਹ ਕਰੀਏ ਆਹ ਨਹੀਂ ਆਹ ਕਰੀਏ ਤਾਂ ਹੀ ਕਹੂੰ ਧਰਮ ਦੇ ਕਰਮਾਂ ਨੂੰ ਸਾਰੇ ਨੂੰ ਪਰਬੁੱਲੀ ਮਿੱਠ ਇਹ ਤਾਂ ਸਾਰੇ ਪਰਬ ਨੇ ਫੋਕੜ ਕਰ ਮੰਨਦਾ ਕਿਤੇ ਕਦ ਮੰਨਦਾ ਫੋੜ ਫੋਕੜ ਕਰਮ ਜਦ ਗਿਆਨ ਹੋ ਜਾਂਦਾ ਸਮਝ ਆਈ ਤੇ ਫੋਕੜ ਮੰਨਦਾ ਬੇ ਨਾਲ ਉਸੇ ਚੀਜ਼ ਬੇਸਮਝੀ ਨਾਲ ਉਸੇ ਚੀਜ਼ ਨੂੰ ਠੀਕ ਮੰਨਦਾ ਸਮਝਾਈ ਤੇ ਉਸੇ ਚੀਜ਼ ਨੂੰ ਗਲਤ ਮੰਨਦਾ ਸਮਝਰ ਬੇਸਮਝੀ ਦੀ ਗੱਲ ਹੈ 11 ਰ ਗਿਆਨਤਾ ਦੀ ਗੱਲ ਹੈ ਜਿੱਥੇ ਕਨ ਗਿਆਨ ਕੇ ਵੀਰ ਉਥੇ ਦੀ ਗੱਲ ਇੱਥੇ ਹੈ ਗਿਆਨ ਕੇ ਵੀਰ ਤਾਂ ਗਲਤ ਕੰਮ ਨੂੰ ਠੀਕ ਮੰਨਦਾ ਗਿਆਨवान ਹੋ ਕੇ ਜਿਹੜਾ ਕਰ ਰਿਹਾ ਉਸ ਨੂੰ ਛੱਡ ਦਿੰਦਾ ਗਲਤ ਮੰਨਦਾ ਪਰ ਜੇ ਪਹਿਲਾਂ ਕਹਿ ਦਵੇ ਫੇਰ ਗੱਲ ਪੈਂਦਾ ਪਤਾ ਨਹੀਂ ਰ ਗਿਆ ਨਹੀਂ ਕਹੂੰ ਚਾਰ ਚੇਸਟ ਆ ਜਾਂਦੀ ਧਰਮ ਦੇ ਕਰਮ ਦੀ ਚੇਸਟ ਹੈ ਚੇਸਟ ਆ ਕਿਤੇ ਤਾਂ ਮਤਲਬ ਰੱਖਦਾ ਚਟਕ ਲੱਗੀ ਹੋਈ ਹੈ ਜਿਵੇਂ ਕਹਿੰਦੇ ਨੇ ਨਾ ਕਿ ਸਾਨੂੰ ਉਹ ਸਮਝੋ ਨਸ਼ਾ ਲੱਗ ਗਿਆ ਹੈ ਧਰਮ ਦਾ ਕਰਮ ਨੂੰ ਕਹੂੰ ਚਾਰ ਚੇਸਟਾ ਕੋਹ ਜਾਣੋ ਨਹੀਂ ਚੇਸਟਾ ਜਿਹੜੇ ਧਰਮ ਦਾ ਕਰਮ ਹੈ ਦੀ ਚੇਸਟਾ ਲੱਗੀ ਹੋਈ ਹੈ ਕਹੂੰ ਚੋ ਜੇ ਕਹਿੰਦੇ ਸਵੇਰੇ ਨਹਾਤਾ ਦੀ ਤਾਂ ਸਾਰਾ ਦਿਨ ਚ ਪਾਠ ਨਹੀਂ ਕਰਿਆ ਸਾਰਾ ਦਿਨ ਜੀ ਗੱਲ ਹੈ ਕਹੂੰ ਚਤਰ ਰੂਪੰ ਰੂਪ ਕਹੂੰ ਸਰੀਰ ਤੇ ਪਰੇ ਅੱਡ ਬੈਠਾ ਸਿਰ ਤੇ ਹੁੰਦਾ ਹੈ ਵੀ ਸਿਰ ਤੇ ਅੱਡੋ ਬੈਠਾ ਹੈ ਚੇਤਨੂ ਬੈਠਾ ਹੈ ਕਿਵੇਂ ਚੇਤਨੂ ਜਿਵੇਂ ਸ਼ੀਸ਼ੇ ਦੀ ਚਿੱਤਰ ਹੁੰਦਾ ਨਾ ਐਂ ਸਰੀਰ ਚ ਜਿਹੜਾ ਦਾ ਸਰੀਰ ਨਾਲ ਜੁੜਿਆ ਹੋਇਆ ਉਹਨੂੰ ਤਾਂ ਇਹ ਲੱਗਦਾ ਜਿਵੇਂ ਹੱਤਾ ਦੀ ਅਜ ਉਹ ਚ ਬੈਠਦਾ ਕਿਉਂਕਿ ਉਹ ਮੈਲੀ ਦਾ ਹੱਤਾ ਸਰੀਰ ਨੂੰ ਕਹਿੰਦਾ ਉਹ ਜਿਹੜਾ ਸਰੀਰ ਚ ਆਇਆ ਜਿਵੇਂ ਸ਼ੀਸ਼ੇ ਚ ਛਾਈ ਹੁੰਦੀ ਹੈ ਉਹਨੂੰ ਕੋਈ ਫਰਕ ਨਹੀਂ ਪਿਆ ਸਰੀਰ ਦੇ ਨਾਲ ਉਹਨਾਂ ਦਾ ਮੈਨ ਹੋਣਾ ਜਿਵੇਂ ਰੂਪਾਂ ਦਾ ਸਰੀਰ ਦੇ ਵਿੱਚ ਬੁਕਰਮਾ ਜੈਸਾ ਛਾਈ ਜਿਵੇਂ ਸ਼ੀਸ਼ੇ ਦੇ ਵਿੱਚ ਪੜ੍ਹਦਾ ਨਾ ਚਿੱਤਰ ਐ ਆਤਮਾ ਸਰੀਰ ਵਿੱਚ ਚਿੱਤਰ ਵੱਖਰੀ ਹੈ ਸਰੀਰ ਤੇ ਜੇ ਸਰੀਰ ਤੇ ਵੱਖਰਾ ਨਹੀਂ ਦੇਖਦਾ ਆਪਣੇ ਆਪ ਨੂੰ ਉਹਨੂੰ ਸਰੀਰ ਦੇ ਨਾਲ ਦਾ ਉਹਦੇ ਤੇ ਬੋਝ ਪੈਂਦਾ ਦੋਵੇਂ ਤੇ ਬੋਝ ਨਹੀਂ ਪੈਂਦਾ ਦੋਵੇਂ ਤੇ ਆਤਮਾ ਦੋਵੇਂ ਤੇ ਕਾਹਦਾ ਫਰਕ ਪੈਂਦਾ ਦੋਵੇਂ ਤੇ ਸ਼ਬਦ ਵਿਚਾਰ ਦਾ ਫਰਕ ਪੈਂਦਾ ਅੰਦਰ ਲੈਦਰ ਤੇ ਸ਼ਬਦ ਵਿਚਾਰਦਾ ਫਿਰ ਪਾਣੀ ਸ਼ਬਦ ਵਿਚਾਰ ਨਾਲੋਂ ਦੀ ਬਲੀਤ ਦੂਰ ਹੋਣੀ ਬੰਨਤਾ ਧੋਤਾ ਜਾਊਗਾ ਕਾਦ ਨਾ ਸ਼ਬਦ ਨਾ ਬਲਤ ਉਹ ਸ਼ਬਦ ਲਾਗੋ ਹਰਸੋਂ ਰਹੋ ਚਿਤ ਲਾਏ ਚਿਤ ਲਾਏ ਜੇ ਹਰਸੋਂ ਚਿਤ ਲੱਗਿਆ ਹੋਇਆ ਬੰਨ ਧੋਤਾ ਜਾਂਦਾ ਸ਼ਬਦ ਵਿਚਾਰ ਹੋ ਰਹੀ ਹੈ ਸਰੀਰ ਦਾ ਨਾਣਾ ਨਾਣਾ ਬੇਵਾਰੀ ਹੋ ਜਾਂਦਾ ਇਹ ਮਤਵੇ ਨਹੀਂ ਹੈ ਉਹ ਨਾਉਣਾ ਹੋਰ ਗੱਲ ਹੈ ਹੋਰ ਸੁਸਤੀ ਹੈ ਹੋਰ ਤੁਸੀਂ ਨਾ ਆ ਗਿਆ ਹੋ ਉਹ ਗੱਲ ਹੋਰ ਹੈ ਤਰਮ ਨਾਲ ਉਹ ਦਾ ਸੰਬੰਧ ਨਹੀਂ ਹੈ ਤਰਮ ਨਾਲ ਇਸ ਗੱਲ ਨੂੰ ਜੋੜ ਸਕਦੇ ਜੋਗੇ ਨੂੰ ਕਿਹਾ ਹੀ ਨਹੀਂ ਵੀ ਤੁਸੀਂ ਨਾ ਕਰੋ ਸਾਲ ਵੀ ਧੂੜੀ ਕਰੇ ਇਸ਼ਨਾਨ ਕਿਹਾ ਹੈ ਧੂੜੀ ਕਰੇ ਇਸ਼ਨਾਨ ਨਾਲੋਂ ਬਾਇਦੇ ਨਾ ਸਕਦਾ ਸਾਲ ਨੂੰ ਧੂੜੀ ਕਰੇ ਇਸ਼ਨਾਨ ਸਾਲੂ ਵੀ ਆਇਆ ਤਾਂ ਇਸ਼ਨਾਨ ਹੁੰਦਾ ਹੈ ਆਤਮਾ ਦੇ ਲੈਵਲ ਦਾ ਸ਼ੀਰ ਦੇ ਲੈਵਲ ਦਾ ਪਿੰਡਾ ਧੋਣਾ ਹੁੰਦਾ ਇਹਨੂੰ ਪਿੰਡਾ ਧੋਣਾ ਬਹਿਣ ਜੇ ਪਿੰਡਾ ਧੋਏ ਸੱਚੇ ਸਹੀ ਨਾਨਕਾ ਜਨਮੋਂ ਬਸਿਆ ਸੋਹ ਸੋਹ ਸੱਚੇ ਇਹਨਾਂ ਅੱਖਾਂ ਬਹਿਣ ਜੇ ਪਿੰਡਾ ਧੋਏ ਉਹ ਜੇ ਪਿੰਡਾ ਧੋਣ ਨੂੰ ਜੇ ਇਸ਼ਾਨਾਨ ਕਹਿੰਦੇ ਨੇ ਹੋ ਗਿਆ ਦਿਨ ਜੇ ਪਿੰਡਾ ਧੋਣ ਨੂੰ ਇਸ਼ਾਨਾਨ ਬੋਲਦੇ ਨੇ ਹੋ ਗਿਆ ਦਿਨ ਇਸ਼ਾਨਾਨ ਆਤਮਾ ਦਾ ਹੁੰਦਾ ਉਹ ਨਾਮ ਨਾਲੇ ਹੁੰਦਾ ਇਸ਼ਰੋਰ ਇਹ ਪਿੰਡਾ ਧੋਣ ਲਈ ਹੁੰਦਾ ਪਰ ਇਹ ਵੀ ਧੋਣਾ ਚੰਗਾ ਹੁੰਦਾ ਕਪੜਾ ਰੋਜ਼ ਧੋਣੇ ਚੰਗਾ ਹੁੰਦਾ ਦੋ ਜਾਂ ਤਿੰਨ ਦਿਨ ਤੋੜੀਓ ਇਹਦੇ ਨਾਲ ਹੋਰ ਤਰ੍ਹਾਂ ਦੀ ਸਸਤੀ ਹੋਦੀ ਹੈ ਸਰੀਰ ਦੀ ਦੇ ਰੋਗਤ ਆਉਦੀ ਹੈ ਸਮਝ ਸਰੀਰ ਵੀ ਤਾਂ ਸਾਥ ਚਾਹੀਦਾ ਪਰ ਇਹਨੂੰ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਧਰਮ ਨਾਲ ਜੋੜਨਾ ਦਲਤਾ ਹੈ ਅਸ਼ਾਨ ਕਰ ਧੋਣਾ ਪਿੰਡਾਂ ਤੋਂ ਇਹ ਠੀਕ ਹੈ ਕਹੂੰ ਪਰਮ ਪ੍ਰਗਿਆ ਕਹੂੰ ਸਰਵ ਭੂਪੰ ਕਹੂ ਪਰਮ ਪ੍ਰਗਿਆ ਕਹਤੇ ਪਰਮ ਪ੍ਰਗਿਆ ਪ੍ਰਗਿਆ ਹੁੰਦੀ ਹੈ ਬੇਦਬਾਣੀ ਇਹ ਤੁਸ ਕਹਲ ਫਵੇ ਖੁਦੀ ਅਚਲਜਾ ਇਹ ਵਿਦਿਆ ਨੂੰ ਕਹੀ ਜਾਂਦੇ ਪਰਮ ਪ੍ਰਗਿਆ ਜਿਹੜੀ ਬ੍ਰਹਮ ਵਿਦਿਆ ਉਹਨੂੰ ਕਹੀ ਜਾਂਦਾ ਬ੍ਰਹਮ ਵਿਦਿਆ ਦਾ ਵਿਦਿਆ ਹੀ ਹੈ ਨਾ ਬ੍ਰਹਮ ਵਿਦਿਆ ਦਾ ਹੀ ਵਿਦਿਆ ਤਾਂ ਬਣਾਈ ਜਾਂਦੀ बोली, बदल बदल बोली तो बदलदी रहंदी है विद्या बदलदी रहंदी है बुद्धि नहीं बदलदी है तत्व नहीं बदलता तत्व ही रहूगा बोली तू इसे ही कह दो वक्त वही चीज का नाओ ले लो तूसी पानी ओ लो एदे न ਵਸਤੂ ਤਾਂ ਕੋਈ ਨਹੀਂ ਇਸ ਕਰਕੇ ਵਿਦਿਆ ਹੈ ਉਹ ਜਿਹੜਾ ਨਾਮ ਹੈ ਉਹ ਵਿਦਿਆ ਹੈ ਵਸਤੂ ਹੀ ਕੋਈ ਹੈ ਬ विवेक बुद्धि ਕੋਈ ਨਹੀਂ ਲਾਉ ਬਦਲ ਸਕਦਾ ਇਹਨਾਂ ਪਰ ਪ੍ਰਗਿਆ ਬਵੇ ਹੁੰਦੀ ਕਹੂੰ ਪਰਮ ਪ੍ਰਗਿਆ ਕਹੂੰ ਸਰਵ ਭੂਪੰ ਕਹੂੰ ਸਰਵ ਭੂਪੰ ਕਿਤੇ ਤਾਂ ਪਰ ਪ੍ਰਗਿਆ ਬਵੇ ਕੋਦ ਬਵੇ ਕੀ ਹੈ ਕਹੂ ਸਰਪੂਪੁ ਕਹੂ ਸਰਪੂਪੁ ਕਿਤੇ ਸਾਰਿਆਂ ਦਾ ਭੂਪ ਹੈ ਰਾਜਾ ਬਣਿਆ ਹੋਇਆ ਰਾਜਾ ਬਣ ਲੋ ਉਹ ਵੀ ਬੜਾ ਹੈ ਪਰ ਪ੍ਰਗਾ ਜਿਹੜਾ ਇਹ ਅਵਨਾਸ਼ੀ ਰਾਜਾ ਹੈ ਇਹ ਵੀ ਬੜਾ ਕਿਤੇ ਤਾਂ ਸੁਤਸਰੀ ਰਾਜ ਦੀ ਇੱਛਾ ਰੱਖਦਾ ਸਾਰਿਆਂ ਦਾ ਰਾਜਾ ਬਣਨਾ ਸੁਤਸਰੀ ਤੌਰ ਤੇ ਦੀ ਇੱਛਾ ਤੇਰੇ ਚ ਕਿਤੇ ਇਹ ਵਸਾ ਛੱਡ ਕੇ ਅਵਨਾਸ਼ੀ ਰਾਜ ਦੀ ਇੱਛਾ ਤੇਰੇ ਚ ਸੰਸਾਰੀ ਰਾਜ ਨੂੰ ਛੱਡ ਕੇ ਸੰਸਾਰੀ ਬੰਦਨਾ ਨੂੰ ਸਮਝ ਕੇ ਵੀ ਇਹ ਤਵੱਦਨ ਟੈਂਪਰੇਰੀ ਹੈ ਰਾਜ ਹੈ ਔਰ ਇਹ ਦੁੱਖ ਹੈ ਸੁਖ ਨਹੀਂ ਹੈ ਇਹ ਸਮਝ ਕੇ ਫਿਰ ਉਹ ਦੂਆ ਰਾਜ ਅਬਨਾਸ਼ੀ ਰਾਜ ਦੀ ਗੱਲ ਹੈ ਅਸਲੀ ਤਨ ਦੀ ਗੱਲ ਹੈ ਨਾਮ ਤਨ ਅਸਲੀ ਤਨ ਜੋ ਚੀਜ਼ ਕੋ ਰਹਿਣ ਵਾਲੀ ਹੈ ਹਮੇਸ਼ਾ ਉਹਦੀ ਪ੍ਰਾਪਤੀ ਦੀ ਗੱਲ ਹੈ ਸੁਖਾਰੀ ਰਾਜ ਦਾ ਨਾਲ ਜਾਣ ਵਾਲਾ ਹੈ ਕੁਸ਼ੀਤ ਕਿਤਾਬੇ ਸ਼ਰਣ ਵਾਲਾ ਦੀ ਕੋਈ ਸ਼ਰਣ ਵਾਲੀ ਪਰਪਰਗ ਕਹੂੰ ਨੇਹੰ ਗ੍ਰਹਿੰ ਕਹੂੰ ਦੇਹ ਦੋਖੰ ਕਹੂੰ ਰਹਿ ਗਿਆ ਕਿਤੇ ਤਨ શરીર ਦਾ ਨਿਉ ਕਹੂੰ ਬਹੁਤ ਉਹ ਸਮਝਦਾ ਐਨਾ ਬਈ ਜੀ ਇਹਦਾ ਹਕੀਕਤ ਸਮਝ ਲਓ ਇਹਦੀ ਇਹਦੀ ਕੋਈ ਕੀਮਤ ਨਹੀਂ ਹੈ ਸ਼ਰੀਰ ਦੀ ਐਨੀ ਕੀਮਤ ਮਤਲਬ ਆ ਕਿਸੇ ਚੀਜ਼ ਦੀ ਨਹੀਂ ਸੁਥਾ ਜਿਹਦੀ ਸ਼ਰੀਰ ਦੀ ਇਹ ਤੇਰੇ ਐਡਾ ਨੇ ਹੋ ਤੇਰਾ ਹੁਣ ਦੇ ਦੁਖਾਂ ਕਿਤੇ ਇਹ ਦੇ ਦੁਖ ਰੂਪ ਬਣ ਤਾ ਨੂੰ ਤਾਂ ਦੁਖ ਰੂਪ ਬਣ ਜਾਨਾ ਇਹਦੇ ਖੜਾ ਛੜਾਉਣਾ ਚਾਹੁੰਦਾ ਜਰ ਬੋਲ ਤੋਈ ਜਿਹੜੇ ਜਨਮਾਂ ਤੋਂ ਖੜਾ ਛੜਾਉਣਾ ਚਾਹੁੰਦੇ ਨੇ ਉਹ ਤੇ ਇਹ ਦੁਖ ਬਣ ਕੇ ਚਾਹੁੰਦੇ ਸੀ ਕਿਤੇ ਦੇ ਦੁਖ ਰੂਪ ਦਿਖਾਈ ਦਿੰਦੀ ਹੈ ਅਗਲਾ ਜਨਮ ਹੁਣ ਦੀ ਦੇ ਦੁਖ ਰੂਪ ਜੇ ਦਿਖਾਈ ਦਿੰਦੀ ਹੈ ਤਾਂ ਹੀ ਅਗਲੇ ਜਨਮ ਤੋਂ ਪੈਂਦਾ ਹੈ ਅਗਲੇ ਜਨਮ ਤੋਂ ਕਿਵੇਂ ਪੈਂਦਾ ਕਿਤੇ ਦੇ ਨੂੰ ਬੜੀ ਉਪਲਬਧੀ ਸਮਝਦਾ ਕਿਤੇ ਤਾਂ ਦੇ ਨੂੰ ਬਹੁਤ ਉਪਲਬਧੀ ਸਮਝਦਾ ਹੈ ਉਹਨੂੰ ਖਾ ਜਾਂ ਉਹ ਉਪਲਬਧਾ ਹੈ ਫਲਾਨਾ ਫਿਰ ਖੜਾ ਲਗਾ ਦੇ ਜਨਮ ਤੋਂ ਇਹ ਦੋਏ ਇਹਦੇ ਇਹਦੀ ਗਿਆਨ ਹੋ ਰ ਦੇ ਵਿੱਚ ਇਹਦੇ ਤੇ ਜਦੋਂ ਗਿਆਨ ਹੋ ਜਾਂਦਾ ਫਿਰ ਇਹ ਸਮਝਦਾ ਵੀ ਇਹ ਸਰੀਰ ਤਾਂ ਠੀਕ ਹੈ ਇਹ ਮੁੜ ਖਾ ਪਰ ਇਹ ਬੋੜੀ ਤਾਂ ਅੱਗੇ ਜਾਂਦਾ ਕਿਸ਼ਤੀ ਛੱਡ ਦੇਣੀ ਜੁੜਿਆ ਨਹੀਂ ਰਹਿਣਾ ਕਿਤੇ ਜੁੜੇ ਹੀ ਰਹਿ ਕੇ ਰਾਜੀ ਹੈ ਸਰੀਰ ਨੂੰ ਛੱਡ ਕੇ ਰਾਜੀ ਨਹੀਂ ਕਿਤੇ ਹਾਂ ਸਰੀਰ ਦਾ ਇਹਨਾਂ ਬਹੁਤ ਛੱਡ ਕਰਾਜੀ ਨਹੀਂ ਕੱਚਾਈਆ ਡੁੱਟਦਾ ਨਹੀਂ ਹੈ 펄 பक्कदा ਨਹੀਂ ਭੋਇ ਨਹੀਂ ਦਿਰਦਾ ਹੈ ਪਖਕੇ ਸਿਰ ਮਾਇਰ ਵੀ ਛੱਡਦਾ ਨਹੀਂ ਹੈ ਮਾਇਰ ਨਾਲ ਜੁੜਿਆ ਰਹਿਣ ਦੇ ਰਾਜੀ ਹੈ ਅਗਲਾ ਜਨਮ ਵੀ ਭੜਦਾ ਹੈ ਵੀ ਸੁਖਦਾ ਹੋਵੇ ਧਰਪਨ ਕਰਦਾ ਅਗੇ ਨੂੰ ਵਧੀਆਂ ਬਣੇ ਧਰਪਨ ਕਰਦਾ ਵੀ ਅਗੇ ਨੂੰ ਵਧੀਆਂ ਬਣੇ ਉਹ ਦੇ ਗਏ ਆਖਦੀ ਰੋਗ ਕੇ ਸੋਖ ਸੋਖੰ ਕਹੂੰ ਕਿਤੇ ਦਵਾਈ ਤਿਆਰ ਕਰ ਰਹੇ ਕਿਤੇ ਕਿਤੇ ਦਵਾਈ ਹੈ ਉਹ ਮੋਂ ਖਦੀ ਰੋਗ ਆਪੇ ਦਵਾਈ ਬਣ ਜਾਂਦਾ ਜਦੋਂ ਨਾਮ ਜਦੋਂ ਨਾਮ ਜਦੋਂ ਗਿਆਨ ਹਾਸਲ ਕਰ ਲੈਂਦਾ ਆਪੇ ਦਵਾਈ ਹੈ ਆਪੇ ਬੈਦਮਾਨ ਜਾਂਦਾ ਜਿਹੜੇ ਰੋਗ ਨੇ ਅੰਦਰਲੇ ਅੰਦਰਲੇ ਰੋਗਾ ਨਿਕਲਿਆ ਬਾਹਲੇ ਦੀ ਗੱਲ ਕਰੂਗਾ ਸਿਰਦਰ ਬਾਲਿਆਂ ਦੀ ਗੱਲ ਕਰੂਗਾ ਉਹ ਜਿਹੜੇ ਰੋਗ ਹੈ ਨਾ ਉਹ ਹੋ ਗਏ ਜਿਹੜਾ ਸ਼ਰੀਰ ਦਾ ਉਹ ਹੈ ਇੱਕ ਇਹ ਰੋਗ ਹੈ ਵੀ ਹਮੇ ਵੀ ਰੋਗ ਹੈ ਇਹਨਾਂ ਦੀ ਕਿਤੇ ਦਵਾਈ ਰੂਪ ਬਣਿਆ ਹੈ ਦਵਾਈ ਦੇ ਇਹ ਲੋਕਾਂ ਨੂੰ ਇਹ ਰੋਗ ਨੇ ਤਾਂ ਖੜਾ ਛੜਾਓ ਇਹਨਾਂ ਨੂੰ ਸਰਕਾਰ ਹੈ ਜਿਹੜੇ ਰੋਗ ਨੇ ਇਹਨਾਂ ਨੂੰ ਖੁਸ਼ ਕਰ ਰਿਆ ਅੰਦਰੋਂ ਲੋਕ ਨੂੰ ਵੀ ਖੁਸ਼ ਕਰ ਰਿਆ ਉਹਨੂੰ ਵੀ ਕੁਰਬਾਨੀ ਇਹੀ ਕਰ ਰਹੀ ਹੈ ਹੋਰ ਕਰ ਰਹੀ ਹੈ ਜਿਹਦਾ ਨੇ ਕੁਰਬਾਨੀ ਰਜੀ ਹੈ ਉਹ ਬੈਠੇ ਤੇ ਮੇਰਾ ਬੈਦ ਗੁਰੂ ਕੋਵਿੰਦ ਕਿਤੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਹੈ ਕਿਤੇ ਰੋਗ ਰੂਪ ਕਿਤੇ ਰੋ ਨੂੰ ਚੰਗਾ ਸਮਝਦਾ ਕਿਤੇ ਰੋ ਉਹ ਖੜਾ ਛੜਾ ਰਿਹਾ ਕੇ ਸੋਖ ਸੋਖੰ ਹਾਂ ਔਖ ਦੀ ਬਣ ਕੇ ਨਾ ਔਖ ਦੀ ਬਣ ਕੇ ਦੇਖੋ ਔਗਣ ਨੇ ਮਾਇਆ ਨਾਲ ਜੋੜ ਕੇ ਰਖੜ ਲਏ ਗੁਣ ਨੇ ਮਾਇਆ ਤੋਂ ਖੜਾ ਛੜਾ ਰਹਿ ਉਹ ਔਖ ਦੀ ਔਗਣਾਂ ਗੁਣਾਂ ਦੀ ਵਿੱਚੇ ਹੀ ਗੱਲ ਹੈ ਕਿ ਔਗਣਾ ਪਸੰਦ ਰਹਿਣ ਫਿਰ ਮਾਇਆ ਨੂੰ ਛੱਡ ਸਕਦਾ ਜੇ ਉਹ ਹੈਗਾ ਮਾਇਆ ਨੂੰ ਛੱਡੂਗਾ ਲੋ ਵੈ ਕਮ ਮਾਇਆ ਨੂੰ ਛੱਡੂ ਅੱਗੇ ਰੁ ਜਾਊਗਾ ਤਸਦਾ ਚਲਾ ਜਾਊਗਾ ਮਾਇਆ ਚੋਂ ਜੇ ਇਹਨਾਂ ਨੂੰ ਕਮਜ਼ੋਰ ਕਰੂਗਾ ਮਾਇਆ ਤੋਂ ਚਲੇ ਜਾਊ ਕਹੂੰ ਵਿਦਿਆ ਕਹੂੰ ਕਿਤੇ ਦੇਵਤਿਆਂ ਦੀ ਵਿਦਿਆ ਦੇਵਤਿਆਂ ਦੀ ਵਿਦਿਆ ਕੀ ਹੈ ਜਗ ਕਰਨਿਆ ਜਿਹੜੀ ਸੰਸਾਰੀ ਵਿਦਿਆ ਦੇਵਤਿਆਂ ਦੀ ਵਿਦਿਆ ਕੁਦ ਦਾਤ ਬਾਣੀ ਦਾਤ ਬਾਣੀ ਕੀ ਹੈ ਦਾਤ ਬਾਣੀ ਵੀ ਜਿਹੜੀ ਹੈ ਦੇਵਤੇ ਵੀ ਇੱਦੇ ਦਾਤ ਦੋਦੇ ਨੇ ਦੇਵਤੇ ਦਾ ਸੰਚਲੇਤ ਬੰਦੇ ਆ ਕੁਦ ਦਾਤ ਬਾਣੀ ਦਾਤ ਬਾਣੀ ਦੇਖੋ ਇੱਕ ਤਾਂ ਹੁੰਦੀਆਂ ਅੰਤਰਾਤਵ ਦੀ ਆਵਾਜ਼ ਉਹਦਾ ਦੇਵਤੇ ਆ ਉਹ ਚੋਂ ਹੁੰਦੀ ਹੈ ਹੁਣ ਇਹ ਦੇਵਤੇ ਆ ਰਾਖੇ ਦੋ ਕੈਟਾਗਰੀਆਂ ਨਹੀਂ ਬਣਾਈ ਉਹ ਜਿਹੜਾ ਗੁਰਮੰਤਰੀਆਂ ਨਾਲ ਬੰਦੀ ਉਹ ਤਾਂ ਭਾਈ ਉਹਨਾਂ ਦਾ ਕਿਹਾ ਦੇਵਦਤ ਕੋਮਾ ਬਿਉਦਨ ਸਾਡੇ ਦੇਵਦਤ ਨੇ ਕੰਤਰਾ ਤੋਂ ਦੀ ਆਵਾਜ਼ ਹੈ ਉਹਦੇ ਵਿੱਚ ਦੇਵਨਾਂ ਦਰੈਨ ਦੇਵ ਉਪਰ ਦੇਵਾਂ ਜਾਣੇ ਹੁੰਦੇ ਉਹ ਤਾਂ ਦੇ ਵਿੱਚ ਜਿਹੜੀ ਗੱਲ ਉਹ ਦੱਸਦਾ ਨਾ ਜਿਹੜੀ ਸਲਾਹ ਉਹ ਦਿੰਦਾ ਉਹ ਦੇ ਵਿੱਚ ਸਰਾਏ ਜੋ ਵੀ ਦੇਈ ਆਹ ਕਹੂੰਦਾ ਹੈ ਦਬਾਣੀ ਉਹਣੀ ਬਨ ਬੋਲਦਾ ਜਿਹੜਾ ਜਿਹੜਾ ਹੁਕਮ ਦਾ ਵਿਰੋਧ ਕਰ ਰਹੀ ਹੈ ਗੱਲ ਉਹ ਦਾਇਤ ਬਾਣੀ ਹੈ ਕੋਲੇ ਤੇ ਨਾ ਕੋਈ ਦੇਵ ਹੈ ਨਾ ਦਾਇਤ ਹੈ ਇੱਥੇ ਦੇਵ ਤੇ ਵੀ ਦਾਤ ਬਣ ਗਏ ਜਿਹਨਾਂ ਨੂੰ ਦੇਵ ਤੇ ਕਹਿੰਦੇ ਉਹ ਵੀ ਦਾਇਤ ਨੇ ਹੁਕਮ ਦਾ ਵਿਰੋਧ ਮਾਨ ਪਾਉਂਦੇ ਹੁਕਮ ਦੇ ਬਤਾਵੂ ਚੱਲਣ ਵਾਲੇ ਸਾਰੇ ਰਾਖਸ਼ ਨੇ ਦਾਇਤ ਨੇ ਚਬਕਾਇਦ ਦੀ ਗੱਲ ਨਾਂਕ ਦਾ ਨਾਵਾ ਆਵਾਜ਼ ਸਨਾਤ ਨਾਮ ਤੋਂ ਬਿਨਾ ਸਾਰੇ ਨੀਚ ਨੇ ਨੀਚ ਕੌਣ ਹੁੰਦਾ ਹੈ ਦਾਇਤ ਹੋਦਰ ਤਾਂ ਨਹੀਂ ਜੰਦਤ ਕਜ਼ਮਤ ਹਰੇਤੇ ਕਮਜਾਦ ਨਾਮਕ ਨਾ ਬੱਸ ਇਹਨਾਂ ਨੇ ਦੇਵਦਤ ਆਪਣੇ ਹੱਥ ਆਪਣਾ ਰੱਖੇ ਜੀ ਵੀ ਜਿਹੜਾ ਸਾਡੇ ਨਹੀਂ ਉਹ ਇਹਨਾਂ ਨੂੰ ਕੁਛ ਕਹਿਦੇ ਰਹੋ ਲੋ ਨੂੰ ਕੁਛ ਕਹਿਦੇ ਇਸੇ ਕਰਕੇ ਕਹਿਣਾ ਪੜ ਲੱਗਾ ਛੱਡੇ ਦੋ ਇਹ ਗੱਲ ਜਿਹੜੀ ਰੱਖੀ ਸੀ ਤੇ ਕੁਰਬਾਨੀ ਦੇ ਵਿੱਚ ਸ਼ਬਦ ਅਸੀਂ ਵੀ ਛੱਡੇ ਹੋਏ ਜੀ ਇਹ ਮਤਲਬ ਉਹਨਾਂ ਨੇ ਨਹੀਂ ਛੱਡੇ ਗੁਰਮੁਖ ਦੇ ਛੱਡੇ ਹੋਏ ਜੀ ਸਿੱਖ ਨੇ ਵੀ ਦੋਏ ਛੱਡੇ ਹੋਏ ਜੀ ਦੋਹਰੂ ਕੋਣਾਂ ਗਾਣਾ ਦੇਖ ਰਿਹਾ ਹੈ। ਘਰਮਤ ਦੋਹਾਨੂੰ ਵੀ ਬਰਾਬਰ ਦੇਖ ਰਹੀ ਹੈ ਦੇਵ ਅਤੇ ਦੈਤ ਨੂੰ ਇੱਕੋ ਹੀ ਕੈਟਾਗਰੀ ਜੀ ਸਾਡੇ ਨੂੰ ਦੇਵ ਨੇ। ਦੇਵ ਦੇ ਹੀ ਕਿਸੇ ਤਰੀਕੇ ਨਾਲ ਵੀ ਕੀਤਾ ਜਾਂਦਾ ਹੈ ਕੋਈ ਨਾ ਵਿਰੋਧ। ਉਹ سارے ਦੈਤ ਬਣ ਗਏ। ਕਹੂੰ ਜਾਤਸ਼ ਕਹਾਣੀ। ਕਦੇ ਜਾ ਚੰਗਰਬ ਕਿੰਨਰ ਕਹਾਣੀ ਇਹ ਨਾ ਦੇ ਵਿਦਿਆ ਨਾ ਦੇ ਵਿਦਿਆ ਇਹ ਵਿਚਾਲੇ ਨਾ ਹੁਕਮ ਦਾ ਬਰੋਦਾ ਇਹਨੇ ਦੂਜੇ ਸਮਝ ਜੀ ਇਹਦੇ ਚ ਰਲਿ ਮਿਲਿ ਹੁੰਦੀ ਹੈ ਗਿਆਨ ਵੀ ਦੇ ਰਹੇ ਨੇ ਸੰਸਾਰ ਛੱਟਣ ਦਾ ਹੈ ਇਸ ਸੰਸਾਰ ਨਾਲ ਜੁੜ ਕੇ ਰੱਖਣ ਵਾਲੀ ਵੀ ਗੱਲ ਕਰ ਰਹੇ ਨੇ ਇਹ ਨਾ ਦੇ ਵਿਦਿਆ ਦੇ ਵਿੱਚ ਆਉਂਦੀ ਹੈ ਨਾ ਇਹ ਦੇ ਵਿਦਿਆ ਚ ਆਉਂਦੀ ਹੈ ਕੌਣ ਜਾ ਕਹਾਣੀ ਕਿੰਨਰ ਕਹਾਣੀ ਕਹੂੰ ਰਾਸੀ ਸਾਤ ਕੀ ਤਾਮਸੀ ਹੋ ਆ ਦੇਖ ਇਹ ਕਿਤੇ ਰਾਸੀ ਰਾਜਨੀਤਿਕ ਹੈ ਜੋ ਗੁਣ ਚ ਹੋ ਲੈ ਕਿਤੇ ਤਾਮਸੀ ਨਿਸ਼ਬਧੀ ਤਮੋ ਗੁਣੇ ਸੁਭਾਅ ਹੈ ਕਿੰਨੇ ਸੁਭਾਅ ਤੇ ਰਹਿ ਨੇ ਇਹਨੇ ਆ ਦੇ ਨਾ ਤਾਮਸੀ ਹੈ ਉਹੀ ਉਹੀ ਸੰਤ ਇੱਕ ਸੰਸਾਰੀ ਦੇਵਾ ਕੋਈ ਹੈ ਉਹ ਉਹ ਤਨ ਬਣਾਤੇ ਉੱਥੇ ਇਹ ਜੇ ਪੜ ਲੈਂਦੇ ਤਾਂ ਉੱਥੇ ਨਹੀਂ ਸੀ ਗਲਤੀ ਕਰਦੇ ਜੇ ਪਹਿਲਾਂ ਇਹ ਬੜਿਆ ਹੁੰਦਾ ਮੇਰਾ ਇਹ ਬੜਿਆ ਆਇਆ ਤੇ ਉੱਥੇ ਮੈਂ ਗਲਤੀ ਨਹੀਂ ਕੀਤੀ ਮੈਨੂੰ ਪਤਾ ਲੱਗਾ ਸੀ ਕਿ ਉਹ ਤਨ ਕਮੇ ਬਣ ਜਾਣਗੇ ਜਿਹਾ ਹੋਇ ਇੱਕ ਤਸਬਾਸ਼ਾ ਇੱਕ ਕਹਿੰਦਾ ਨੇ ਤੈਨੂੰ ਤਨ ਕਮੇ ਬਣ ਗਏ ਤੁਹਾਡੇ ਅਡਾ ਹਾਂ ਜਦੋਂ ਭਾਰੂ ਆ ਜਿਹੜੀ ਗੱਲ ਉਸ ਜਿਹੜੇ ਜਿਹੜੀ ਗੱਲ ਭਾਰੂ ਆ ਦਿਮਾਗ ਦੇ ਉੱਤੇ ਉਹ ਆਦਮੀ ਕਰੋਧ ਚ ਗੁੱਸੇ ਜਾ ਕੇ ਕੁਝ ਵੀ ਕਰ ਸਕਦਾ ਉਹ ਆਦਮੀ ਦਿਹਾੜੇ ਘਰ ਦੇ ਵਿੱਚ ਕੁਝ ਵੀ ਗੁਦਾਣ ਵੀ ਕਰ ਸਕਦਾ ਉਹ ਆਦਮੀ ਧਰਮ ਦਾ ਖਰਬ ਵੀ ਕਰ ਸਕਦਾ ਆਦਮੀ ਤਾਂ ਹੋਈ ਉਹਦੀ ਹਸਤਾ ਬਦਲਦੀ ਹੈ ਨਾ ਆ ਡਾਟ ਰੀਡ ਕਹੂੰ ਰਾਸੀ ਸਾਤ ਕੀ ਤਾਮਸੀ ਹੋ ਕਹੂੰ ਜੋਗ ਵਿਦਿਆ ਧਰੇ ਤਪਸੀ ਹੋ ਕਹੂੰ ਜੋਗ ਤੋਂ ਅਲੱਗ ਹੋ ਗਏ ਨਾ ਜੋਗੀ ਬਣ ਗਿਆ ਵੀ ਪਰਮੇਸ਼ਰਾਂ ਨੂੰ ਛੁੱਟ ਧਰੇ ਤਪਸੀ ਹੋ ਤਬ ਦਾ ਪਹਿਸਤਾਲ ਕਰ ਤਿੰਨਾ ਤੋਂ ਅਲੱਗ ਤਿੰਨਾ ਤੋਂ ਨਹਿਰਾ ਹੋ ਕੇ ਤਿੰਨਾ ਨੂੰ ਸਮਝਦਾ ਵੀ ਤਿੰਨੇ ਮਾਇਆ ਚਲੇ ਤਿੰਨਾ ਨੂੰ ਇਹ ਸਮਝ ਕੇ ਮਾਇਆ ਅਲੱਗ ਫਿਰੋ ਕਰਦੇ ਕਹੂੰ ਕਹੂੰ ਰੋਗ ਰਹਤਾ ਗੁਰਬਾਣੀ ਤੇ ਨਾਦੋ ਲੱਗਣਾ ਰਾਹ ਤੇ ਨਾਦੋ ਲੱਗ ਐ ਰਾਹ ਪਹਿ ਗਿਆ ਵੈਦਿਕ ਮਤ ਰੂਪਿਆ ਹੈ ਕਹੂੰ ਰੋਗ ਰਹਤਾ ਕਹੂੰ ਜੋਗਯੁਗ ਤੁਮ ਕਿਦੇ ਦਾ ਜੋਗ ਸਾਧਨਾ ਕਰ ਰਹੇ ਜੋਗਤੀ ਉਹ ਲੜਾ ਰਹੇ ਕਿਹੜੇ ਕਿਹੜੀ ਦਵਾਈ ਖਾਈਏ ਅਰੋਗ ਦੂਰ ਹੋ ਜਵੇ ਕਹੂੰ ਰੋਗ ਰਹਤਾ ਕੋਈ ਦਵਾਈ ਬਦਲ ਲੈਂਦਾ ਸਲਾਮ ਲੈਂਦਾ ਲੋਕਾਂ ਦੀ ਰੋਗ ਠੀਕ ਨਹੀਂ ਹੋ ਰਿਹਾ ਮੱਤਾ ਬਦਲੀ ਜਾਂਦਾ ਰੋਗ ਠੀਕ ਨਹੀਂ ਹੋ ਰਿਹਾ ਸਮਝੇ ਨਹੀਂ ਕਿਤੇ ਰੋਗ ਠੀਕ ਕਰੀ ਬੈਠਾ ਰੋਗ ਰਹਤ ਹੋਇਆ ਬੈਠਾ ਭਾਗਤਾਂ ਰੋਗ ਰਹਤ ਹੋਇਆ ਬੈਠੇ ਨੇ ਜੋਗੀ ਅਜੇ ਉਹੀ ਸਮਾਧੀ ਹੋ ਰਹੀ ਜਾਂਦੇ ਨੇ ਬੜਾ ਫੇਰ ਨਾਲੇ ਜੋ ਮੜਾ ਹੀ ਫੇਰੀ ਜਾਂਦੇ ਉਹ ਚੇੜੁਲੇ ਹੋਏ ਨੇ ਇਹਨਾਂ ਦਾ ਰੋਗ ਠੀਕ ਨਹੀਂ ਹੋਇਆ ਉਹਨਾਂ ਦਾ ਜਿਹੜਾ ਰੋਗ ਰਹਤਾ ਉਹ ਵਿਲਾ ਹੋਇਆ ਬੈਠਾ ਉਹ ਨਹੀਂ ਕਹਿੰਦਾ ਦਵਾਈ ਜਿਹੜਾ ਦਵਾਈ ਖਾ ਰਿਹਾ ਨੀਵਤਾਂ ਵਾਲਾ ਦਵਾਈ ਖਾ ਰਿਹਾ ਨਾ ਨੀਵਤਾਂ ਵਾਲਾ ਸਜਰੇ ਉੱਠ ਕੇ ਪਹਿਲਾਂ ਵਾਲਾ ਹੀ ਫੇਰਦਾ ਉਹ ਪੂਰਾ ਹੀ ਮਰੀਜ਼ ਆ ਜੋ ਸਮਾਦਿਨ ਵਾਲਾ ਵੀ ਮਰੀਜ਼ ਜਿੱਦਾਂ ਜੰਮਿਆ ਉਦੋਂ ਹੀ ਕਰਦਾ ਰਾਂ ਸਵਾਬਦਾ ਹੋਣਾ ਨੂੰ ਰੋਜ਼ ਇਹਦਾ ਮਤਲਬ ਦਵਾਈ ਦੀ ਡੋਜ਼ ਵਧ ਰਹੀ ਹੈ ਉਹਦੀ ਡੋਜ਼ ਵਧ ਰਹੀ ਬਿਮਾਰੀ ਵਧ ਰਹੀ ਹੈ ਜੇ ਡੋਜ਼ ਵਧ ਰਹੀ ਹੈ ਬਿਮਾਰੀ ਵਧ ਰਹੀ ਹੈ ਇਹਨੇ ਮਾੜਾ ਸਟਾਈਲ ਬਣ ਕੇ ਤੇ 108 ਮਿੰਟਾਂ ਦੀ ਕਾਲੀ ਉਹਦਾ ਰੋਗ ਵੱਧ ਗਿਆ ਸੀ 27 ਮਿੰਟਾਂ ਤੱਕ ਨਹੀਂ ਕੀਤਾ ਹੈ ਕਬੀਰ ਨੇ ਇਕ 28 ਮਿੰਟਾਂ ਤੇ ਅਟੈਕ ਕੀਤਾ ਮਾੜਾ ਪਿਆ ਤਾਂ ਕਿਆ ਪਿਆ ਮਾੜਾ ਮੇਲੀ ਚਾਰ ਉਹਦਾ ਅਟੈਕ ਕੀਤਾ ਤੂੰ ਵੱਡਾ ਹੰਕਾਰੀ ਹੋ ਗਿਆ ਸਾਈ ਮੜਗਾੜੀ ਵਾਲਾ ਦਨ ਕੀਤਾ ਅਟੇ ਉਹ ਵੱਡੇ ਦੇ ਕੀਤਾ ਇਹਦਾ ਵੱਡਾ ਹੋ ਗਿਆ ਜੇ ਕੋ ਨੋ ਤਰਾਏ ਵੱਡਾ ਵਣ ਵਾਦ ਸਾਈ ਮੜਗਾ ਦੀ ਸੀ ਪਹਿਲਾਂ ਸਾਈ ਸੁਭਤੀ ਕੀਤੀ ਆਇਕ ਸੁਭਤੀ ਆਕੇ ਸੀ ਉਹਨੇ 4 ਗੁਣਾ ਖਾ ਲਿਆ ਇਕੱਠਾ ਹੀ ਉਹਦਾ ਟੈਕ ਕੀਤਾ ਜਾ ਕੇ ਸਾਈ ਮੜਗਾੜੀ ਦੇ ਰਿਖੀ ਤੋਤਾ ਅਜੋ ਪ੍ਰਾਇਮਰੀ ਕਲਾਸ ਵਾਲਾ ਉਹਨੂੰ ਤਾਂ ਮੋੜਿਆ ਜਾ ਸਕਦਾ ਤੇ ਸਾਈ ਵਾਲੇ ਨੂੰ ਮੋੜੇ ਨਹੀਂ ਜਾ ਸਕਦਾ ਇਹਨਾ ਵਿਗੜ ਗਿਆ 108 108 108 ਜਿਹੜਾ ਬਣ ਗਿਆ ਉਹ ਇਹਨਾ ਵਿਗੜ ਅਮਰਦਾਸ ਨੂੰ ਕਹਿਣਾ ਆਪਿਆ ਚਿੱਤੇ ਜਿਰ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਪੱਥਰ ਬਣ ਕੇ ਹਲਣੇ ਦਾਸਰ ਹੋ ਰਿਹਾ ਚਿੱਤ ਮੈਲੇ ਨਾ ਕਠੋਰ ਹੋ ਤੈਨੂੰ ਮੁਖ ਨਾਮ ਮੂਦੇ ਵਿੱਚ ਹੀ ਆ ਦੋ ਜਪਦੇ ਹੂ ਵਾਲਾ ਉਪਜਾਦਰੋਂ ਨਹੀਂ ਪੈਦਾ ਹੋ ਸਕਦਾ ਰੰਦੇ ਲੋਕ ਉਦੋਂ ਨੇ ਨਾ ਪੈਦਾ ਹੁੰਦੇ ਹੁਣ ਇਹ ਨਹੀਂ ਰ ਪੱਥਰ ਦੇ ਵਿੱਚੋਂ ਵੀ ਪੈਦਾ ਹੁੰਦੇ ਤੈਨੂੰ ਭੁੱਖਾ ਨਾਮ ਨੇ ਉਪਜਾਇਆ ਦੂਜੇ ਵਿਆਪਾਂ ਚੋਰ ਇਹਨਾਂ ਦੇ ਅੰਦਰ ਤਾਂ ਮਾਇਆ ਦੀ ਭੁੱਖਾ ਇਹ ਤਾਂ ਚੋਰ ਨੇ ਮਾਇਆ ਬੈਪ ਕੀ ਸਕੋ ਲੋ ਬਿਆਪ ਗਿਆ 27 ਕਹਿੰਦੇ ਤਾਂ 108 ਦੀ ਕੀਤੀ ਹੈ ਵੀ ਲੋਕਾਂ ਨੂੰ ਪ੍ਰਭਾਵਿਤ ਕਰੀਏ ਇਹ ਤਾਂ ਆਪਣਾ ਰਾਜਨੀਤਿਕ ਹੈ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੈ ਨੇ ਗੇਰ ਵਾਲਾ ਕਾਠ ਕੀ ਕਾਤ ਖਲਾਵਾ ਲੋਹੇ ਲੋਹੇ ਲੋਕਾਂ ਨੂੰ ਦਿਖਾਉਣ ਖਾਤਰ ਆ ਵਾਲਾ ਹਰਦੇ RAM ਨੇ 체ਤੇ ਹੋਇਆ ਜਪਣੀ ਕਿਹਾ ਹੋਇਆ ਕਿਉਂਨੇ ਜਪਣੀ ਕਾਠ ਕੀ ਕਾਤ ਖਲਾਵਾ ਲੋਹੇ ਹਰਦੇ RAM RAM ਦਾ ਤੇਰੇ ਅੰਦਰ ਉਹ ਤੂੰ ਜਾਗਿਆ ਵਾਸਤੇ ਬਾਹਰ ਵਾ ਕੀ ਕਰਦਾ ਬੌਲਾ ਕੀ ਦਿਖਾਉਣਾ ਲੋਕਾਂ ਨੂੰ ਕੀ ਦਿਖਾਉਣਾ ਇਹ ਤਾਂ ਦਿਖਾਵੇ ਖਾਤਰ ਹੈ ਸਭ ਕਹੂੰ ਭੂਮੀ ਆ ਜਿਹੜਾ ਹੈ ਨਾ ਸਰੀਰ ਸਰੀਰ ਦਾ ਜੋ ਖਾਣਾ ਪੀਣਾ ਭੂਮੀ ਕੀ ਭੋਗਤ ਮੈਂ ਇਹਦੇ ਚਲ ਜਿਆ ਪਰਮ ਭੋਗਤਨ ਇਹਦਾ ਪਰਮਾ ਇਹਨੇ ਪਰਮ ਪਰਮ ਚੋਂ ਆਇਆ ਜਿਹੜਾ ਸਾਰੀ ਗਿਆਨ ਹੈ ਨਾ ਸਤ ਸਾਰੀ ਗਿਆਨ ਇਹ ਹੀ ਖੁਰਾਕ ਬਣਿਆ ਹੋਇਆ ਮਨਵੱਤਾ ਦਾ ਗਿਆਨ ਹੈ ਸਤ ਸਾਰੀ ਗਿਆਨ ਖੁਰਾਕ ਬਣਿਆ ਹੋਇਆ ਮਨਵੱਤਾ ਦਾ ਗਿਆਨ ਇਹ ਵੀ ਸਤ ਸਾਰੀ ਗਿਆਨ ਇਹਦੇ ਪਰਮ ਚ ਇਹਦੇ ਅੰਸ਼ਾ ਇਹ ਹੀ ਖਾਈ ਜਾਂਦਾ ਸਾਰੀ ਗੱਲ ਲਈ ਜਾਂਦਾ ਇਹਦੇ ਪਰਪੇ ਚ ਫਸਿਆ ਹੈ ਬਹੁਤ ਗੱਲੀ ਹੋ ਗਿਆ ਹਨੂ ਬ੍ਰਾਂਡ ਵੇਦਾਂਤੀ ਹੋ ਗਿਆ ਉਹ ਹੋ ਗਿਆ ਇਹਦੇ ਚ ਫਸਿਆ ਹੈ ਇਹ ਸੰਸਾਰੀ ਗਿਆਨ ਸਾਰਾ ਹੀ ਹੈ ਇਹ ਵੀ ਤਾਂ ਭੁਗਤ ਗਿਆਨ ਇਹ ਵੀ ਤਾਂ ਖਾਇਆ ਜਾਂਦਾ ਇਹਦਾ ਰੰਗ ਚੜਿਆ ਹੈ ਕਈ ਜਗ੍ਹਾ ਕਹੂੰ ਦੇਵ ਕੰਨਿਆ ਕਹੂੰ ਦਾਣਵੀ ਹੋ ਕਹੂੰ ਦੇਵ ਕੱਢ ਦੀ ਹੈ ਜੋ ਕੰਨਿਆ ਦੇਵਤਾਨੀ ਮਾਤਾ ਛੋਟੀ ਜਲਦੀਆਂ ਬੱਤ ਕੰਨਿਆ ਛੋਟੀ ਹੁੰਦੀ ਹੈ ਨਾ ਕੰਨਿਆ ਵਿਆਹੀ ਹੋਈ ਨਹੀਂ ਹੁੰਦੀ ਜੇ ਸੌਰੇ ਜਾਊਗੀ ਤਾਂ ਹੀ ਵੇਖੀ ਜਾਊ ਨਾ ਦੇਵ ਕੰਨਿਆ ਸੌਰੇ ਜਾ ਸਕਦੀ ਹੈ ਉਹ ਜਿਹੜੀ ਡੱਡੀਆਂ ਖੜੀਆਂ ਨਾ ਜੀ ਕਿਹਾ ਸੀਗਾ ਰੋਵੇ ਬਾਲੀ ਰੋਵੇ ਨਾ ਰੇਪਤਾਰ ਨਾ ਰੇਪਤਾਰ ਦੇਵ ਕੰਨੈ ਜੁਲਦੀ ਐ ਵਾਲੀ ਰੋਵੇ ਨਹੀਂ ਪਧਾਰਨਾ ਤੂ ਹੈ ਪਧਾਰ ਐ ਨਹੀਂ ਪਧਾਰ ਕਿੱਥੋਂ ਬਲੇ ਨੂੰ ਗਾਨ ਕੌੜ ਲੈ ਆਵੇ ਸੌਰੀ ਕੌਣ ਭੇਜੇ ਦੇਵਤਾ ਨੂੰ ਪਤਾ ਤਾਂ ਹੈ ਵੇਦ ਹੈ ਨਾ ਕੋਲ ਪਤਾ ਤਾਂ ਹੈ ਵੀ ਆ ਗੱਲ ਹੈ ਉਹ ਦੱਸੇ ਕੌਣ ਸਮਝ ਹੈ ਦੀ ਕਹੂੰ ਕੰਨਿਆ ਕਹੂੰ ਦਾਨਵੀ ਹੋ ਕਿਤੇ ਦਾਨਵੀ ਹੋ ਉਹਨਾਂ ਨੂੰ ਪਰਵਾਇ ਨਹੀਂ ਉਹ ਤਾਂ ਕਹਿੰਦਾ ਸਾਰੇ ਸਭ ਕੁਝ ਹੈ ਰੱਬ ਤਾਂ ਹੁੰਦਾ ਹੀ ਨਹੀਂ ਕੁਝ ਉਹਨਾਂ ਨੇ ਆਪਣੀ ਫੱਟੀ ਉਧਰਲੀ ਪੋਚੀ ਹੋਈ ਹੈ ਦੇਵਗੰਨਾ ਨੂੰ ਆਵਾਜ਼ ਆਇਆ ਸੱਦਰਲੀ ਦਾਨਵਾਲੇ ਫੱਟੀ ਉਧਰ ਮਕਾਇਆ ਹੈ ਉਹ ਕਹਿੰਦਾ ਸੰਸਾਰ ਹੈ ਜੋ ਕੁਝ ਹੈ ਇਹ ਸੱਚ ਹੈ ਜੋ ਬੁਰਿਆ ਸੱਚ ਹੈ ਬਾਕੀ ਸਭ ਝੂਠ ਹੈ ਉਹ ਦੇਵ ਕਹਿੰਦਾ ਉਹ ਜਿਹੜੀ ਦਸੀ ਕਿ ਉਹ ਆਪ ਨਹੀਂ ਬਤਾ ਦੇਵਗੰਨਾ ਕੀ ਦੱਸੇ ਹੋਰ ਤਾਂ ਗਈ ਗੱਲ ਤਾਂ ਉਹ ਦੱਸੇ ਸੋਹਰੇ ਹੰਦੀ ਜਿਹੜੀ ਸੋਹਰੇ ਗਈ ਹੋਵੇ ਪਤਾਲ ਦੀ ਗੱਲ ਤਾਂ ਉਹ ਦੱਸੇ ਜਿਹਦਾ ਵੇਲ ਹੋਇਆ ਹੋਵੇ ਉਹਨੂੰ ਤਾਂ ਪਤਾ ਹੀ ਕੋਈ ਨਹੀਂ ਉਹ ਕਿੱਥੇ ਬੋਲੀਏ ਬੋਲੀ ਕਿੱਥੇ ਦੀ ਹੈ ਕਿੱਥੇ ਕੜੀਏ ਗੱਲ ਉਹ ਲੜਾਈ ਨਾਲ ਬੰਦੀ ਜੁਲਦੀ ਹੈ ਜਿੱਥੋਂ ਪੈਦਾ ਆ ਰਾਖਸ਼ਾਂ ਦੀ ਲੜਾਈ ਇਸ ਗੱਲ ਦੀ ਆ ਕੋਲੋਂ ਦਾ ਦੇ ਉਹ ਉਹ ਸਮਝਾ ਨਹੀਂ ਸਕਦੀ ਰਾਖਸ਼ਾਂ ਨੇ ਭੱਟੀ ਪੋਚੀ ਜੇ ਬੰਦੇ ਦੀ ਫੇਰ ਲੋਡ ਪੈਂਦੀ ਐ ਸਤਗੁਣੀ ਫੇਰ ਮੁਖੀ ਦੀ ਲੋਡ ਪੈਂਦੀ ਐ ਸਤਗੁਣੀ ਦੇਵ ਕੰਨੇ ਆਈ ਐ ਸਤਗੁਣੀ ਦੇਵਗੇ ਨਹੀਂ ਅਬ ਯਾਰੀ ਹੋਰ ਕੀ ਐ ਫੇਰ ਉਹਦੀ ਲੋਡ ਪੈਂਦੀ ਐ ਫੇਰ ਉਹਨੂੰ ਲਿਆਉਂਦੇ ਨੇ ਵੀ ਹੁਣ ਤੁਸੀਂ ਡੱਡਾ ਕੌਣ ਕਰੇ ਦੋਏ ਵਿਦਵਾਨ ਨੇ ਤਰ੍ਹਾਂ ਦੇ ਵਿਦਵਾਨ ਵਿਦਵਾਨਾਂ ਦਾ ਡੱਡਾ ਨਿਰਦਾਉਤ ਵਿਦਵਾਨ ਕਰਦੀ ਆ ਕੇ ਬੁੱਧੀ ਬੁਲਾਏ ਜਦੋਂ ਜਦ ਬਵੇਕ ਮੁੱਦੀ ਪਰਖਣ ਨਹੀਂ ਹੁੰਦੀ ਰਲਣਾ ਨਹੀਂ ਹੁੰਦਾ ਬਵੇਕ ਮੁੱਦੀ ਦੇ ਅੱਗੇ ਕੋਈ ਖੜੀ ਵੀ ਹੋਈ ਨਹੀਂ ਸਕਦਾ ਕੋਈ ਨਹੀਂ ਖੜ ਸਕਦਾ ਸਾਹਮਣੇ ਨਾ ਅੱਜ ਤੱਕ ਕੋਈ ਖੜਿਆ ਨਾ ਕਹਾਨੂੰ ਕੋਈ ਖੜੇ ਇਤਤ ਦਾ ਗਿਆਨ ਕੀਆ ਯਾਦੀ ਹੈ ਜਲਕਵੀਰ ਕਹਿੰਦਾ ਦੇਖੋ ਭਾਈ ਗਿਆਨ ਕੀਆ ਯਾਦੀ ਸਾਰੇ ਉੜਾਤੇ ਕਾਸੀਬਤ ਸਰੀ ਉੜਾ ਕੇ ਰੱਖਤੀ ਓਕੇ ਵਕਤਲੇ ਉੜਾਈ ਨਹੀਂ ਹੋਈ ਸਾਰੀਓ ਖੜਿਆ ਹੀ ਨਹੀਂ ਕੋਈ ਅੱਗੇ ਇਹਨਾਂ ਕੋ ਖੜਨੂ ਹੁੰਦਾ ਕੀ ਆ ਬਜਾਰਿਆਂ ਨੂੰ हां आपस ਵਿੱਚ ਇੱਕ ਦੂਜੇ ਨਾਲ ਉਹ ਕਿਉਂ ਦੋਹਾਵਾਸਾਂ ਦੇ ਕੁਝ ਹੁੰਦੇ ਨੇ ਆਪਸ ਵਿੱਚ ਦੇ ਕੁਝ ਹੀ ਹੁੰਦੇ ਨੇ ਵਿਦਵਾਨ ਕਹੂੰ ਜੱਛ ਵਿਦਿਆ ਧਰੇ ਮਾਨਵੀ ਹੋ ਕਹੂੰ ਜੱਛ ਵਿਦਿਆ ਤੇ ਯਕਸ਼ਾਂ ਦੇ ਵਿਦਿਆ ਇਹ ਮਨੁੱਖੀ ਗੰਦ ਇਹ ਜਿਆਦਾ ਨਾ ਉਧਰ ਨਾ ਇਹ ਵਿਰੋਧ ਕਰਦਾ ਬਾਨਵੀ ਗਿਆਨ ਅਨੁਜੜ ਮਾਨਵੀ ਬੁੱਧੀ ਹੈ ਨਾ ਤਾਂ ਵਿਰੋਧ ਕਰਦੀ ਹੈ ਰੱਬ ਦਾ ਨਾ ਰੱਬ ਦੀ ਇਹਨੂੰ ਲੋੜ ਲੋੜ ਵੀ ਨਹੀਂ ਉਹ ਕਹਿੰਦਾ ਬਸ ਆ ਤਾਂ ਵਸਾ ਸਾਡੇ ਤਾਂ ਰੋਟੀ ਬਲੀ ਜਾਵੇ ਇਹੀ ਬਹੁਤ ਹੈ ਪਰ ਆਪ ਨੂੰ ਐਸੇ ਕਰਕੇ ਬੁਝਦੇ ਨੇ ਉਹ ਧਰਮ ਨੂੰ ਬਈ ਸੁੱਖਾਂਦ ਰੱਖੀ ਕੋਈ ਐਸਾ ਮਤਲਬ ਹੈ ਸੰਕਟ ਰਾਹ ਜਮ ਸੰਕਟ ਮੋਚਨ ਸੰਸਾਰੀ ਸੰਕਟ ਕਹੂੰ ਜੱਚ ਵਿਦਿਆ ਤਰੇ ਮਾਨ ਹੋ ਕੋ ਜੱਚ ਵਿਦਿਆ ਜੱਚ ਵਿਦਿਆ ਦਾ ਸੰਸਾਰੀ ਵਿਦਿਆ ਹੁੰਦੀ ਐ ਉਹ ਬਾਦਵੀ ਵਿਦਿਆ ਉਹਨਾਂ ਨੇ ਵਿਚਾਰਨ ਦੇ ਦੋ ਜਦੋਂ ਪਰਮੇਸ਼ਰ ਚਾਹੂਗਾ ਸਾਨੂੰ ਲੈ ਜਾਊਗਾ ਚਲ ਬੁਗਾਤੀ ਗੱਲ ਹੁਣ ਅਸੀਂ ਤਾਂ ਉਹਦੇ ਪੜ੍ਹ ਲੈ ਕੇ ਚੱਲਦੇ ਆ ਚ ਜਾਲੋਦੀ ਹੋਊਗੀ ਜਿੱਥੇ ਉਹਦੀ ਮਰਜ਼ੀ ਉੱਥੇ ਰਹੇਗੀ ਉਹ ਨਾਲ ਨਹੀਂ ਪਰ ਅਭੀ ਅਸੀਂ ਕੁਝ ਕਰਨਾ ਹੈ ਦੱਸਿਆ ਨਹੀਂ ਨਾ ਕਿਸੇ ਨੇ ਨਾ ਰਾਖਸ਼ਾ ਨੂੰ ਇਸ ਗੱਲ ਦਾ ਰਾਖਸ਼ਾ ਤਾਂ ਚਲੋ ਵਿਰੋਧੀ ਦੇਵਤੇ ਜਾਣਦੇ ਜੀ ਦੇਵਤੇ ਉਲਟੇ ਅਰਥ ਕਰੀ ਬੈਠੇ ਨੇ ਅਸਲ ਦੇ ਵਿੱਚ ਜਿਹੜੇ ਦੋ ਰੂਪ ਨੇ ਨਾ ਹੁਕਮ ਦੇ ਦੋ ਰੂਪ ਨਹੀਂ ਪਤਾ ਜੀ ਲੋਕ ਨੂੰ ਆ ਦੋ ਰੂਪ ਨੇ ਹੁਕਮ ਦੇ ਜੀ ਦੀ ਗੱਲ ਚੱਲ ਰਹੀ ਹੈ ਦੋ ਬਾਣੇ ਰਹੀਆਂ ਦੀ ਗੱਲ ਚਾਹੀਏ ਜਿਹੜੇ ਤਾਂ ਆਪਣੇ ਬਾਣੇ ਚੱਲਦੇ ਨੇ ਉਹ ਤਾਂ ਬਸ ਆਪਣੇ ਮਾਇਆ ਚ ਮਸਤ ਨੇ ਇਹ ਆਪਣੇ ਬਾਣੇ ਚੱਲਦੇ ਨੇ ਜਿਹੜੇ ਗੁਰਗੇ ਬਾਣੇ ਚੱਲਦੇ ਨੇ ਉਹ ਮਾਇਆ ਤੋਂ ਛੜਾ ਛੜਾ ਰਹੇ ਨੇ ਇਹ ਛੜਾ ਲਿਆ ਉਹ ਆ ਲੜਾਈ ਲੜਦੇ ਨੇ ਉਹ ਦੂਏ ਪਾਸੇ ਦੀ ਗੱਲ ਕਰਦੇ ਬਸ ਇਹ ਗੁਰੂ ਘਰ ਮਨ ਮੁਖੀ ਦੀ ਗੱਲ ਹੈ ਜਲਦੀ ਇੱਥੇ ਇਹ ਜਿਹੜਾ ਨਕਸ਼ਾ ਦਿਖਾਇਆ ਜਿਆਦਾ ਡੀਪਲੀ ਦਿਖਾਇਆ ਹੋਇਆ ਪਰ ਇਹ ਔਖਾ ਹੋਰ ਨਾ ਜਿਆਦਾ ਹੈ ਕੁਰਬਾਨੀ ਨੂੰ ਸਮਝਣ ਨਾਲ ਜਿਆਦਾ ਔਖਾ ਹੈ ਹਾਂ ਜੇ ਉਹ ਇਹਦੀ ਮਰਨਾ ਹੋ ਸਮਝਾਉ ਉਹਦੀ ਮਰਨਾ ਹੈ ਸਮਝਾਉ ਇਹ ਜ਼ਰੂਰ ਹੈ ਹੱਥ ਦੋਏ ਨਾ ਇੱਕ ਦੂਏ ਨੂੰ ਧੋਦੇ ਖਬਰ ਸੱਚਾ ਇਹ ਖਬਰ ਹੱਥ ਹੈ ਸੱਚਾ ਨਹੀਂ ਹੈ ਉਹ ਸੱਚਾ ਹੈ ਕੁਰਬਾਨੀ ਸੱਚਾ ਹੱਥ ਹੈ ਸ਼ਕਤੀ ਸੱਚਾ ਜਿਆਦਾ ਹੁੰਦੀ ਹੈ ਇਹ ਖਬਾਤ ਹੈ ਪਰ ਜੇ ਖਬਾਤ ਨਾ ਹੋਵੇ ਸਜਾਈ ਤਾਂ ਹੋਤੋ ਸਜਾ ਨਾ ਹੋਵੇ ਖਬਰੀ ਤਾਂ ਹੋਤੋ ਇਹ ਦੁਆ ਦੇ ਬਿਨਾ ਗੱਡੀ ਚੱਲਦੀ ਨਹੀਂ ਹੱਥ ਦੋਏ ਜਾਣਦੇ ਇਹਦੀ ਜਗ੍ਹਾ ਜਿਹੜੀਆਂ ਭਾਈ ਗੁਰਦਾਸ ਦੀਆਂ 12 ਨੂੰ ਬਣਾ ਲਿਆ ਨਾ ਉਹਨਾਂ ਨੇ ਇਹਦੀ ਜਗ੍ਹਾ ਉਹਨੂੰ ਬਣਾ ਲਿਆ ਉੱਥੇ ਜਾਣ ਬੁਝ ਕੇ ਕੀਤੀ ਸੀ ਸ਼ਰਾਰਤ ਐ ਕਿ ਉਹ ਸੀਗੇ ਸਾਰੇ ਜਾਣਦੇ ਕੀ ਗਾਉ ਦਾ ਹੋ ਚੁੱਕਿਆ ਸਾਰਿਆਂ ਨੂੰ ਪਤਾ ਸੀ ਉਹ ਇਹਦੀ ਜਗਾ ਭਾਈ ਹੋਰ ਰਾਦੀ 12 ਬੜਦੀ ਲਿਆ ਕੇ ਉਹਨੂੰ ਕਹਿੰਦਾ ਇਹਨੂੰ ਵਦ ਕਰਾਤਾ ਬੜੀ ਢੂੰਗੀ ਸ਼ਰਾਰਤ ਨਾ ਬਹੁਤ ਦੇਰ ਦਾ ਵਦ ਕਰਾਇਆ ਹੈ ਇਹਦੇ ਖਿਲਾਫ ਜੇ ਇਹ ਆ ਜਾਏ ਬਾਹਰ ਗੁਰਮਤਿ ਦਾ ਸਵਾਲ ਨਹੀਂ ਪੈਦਾ ਹੁੰਦਾ ਬਿਨਾਂ ਬਾਹਰ ਆਵੇ ਪ੍ਰਗਟ ਹੋਵੇ ਬਰਬਤ ਪਾਸੇ ਜਗਾਈ ਕੋਈ ਨਹੀਂ ਥੇ ਉਹ ਪਾਈਗਰਦਾਰ ਦੀਆਂ 12 ਭਗਤਵਾਲਾ ਬਾੜ ਤੇ ਲਾ ਕੇ ਹੋਰੇ ਹੋਰ ਕੁਝ ਬਾੜ ਕੇ ਉਹਨੂੰ ਕੁਝੀ ਰੌਲਾ ਪਾ ਕੇ ਅਰਥਾਂ ਦੇ ਰਸ ਕਰਦੇ ਚੱਲ 250 ਸਾਲ ਹੋ ਗਏ ਕਦੀ ਕਿਹੜੇ ਪਾਇਆਂ ਨੂੰ ਸਿੱਖਾਂ ਨੂੰ ਪੈਰ ਹੁਣ ਬਹੁਤ ੜਾਉਂਦੇ ਸੀ ੜਾਉਂਦੇ ਨੇ ਜੋ ਵੀ ਖੁੱਲ ਨਹੀਂ ੜਾ ਸਕਣਾ ਕਿਉਂਕਿ ਪਤਾ ਨਹੀਂ ਸੀ ਜਨਾਜਰ ਉਹਨਾਂ ਜਰ ੜਾਉਂਦੇ ਰੇ ਜਨਾਜਰ ਗੱਲ ਦਾ ਭੇਦ ਨਹੀਂ ਸੀ ਖੁੱਲਿਆ ਕਿ ਭੇਦ ਤੇ ਖੁੱਲ ਗਿਆ ਸਾਰੀ ਗੱਲ ਦਾ ਉੜਕੀ ਦੇ ਹੁਣ ਤਾਂ ਚੁੱਪ ਕਰ ਜਾਂਦੇ ਨੇ ਸੁਣ ਕੇ ਉੜਕੀ ਗੱਲ ਉਹ ਜਾਂ ਦੋ ਤਲਵਾਰਾਂ ਲਿਖਿਆ ਮੈਂ ਕਿਹਾ ਵੀ ਲੋਹੇ ਦੀਆਂ ਦੋ ਤਲਵਾਰਾਂ ਛੇਵੇਂ ਬਾਦਸ਼ਾਹ ਨੇ ਪਾਈਆਂ ਹੀ ਨਹੀਂ ਛਪ ਗਿਆ ਗੁਰਮਤਿ ਪ੍ਰਕਾਸ਼ ਦੇ ਵਿੱਚ ਬੋਲੇ ਹੀ ਨਹੀਂ ਕੋਈ ਸਾਹਤ ਕਰਤਾ ਗੁਰਬਾਣੀ ਚ ਇਹ ਦੱਸੋ ਕਿ ਪਾਈਆਂ ਨੇ ਪੀੜੀ ਦੀ ਤਲਵਾਰ ਲੋਹੇ ਦੀ ਹੁੰਦੀ ਹੋਈ ਨਹੀਂ ਚੁੱਪੇ ਕਰਕੇ ਆਹਨਾਂ ਨੇ ਕਭ ਜਿੰਨਾ ਜੇ ਬੋਲਾਂਗੇ ਜਿਆਦਾ ਛੇਤੀ ਪਤਾ ਲੱਗੂ ਚੁੱਪ ਕਰਜੋ ਬਾਪੜਾ ਮਾ ਚੁੱਪ ਕਰ ਗਏ ਵੀ ਜੇ ਰੌਲਾ ਪਾਇਆ ਵਿਰੋਧ ਕੀਤਾ ਛੇਤੀ ਪਤਾ ਲੱਗ ਜੂ ਲੋਕਾਂ ਨੂੰ ਜਿਨਾ ਜੇ ਟੱਪ ਦਾ ਹੱਟ ਪਾ ਲੋ ਸਾਲ 20 ਸਾਲ ਉਹ ਬਾਪੜਾ ਵਾਲੇ ਹਰਾ ਮੈਂ ਜਿਵੇਂ ਬਾਪੜਾ ਕਰ ਰਹੀ ਚੁੱਪ ਕਰਜੋ ਐਵੇਂ ਚੁੱਪ ਕਰਦੇ ਜਾਣ ਕੇ ਕਿਸੇ ਵੀ ਗੱਲ ਨੂੰ ਦੱਬ ਲੈਂਦੇ ਨੇ ਵੀ ਜੇ ਚਰਚਾ ਕੀਤੀ ਛੇਤੀ ਪਤਾ ਲੱਗ ਜੂ ਲੋਕਾਂ ਨੂੰ ਜਿੰਨਾ ਜਰ ਨਾ ਪਤਾ ਲੱਗੇ ਲੋਕਾਂ ਨੂੰ ਇਹਦਾ ਚੱਲਦਾ ਇਸ ਕਾ ਜੇ ਪਤਾ ਲੱਗੇ ਨਾ ਇਸ ਕਾ ਪੇੜ ਜੂ ਅਗਿਆਨੇ ਬੈਠੇ ਨਾ ਅਗਿਆਨੇ ਜਦ ਅੱਥੇ ਗਏ ਭਗਾਂ ਦੀ ਫਿਰ ਇਹ ਇਹਨਾਂ ਨੂੰ ਨਾ ਬਦਲ ਸਾਨੂੰ ਨਾ ਬਦਲਣ ਪੈ ਜਵੇ ਸਵਾਲ ਇਹ ਹੈ ਇਹਨਾਂ ਨੂੰ ਆਪ ਨਾ ਬਦਲਣਾ ਪੈ ਜਵੇ ਆਪ ਇਹਨਾਂ ਨੇ ਬਦਲਣਾ ਨਹੀਂ ਜੇ ਬਦਲਣਾ ਪਊਗਾ ਫਿਰ ਮਨ ਵਰਦੀ ਹੈ ਜਲਦੀ ਫਿਰ ਆਂਡ ਕੇ ਜਿਹੜਾ ਹੁਕ ਚੱਲਦਾ ਪਟਾਰੂ ਆ ਮਾਰਨ ਆ ਪਿਆ ਕਰੂਗਾ ਇਹ ਔਖਾ ਇਹ ਹੰਕਾਰੀਆਂ ਨੂੰ ਔਖਾ ਹੁੰਦਾ ਹੈ ਭਾਂਡੇ ਸਾਫ ਕਰਨੇ ਨਾ ਨਗਰ ਜਾ ਕੇ ਕਾਲੀ ਫੁੱਲਾ ਸਭ ਜੇ ਲਾਡ ਪਹਿਣਾ ਸਿੰਘਾਂ ਨੇ ਵੀ ਭਾਂਡੇ ਕਾਉਣ ਆਪ ਜਾ ਕੇ ਮਾਝਣ ਲੱਗਣਾ ਕਾਲੀ ਫੁੱਲਾ ਸਨ ਚੁੱਪ ਕਰਕੇ ਹੀ ਕਹਿੰਦਾ ਕਿ ਤੁਸੀਂ ਲਾ ਕੇ ਕਹਿੰਦਾ ਭਾਈ ਤੁਸੀਂ ਜੇ ਲੜਦੇ ਹੋ ਜੇ ਬੁੰਡੇ ਲੜਨ ਤਾਂ ਬਾਪ ਨੇ ਆ ਬڑے ਭਾਈ ਨੂੰ ਕਹਿੰਦਾ ਮੈਂ ਕਰ ਲੈਣਾ ਤੂੰ ਲੜੋੜ ਕਮੋ ਸੀ ਕਰ ਲੈਣੇ ਤਾਂ ਬਾਪਾ ਸ਼ਿਕਾਦ ਲੜਦੇ ਸੇਵਾ ਨਾਲੇ ਸੇਵਾ ਕਹਿਣਾ ਨਾ ਲੜਦੇ ਉਹ ਸੇਵਾ ਦਾ ਕਰਨ ਪਿੱਛੇ ਲੜੀਦਾ ਵੀ ਮੈਨੂੰ ਦੇ ਮੈਂ ਕਰੂੰਗਾ ਤੂੰ ਹੀ ਕਹਣਾ ਮੈਂ ਕਰ ਲਈਦੀ ਤਾਂ ਲੜਦੇ ਉਹਨਾਂ ਹੀ ਜੀ ਦੇ ਜੀ ਦੇ ਜੀ ਬਸ ਫੇਰ ਕੋਲੋ ਦੀ ਬਰਤਾ ਉਹ ਫੇਰ ਆਫੇ ਕਰਨ ਲੱਗ ਜਾਣ 2 ਜਰ ਮਹੀਨੇ ਫੇਰ ਕਰਨਾ ਫਿਰ ਲਾਈ ਹੋ ਜਾਣੀ ਇਹ ਤਾਂ ਹੁੰਦਾ ਹੀ ਰਹਿੰਦਾ ਹੁੰਦਾ ਪਰ ਉਹਨਾਂ ਦਾ ਨਾ ਡਾਊਨ ਦਾ ਤਰੀਕਾ ਐ ਸੀ ਆਪ ਲੱਗ ਜਾਣਾ ਕਦੋਂ ਕਰ ਨੂੰ ਕਰ ਦਿੰਦੇ ਸੀ ਉਹ ਕਹਿੰਦੇ ਆ ਲੜੋ ਨਾ ਫਿਰ ਇਹ ਛੱਡ ਦਿਓ ਤੁਸੀਂ ਸਾਰੇ ਛੱਡੋ ਸੀ ਆਪੇ ਕਰ ਲੋਗੇ ਸਾਰੇ ਛੱਡ ਦਿਓ ਤੁਸੀਂ ਇਹਨਾਂ ਲੜਣਾ ਸੇਵਾਂ ਨਾ ਕਰੋ ਖਬਰਦਾਰ ਜੀ ਸੇਵਾ ਕੀਤੀਏ ਉਹ 2-4 ਮਹੀਨੇ ਐਸਾ ਰਹਿਣਾ ਉਹਨਾਂ ਤੇ ਫਿਰ हट ਜਾ ਫਿਰ ਉਹੀ ਗੱਲਾਂ ਇਹਨਾਂ ਦੀ ਕਹੂੰ ਰਾਤ ਸੀ ਹੋ ਕਹੂੰ ਰਾਜ ਕੰਨਿਆ ਕਹੂ ਰਾਜਸੀ ਹੋ ਕਹੂ ਰਾਜ ਕਰਦੇ ਕਿਤੇ ਰਾਜ ਸੀ ਹੋ ਰਾਜ ਕੁਮਾਰ ਹੋ ਰਾਜ ਕਰ ਰਹੇ ਹੋ ਕਿਤੇ ਰਾਜ ਕਰਨੇ ਹੋ ਕਿਤੇ ਇਹੋ ਰਾਜ ਦੀ ਛਾਇਆ ਰਾਜਨੀਤੀ ਉੱਪਰ ਲੈ ਆਇਆ ਨੂੰ ਉਹ ਰਾਜ ਕਰਨੇ ਆ ਰਾਜਨੀਤੀ ਉੱਪਰ ਲੈ ਆਜੋ ਰਾਜਾ ਕਿੱਥੇ ਹੈ ਇਹ ਤਾਂ ਰਾਜ ਕਰਨੇ ਆ ਇਹੋ ਨਹੀਂ ਪਤਾ ਉਹ ਰਾਜਦਾ ਰਾਜਨੀਤੀ ਭੁੱਖੇ ਪੈਦਾ ਹੋਈਆ ਕਰਨ ਦੀ ਇਹੋ ਕੌਮ ਸ੍ਰਿਸ਼ਟੀ ਕੀ ਪ੍ਰਿਸ਼ਟ ਕੀ ਰਿਸ਼ਟ ਪੁੰਨ ਪੁੰਦੇ ਪੁੰਦੇ ਕਿਤੇ ਸ੍ਰਿਸ਼ਟੀ ਦੀ ਸ੍ਰਿਸ਼ਟੀ ਕੀ ਪ੍ਰਿਸ਼ਟ ਕੀ ਰਿਸ਼ਟ ਪੁੰਨ ਜਿਹੜੀ ਸ੍ਰਿਸ਼ਟੀ ਦੀ ਪ੍ਰਿਸ਼ਟ ਪੁੰਬੀ ਹੈ ਸ੍ਰਿਸ਼ਟੀ radiative ਪ੍ਰਿਸ਼ਟ ਪੁੰਬੀ ਹੈ ਸ਼ਿਸ਼ਟੀ ਦੀ ਰਚਨਾ ਦੇ ਬੈਕਗ੍ਰਾਉਂਡ ਕੀ ਹੈ ਇਹ ਦੀ ਸਮਝ ਦੀ ਕੋਸ਼ਿਸ਼ ਕਰ ਰਹੇ ਹਾਂ। ਉਸਟ ਸ਼ਿਸ਼ਟੀ ਰਚਨਾ ਦੀ ਜਿਹੜੀ ਹੈ ਨਾ ਇਹਦਾ ਕਾਰਨ ਕੀ ਹੈ ਕਿਉਂ ਰਚੀ ਕਿਵੇਂ ਰਚੀ ਇਹ ਦੀ ਇਹ ਲੈ ਰਹੇ ਉਹ ਸ਼ਿਸ਼ਟੀ ਦੇ ਰਾਜ ਕਰਨਾ ਯਾ ਰਾਜਨੀਤੀ ਸਿੱਖ ਰਿਹਾ ਉਹ ਸ਼ਿਸ਼ਟੀ ਰਚਨਾ ਦੀ ਗੱਲ ਕਰਦੇ ਵੀ ਇਹ ਰਚੀ ਕਿਵੇਂ ਗਈ ਹੈ। ਇਸ ਬੰਦੂ ਨੇ ਜਿਹੜੀ ਸਿਸਤੀ ਰਚਨਾ ਦੀ ਇਹਦੀ ਪੂਰਨ ਸੋਝੀ ਲਿਆ ਰਹਾ ਗੁਰਬਾਣੀ ਜਾਈ ਨਾ ਗੁਰਬਾਣੀ ਜਾਈ ਸੱਜਿਆ ਤੇ ਪਪਣਾ ਪਪਣਾ ਪਿਆ ਪਪਣਾ ਤੇ ਚੱਲ ਹੋਏ ਪੰਜ ਤਤ ਕਿੱਥੋਂ ਆਏ ਕਿ ਸਿਸਤੀ ਰਚਨਾ ਦੀ ਖੋਜ ਕੀਤੀ ਤਾਂ ਹੀ ਪੰਜ ਤਤਾਂ ਦਾ ਪਤਾ ਲੱਗਿਆ ਤਾਂ ਹੀ ਕਾ ਕੋਈ ਬਣਾਓ ਕੰਬੇਦ ਵਿਦਿਆ ਕਹੂੰ ਬਿਉ ਬਾਣੀ ਕਤੇ ਵਿਦ ਵਿਦਿਆ ਵਿਦ ਵਿਦਿਆ ਬਹੁਤ ਪ੍ਰਕਾਰ ਦੀ ਵਿਦਿਆ ਵਿਦਿਆ ਦੇ ਵਿੱਚ ਸਰੀਰ ਦਾ ਗਿਆਨ ਵੀ ਆ ਗਿਆ ਆਦੂਆ ਭ੍ਰਮ ਗਿਆਨ ਵਾਲੀ ਵਿਦਿਆ ਵੀ ਆ ਗਈ ਸਾਰੀ ਵਿਦਿਆ ਆ ਗਈ ਵਿਦ ਵਿਦਿਆ ਤੋਂ ਕਹੂੰ ਵਿਉਮ ਬਾਣੀ ਕੱਲੇ ਆਕਾਸ਼ ਬਾਣੀ ਕਿਤੇ ਵਿਉਮ ਬਾਣੀ ਦੀ ਗੱਲ ਕਰਦੇ ਆਕਾਸ਼ ਦੀ ਅੰਤਰਾਤਮਾ ਦੀ ਆਵਾਜ਼ ਵਿਉਮ ਬਾਣੀ ਹੈ ਕਦੇ ਬਿਉ ਬਾਣੀ ਤੇ ਹੀ ਟਿੱਕੀ ਹੋਈ ਐ ਸੂਈ ਸਾਰੀ ਕਦੇ ਬੈਦ ਵਦੇ ਤੇ ਬੈਦ ਪੜ ਲੈਨੇ ਕੋਈ ਆਦਮੀ ਕੋਈ ਆਦਮੀ ਬਿਉ ਬਾਣੀ ਨੂੰ ਸਮਝ ਰਹੇ ਨੇ ਬਿਉ ਬਾਣੀ ਟਰਕੀ ਬਾਣੀ ਇਹ ਅੰਤਰਾਤਮਾ ਦੀ ਆਵਾਜ਼ ਨਾਲ ਜਾ ਕੇ ਬਿਉ ਬਾਣੀ ਨੂੰ ਬੁਲਾਉਣ ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ ਬਿਉ ਬਾਣੀ ਤੱਕ ਪਹੁੰਚਿਆ ਜਾ ਸਕਦਾ ਜਿਵੇਂ ਕਿਸੇ ਨਾਲ ਰਸਾ ਖੜੀ ਜਿ ਡੱਪਿਆ ਕੋਈ ਆਦਮੀ ਥੱਲੇ ਡੁੱਗਾ ਉੱਪਰ ਖੜੇ ਆਲੇ ਨੇ ਰੱਸਾ ਸੱਟਦਾ ਵੀ ਲੈ ਭਾਈ ਤੂੰ ਆ ਰੱਸਾ ਫੜੂ ਨਾਲ ਬੰਨ ਲਾਇਆ ਰੱਸੇ ਨੂੰ ਫੜ ਲਾ ਤੈਨੂੰ ਹਾਰ ਕੇ ਚਲੇ ਨੇ ਇਹ ਜਿਹੜੀ ਸਾਡੇ ਅੰਤਰਾਤਮਾ ਦੀ ਆਵਾਜ਼ ਹੈ ਤਾਂ ਰੱਸੀ ਹੈ ਡੋਰੀ ਹੈ ਜਿਹਨੇ ਫੜ ਲਈ ਬਾਬਾ ਨਿਹਾਲ ਗੁਰੂਮੁਖੀ ਗਾਂ ਡੋਰੀ ਗਾਂ ਡੋਰੀ ਹੈ ਇਹ ਗਾਂਡੋਰੀਆ ਗੁਰੂ ਮੁਕੇ ਗਾਂਡੋਰੀ ਪਰ ਪਕੜੀ ਪ੍ਰਭ ਦਾ ਹੱਥ ਜਾਂ ਡੋਰੀ ਜਿੰਨ ਖਿੱਚਾ ਤੇ ਜਿਹੜਾ ਇਹ ਨਾਲ ਜੁੜ ਜਾਂਦਾ ਉਹ ਖਿੱਚਿਆ ਜਾਂਦਾ ਬਾਹਰ ਲੈ ਜਾਂਦਾ ਬਾਹਰ ਜਾ ਕੇ ਪਤਾ ਲੱਗਦਾ ਬਾਹਲੇ ਸੰਸਾਰ ਦਾ ਜਿਉਂ-ਜਿਉਂ ਇਹ ਨਾਲ ਜੁੜਿਆ ਰਹਿੰਦਾ ਉੱਤਰ ਨੂੰ ਜਾਂਦਾ ਰਹਿੰਦਾ ਉੱਤਰ ਨੂੰ ਜਾਂਦਾ ਰਹਿੰਦਾ ਉਹ ਖਿੱਚੀ ਜਾਂਦਾ ਪ੍ਰਭ ਦਾ ਹੱਥ ਪਕੜੀ ਹੋਈ ਹੈ ਗਾਂਡੋਰੀ ਪਰ ਪਕੜੀ ਜਨਖੇ ਚੇਤਨ ਸਹੀ ਹੈ ਜੇ ਬੱਚਾ ਕਹਿੰਦਾ ਜੇ ਨਾਲ ਜੁੜਿਆ ਰਹੇ ਚਲੇ ਜਾਂਦਾ ਜੇ ਛੜਦ ਵਿਥਲੇ ਲੇ ਪੈਂਦਾ ਜਿੱਤੇ ਜਾ ਕੇ ਛੜਦੂ ਥਲੇ ਡੇਣਾ ਫੜ ਕੇ ਰਖਦੇ ਦੀ ਫੜੀ ਰਹੇ ਜ ਵਾਰਨ ਜੂਗਾ ਹਾਂਜੀ ਕਹੂੰ ਕੋਕ ਕੀ ਕਾਵ ਕਥਾਂ ਕਹਾਣੀ ਹੁਣ ਇੱਥੇ ਇੱਕ ਦਮ ਬਿਓ ਬਣੇ ਦੇ ਬਾਦ ਕੋਕ ਕੀ ਕਹਾਣੀ ਆ ਗਿਆ ਇਹਦਾ ਕੀ ਕਾਰਨ ਇਸੇ ਗੱਲ ਕਰਕੇ ਨੂੰ ਬਾਹਰ ਰੱਖਿਆ ਸੀ ਉਤਨੀ ਪੰਕਤੀ ਹੈ ਕਿ ਸ੍ਰਿਸ਼ਟੀ ਦੀ ਰਚਨਾ ਦਾ ਬੋਲਕਾਰ ਲਿਖਿਆ ਕੋਕੀ है ਹੈ ਉਧਰ ਬਿਉ ਬਾਨੀਆਂ ਤੇ ਕੋਕੀ ਕਹਾਣੀ ਹੈ ਦੋ ਆਪਾ है ਨੇ ਐਂਦੀ ਖਤਰਨਾਕ ਗੱਲ ਹੈ ਕੋਕੀ ਕਹਾਣੀ ਉਹ ਖਤਰਨਾਕ ਕੀ ਹੈ ਉਹ ਬਾੜ ਪੜਾਇਆ ਹੈ ਖਤਰਾ ਸਭ ਤੋਂ ਜ਼ਿਆਦਾ ਖਤਰਾ ਘਾਤੇ ਹੈ ਉਹ ਖਤਰਾ ਦੇ ਇੱਕ ਹੀ ਕੰਬ ਗਏ ਚਲ ਦਰਸ਼ਨ ਕਰਾ ਲੈ ਖਤਰੇ ਦਾ ਉਹ ਕੰਬ ਗਏ ਕੰਬ ਤਾਂ ਆ ਰਿਹਾ ਜੋ ਬਹੁਤ ਤੋਂ ਡਰ ਬਹੁਤ ਤੋਂ ਡਰ ਲੱਗਦਾ ਜਿੱਦਣ ਮੌਤ ਤੋਂ ਡਰ हट ਗਿਆ ਉਦੋਂ ਨਹੀਂ ਇਹਨਾਂ ਨੇ ਡਰ ਲਾਉ ਜਿੱਦਣ ਮੌਤ ਦਾ ਖਤਰਾ ਮੁੱਕ ਗਿਆ ਉਦੋਂ ਇਹ ਠੀਕ ਲੱਗੂਗਾ ਸਭ ਉਦੋਂ ਧਰਮ ਲੱਗੂਗਾ ਇਹ ਕੋਈ ਕਹਾਣੀ ਇਹਨਾਂ ਨੂੰ ਜਿੰਨਾ ਚਿਰ ਮੌਤ ਤੋਂ ਪਹਿ ਲੱਗਦੀ ਹੋਣਾ ਜਰੂਰ ਤੋਂ ਪਹਿ ਲੱਗੂ ਬਹੁਤ ਹੈ ਉਹ ਉਹ ਮੋਦਾ ਦੂਆ ਰੂਪ ਹੈ ਨਰਕਕੁੰਡ ਕਾ ਦਵਾਰਾ ਹੈ ਹੋ ਨਰਕੌਰ ਕਾ ਦਵਾਰਾ ਆਦਮੀ ਬਾਣੀ ਚ ਗਿਆ ਨਰਕੌਰ ਕਾ ਉਹ ਨਰਕੌਰ ਕੇ ਦਵਾਰੇ ਦਾ ਦਰਸ਼ਨ ਕਰਾਇਆ ਡਰ ਕਾ ਤੇ ਗਏ ਇੱਧਰ ਜਾਓਗੇ ਨਰਕੌਰ ਕਾ ਦਵਾਰਾ ਦਰਸ਼ਨੇ ਕਰਾਇਆ ਉਹ ਸਾਰੇ ਨਰਕੌਰ ਕੇ ਦਵਾਰੇ ਤੇ ਚਲੇ ਜਾਂਦੇ ਨੇ ਬਸਾਫਰ ਇੱਧਰ ਗੁਰੂ ਬਖਾਨਾ ਵੀ ਤੇ ਕਰਾਇਆ ਜਿਹੜਾ ਸੱਚਖੰਡੂ ਜਾਂਦਾ ਨੇ ਉਵੇਂ ਤੁਰਤੇ ਹੀ ਕਰਾਇਆ ਐਵੇਂ ਤੁਰਤੇ ਹੀ ਕਰਾਇਆ ਮਰਜੀ ਅੱਜ ਮਰਜੀ ਚਲੇ ਜਾਓ ਫੇਰ ਝੜਦਾ ਵਿਚਾਲੇ ਇੰਡੀਪੈਂਡੈਂਟ ਹੈ ਕੋਈ ਦਵਾ ਨਹੀਂ ਇਹਦੇ ਤੇ ਕਿਹਦੀ ਹੌਲਦੀ ਹੈ ਇਹਨੂੰ ਕੋਈ ਨਹੀਂ ਦੇਖ ਰਿਹਾ ਕੋਈ ਨਹੀਂ ਚੈੱਕ ਕਰ ਰਿਹਾ ਕੋਈ ਇਕਲੀ ਉਹ ਵਾਲਾ ਰਿਹਾ ਇੰਡੀਪੈਂਡੈਂਟ ਹੈ ਇੱਕ ਦੀ ਗੱਲ ਆ ਇੰਡੀਪੈਂਡੈਂਟ ਹੈ ਕੋਈ ਇਹਨੂੰ ਚੈੱਕ ਨਹੀਂ ਕਰ ਰਿਹਾ ਆਪਣੇ ਆਪ ਨੂੰ ਆਪ ਚੈੱਕ ਕਰੇ ਆਪਣਾ ਮਨ ਬਣਾਵੇ ਰਗਦਰ ਜਾਣੇ ਇੱਧਰ ਜਾਣਾ ਇੱਧਰ ਜਾਣਾ ਕੋਕੀ ਕਹਾਣੀ ਬਿਉਂ ਬਾਣੀ ਦਾ ਇੱਕਦਮ ਉਲਟ ਹੈ ਵਿਰੋਧ ਜੇ ਕੋਈ ਵਿਰੋਧ ਕਰ ਰਹੀ ਹੈ ਕੋਕੀ ਕਹਾਣੀ ਜੇ ਜੇ ਬਿਉਂ ਬਾਣੀ ਦਾ ਵਿਰੋਧ ਕੋਈ ਚੀਜ਼ ਆ ਤਾਂ ਕੋਕੀ ਕਹਾਣੀ ਸਭ ਤੋਂ ਜ਼ਿਆਦਾ ਵਿਰੋਧ ਲੋਵੇ ਤੋਂ ਥੋੜਾ ਵਿਰੋਧ ਹੈ ਕਾਰੋਂ ਤੋਂ ਘੱਟ ਵਿਰੋਧ ਹੈ ਸਮਝ ਆਣੀ ਕਾਮਨਾ ਹੀ ਦਾ ਕਾਲ ਹੈ ਕਾਲ ਕਾਮਨਾ ਹੈ ਕਲਪਨਾ ਕਾਲ ਹੈ ਇਹ ਕਾਲ ਰੂਪ ਹੈ ਕਾਲ ਇਹ ਕਾਲ ਦੇ ਮੂਹ ਚ ਸੱਟਣ ਵਾਲੀ ਚੀਜ਼ ਹੈ ਉਹ ਕਾਲ ਤੋਂ ਬਚਾਉਣ ਵਾਲੀ ਹੈ ਬੰਗ ਇਹ ਕਾਲ ਦੇ ਮੂਹ ਚ ਫਸਾਉਣ ਵਾਲੀ ਹੈ ਉਹ ਕਾਲ ਤੋਂ ਬਚਾਉਣ ਵਾਲੀ ਹੈ ਇਹ ਵਿਚਾਰੇ ਕੀ ਜਾਣਨ ਕੀ ਹੈ ਧਰਮ ਦੇ ਦਾ ਜੋ ਰਾਵ ਨਹੀਂ ਪਏ ਹੈ ਕਦਰ ਬੜੰਦ ਲੱਗੇ ਨਹੀਂ ਦਰਦ ਨੂੰ ਹੀ ਤਾਲਕਾ ਨਾ ਤੁਸੀਂ ਆਪਣੇ ਜੋ ਕਰਦੇ ਹੋ ਕਰੀ ਜਾਓ ਇਹ ਜੱਜੇ ਨਰਬੋ ਉਹਨੇ ਨਾ ਆਦਮੀ ਨੇ ਆਦਮੀ ਜਿਹੜਾ ਹੁੰਦਾ ਹੈ ਉਹ ਦਰਦ ਖੁੰਦਾ ਹੀ ਨਹੀਂ ਇਹ ਜੋ ਆਦਮੀ ਹੋਰ ਆਦਮੀ ਹੋਣਾ ਹੋਰ ਗੱਲ ਹੈ ਦਰਦ ਖੋਣਾ ਹੋਰ ਗੱਲ ਹੈ ਰਾਖਸ਼ ਹੋਣਾ ਹੋਰ ਗੱਲ ਹੈ ਦੇਵਤਾ ਹੋਣਾ ਹੋਰ ਗੱਲ ਹੈ ਰਾਖਸ਼ ਹੋਣਾ ਹੋਰ ਗੱਲ ਹੈ ਵਿਚਾਰਲੇ ਆ ਇਹ ਜੋ ਵਿਚਾਰਲੇ ਆਦਮੀ ਨੇ ਨਾ ਰਾਖਸ਼ ਨੇ ਨਾ ਦੇਵਤੇ ਵਿਚਾਲੇ ਨੇ ਵਿਚਾਲੇ ਵਾਲੇ ਤਾਂ ਕਿਸੇ ਨੂੰ ਵੀ ਸਲਾਹ ਦੇਣ ਦੇ ਕਾਬਲ ਨਹੀਂ ਹੁੰਦੇ। ਨਾ ਦੇਵਤਿਆਂ ਨੂੰ ਨਾਰਾਖਸ਼ ਤੂੰ ਜ ਆਪਣੇ ਦਿਨ ਕੱਢੀ ਕਰੋ ਆਪਣਾ ਕੰਮ ਕਰੀ ਜਾ ਇਹਨੇ ਲੱਗੇ ਹੋਏ ਆ। ਇਹ ਲੜਾਈ ਜਿਹੜੇ ਲੜਦੇ ਨੇ ਉਹਨਾਂ ਲੜ ਲੈਣ ਦੋ। ਤੇ ਲੜਾਈ ਹੈ ਬਕਾਰਾਂ ਦੇ ਲੋਰ। ਕੋਕੋਕ ਕੀ ਕਾਵ ਕਥਾ ਕਹਾਣੀ ਕੋਕੋਕ ਕੀ ਕਾਵ ਕਥਾ ਕਹਾਣੀ ਜਿਹੜਾ ਕਹਾਣੀ ਕਾਥਰੇ ਹੈ ਉਹਨੇ ਬਤਾ ਇਹਨਾਂ ਨੇ ਹਰਦੈਂ ਐਕਸੈਪਟ ਕੀਤਾ ਉਹਨਾਂ ਨੇ ਬਤਾ ਤੁਹਾਡੇ ਨੂੰ ਕਿਤੇ ਗਾਹਾਂ ਸੀ ਉਹ ਉਹਨਾਂ ਦੀ ਗੱਲ ਹੁਣ ਸੇ ਚੱਲਦੀ ਥੋਨੂੰ ਹੁਣ ਬਾਜ਼ਾਰ ਚ ਦੀ ਹੁਣ ਸੇ ਚੱਲ ਰਹੀ ਹੈ ਕੋਈ ਤੁਹਾਡਾ ਨਾ ਸਿਆਣਾ ਪੈਦਾ ਹੀ ਨਹੀਂ ਹੋਇਆ ਇਹ ਹੈ ਉਹ ਨਹੀਂ ਇਹ ਤੁਹਾਨੂੰ ਭੁਲੇਖਾ ਹੈ ਕਹੂੰ ਅਦਰ ਸਾਰੰ ਕਹੂੰ ਪਦਰ ਰੂਪੰ ਕਹੂੰ ਅਦਰ ਸਾਰੰ ਕਹੂੰ ਪਦਰ ਰੂਪੰ ਹਾਂ ਅਦਰ ਸਾਰੰ ਮਾਇਆ ਦਾ ਹੀ ਗਿਆਨ ਹੈ ਇਹ ਲੋਹੇ ਨੂੰ ਕਹਿੰਦੇ ਅਦਰ ਸਾਰੰ ਲੋਹਾਰੀ ਹੁੰਦਾ ਮਨ ਬੱਤ ਦਾ ਗਿਆਨ ਸੰਸਾਰੀ ਗਿਆਨ ਹੈ ਦਾ ਕਹੂੰ ਪਧਰ ਰੂਪੰ ਕਿਤੇ ਪਧਰ ਰੂਪ ਹੈ ਕਿਤੇ ਗਲਫਣਾ ਤੇ ਖੜਾ ਹੈ ਸੰਸਾਰ ਆਪਣੇ ਬਾਣੀ ਤੇ ਖੜਾ ਕਿਤੇ ਸੰਸਾਰ ਕਿਤੇ ਗੁਰਕੇ ਬਾਣੀ ਤੇ ਖੜਾ ਤੇ ਤੇ ਗੁਰਕਾ ਬਾਣੀ ਅੰਦਰ ਆਤਮਾ ਦੀ ਆਵਾਜ਼ੋਂ ਪਧਰ ਰੂਪ ਹੈ ਆਵਾਜ਼ ਤੇ ਚਲਦਾ ਅਧਰ ਰੂਪ ਕਹਾਦਾ ਅੱਧਾ ਅੱਧਾ ਹਿੜਾ ਅਧਿ ਵਿਚਾਲੇ ਲੜਕੇ ਆਇਆ ਨਾ ਉਧਰ ਨਾ ਉਧਰ ਆਪਣੇ ਆਪ ਨੂੰ ਧਾਰੂ ਸਮਝਦਾ। ਦਾ ਸਾਰੀ ਰਿਆ ਨਾ ਤਾਰੂਬ ਕਰਿਆ। ਇਹ ਸਲਾਹਾਂ ਦੇਣ ਵਾਲੇ ਨਾ ਸੰਸਾਰੀ ਘਰ ਇਹ ਉਹ ਢੋਬੀ ਦੇ ਕੁੱਤੇ ਕੁੱਤੇ ਕੋ ਨਾ ਘਰ ਦੇ ਨਾ ਰਿਹਾ ਨਾ ਘੜਦੇ ਰਹੇ। ਆ ਇਹ ਜਿਹੜੇ ਸਲਾਹਾਂ ਦਿੰਦੇ ਨੇ ਨਾ ਸਾਨੂੰ ਦਸੂਗ੍ਰੰਥ ਬਾਰੇ ਇਹ ਢੋਬੀ ਦੇ ਕੁੱਤੇ ਨਾ ਘਰਦੇ ਨਾ ਘੜਦੇ। ਰਾਦਾ ਸੰਸਾਰੀ ਰਹੇ ਨਾ ਰੂਪ ਰਹੇ ਕੁਝ ਬਣਾ ਰਹੇ ਤਾਰ ਮਗਾਲਾਂ ਦਾ ਫਰੇ ਲਾ ਕੇ ਪਰੇ ਮਾਰਨੇ ਨੇ ਬੁਧਾ ਕੇ ਸੰਸਾਰੀ ਆਪਣੇ ਆਪ ਨੂੰ ਬੁਲਦੇ ਹੀ ਨਹੀਂ ਸੰਸਾਰੀਆਂ ਨਾਲ ਮਿਲਾ ਦੇਣੇ ਜਿਹੜੇ ਗੁਰਬਾਣੀ ਰੂਪ ਅਥਾਈ ਦੇਖਣ ਤੇ ਸਰਫਨੇ ਲੋਕ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਕੀਰਨਾਂ ਦੀ ਹਕੀਕਤ ਕੀ ਹੈ ਉਹਨਾਂ ਦੇ ਉਹ ਵਿਲੇਜ ਹੋ ਰਹੇ ਉਹਨਾਂ ਦੇ ਤਾਂ ਆਪਣੇ ਆਪ ਨੂੰ ਸੇਸ਼ਟ ਮੰਦੀ ਬੈਠੇ ਨੇ ਨਾ ਏ ਇਹ ਥੱਲੇ ਦੇ ਬੰਦਿਆਂ ਨੂੰ ਤਾਂ ਪਤਾ ਹੀ ਕੁਛ ਨਹੀਂ ਅਸੀਂ ਜਬਰ ਜੀ ਕਹ ਦੀਏ ਉਹਨਾਂ ਨੇ ਕਿਹੜਾ ਪੜਿਆ ਪਰ ਜਿੱਦਣ ਇਹਨਾਂ ਦਾ ਪਰਦਾ ਚੱਕਤਾ ਚੱਕਿਆ ਗਿਆ ਕਿਸੇ ਨੇ ਇਹਨਾਂ ਨੂੰ ਮੂੰਹ ਨਹੀਂ ਲਾੜੂ ਕਿੰਨੀ ਨਫ਼ਰਤ ਕਰਦੇ ਨੇ ਲੋਕ ਇਹਨਾਂ ਤੋਂ ਜਿਹੜਾ ਰਾਮ ਰਾਏ ਸੀ ਸਖ ਅੱਜ ਜੈ ਸ੍ਰੀ ਚੰਦ ਨੂੰ ਕੋਈ ਅਪਸ਼ਬਦ ਵੀ ਕੋਈ ਕਹਿ ਦੇਵੇ ਕੋਈ ਨਹੀਂ ਕਹਿ ਸਕਦਾ ਕਿਉਂ ਕਹਿਦੇ ਹੋ ਸ੍ਰੀ ਚੰਦ ਕਹਿੰਦਾ ਲਿਖਿਆ ਹੈ ਦਿਲ ਖੋਟੇ ਆਕੀ ਫਿਰਨ ਉਸ ਆਲਾਦ ਹੈ ਨਾਨਕ ਦੀ ਉਹਨਾਂ ਨੂੰ ਮਤਲਬ ਹੈ ਜੇ ਕੋਈ ਅਪਸ਼ਬਦ ਕਹਿ ਦੇਵੇ ਕੋਈ ਬੁਰਾ ਨਹੀਂ ਬੰਦਾ ਕਿਉਂ ਉਹਨਾਂ ਨੇ ਕੀਤਾ ਜੋ ਗੁਰਬੀ ਕਰ ਰਹੇ ਗੁਰਮਤਿ ਖਰਾਬ ਕੰਮ ਕਰ ਰਹੇ ਉਹਿਆ ਜੋ ਆਪਣੀ ਕਰਾਉਂਦੇ ਰਹੇ ਨੇ ਇਹ ਵੇਦੀ ਵੀ ਕਰਾਉਂਦੇ ਰਹੇ ਨੇ ਛੋਟੀ ਵੀ ਕਰਾਉਂਦੇ ਰਹੇ ਨੇ ਜੋ ਇਹਨਾਂ ਨੇ ਕੀਤਾ ਇਹਨਾਂ ਨੇ ਪੜਨਾ ਨਾ ਲੜਕੇ ਸਾਰਾ ਕੰਮ ਖਰਾਬ ਕਰਦੇ ਰਹੇ ਉੱਥੇ ਗੁਰਮਤਿ ਦਾ ਜਣਾ ਤੇਲ ਪਾਉਂਦੇ ਰਹੇ ਇਹਨਾਂ ਬਖਸ਼ੂ ਕੋਲ ਇਹ ਬਖਸ਼ੇ ਜੋਗੇ ਨਹੀਂ ਹਣ ਬੰਦੇ ਹੁਣ ਪਤਾ ਲੱਗ ਗਿਆ ਹੁਣ ਤੇ ਲੋਕ ਪੂਜਾ ਕਰਦੇ ਨੇ ਜਾਂ ਪਤਾ ਲੱਗ ਗਿਆ ਸਾਰਿਆਂ ਨੇ ਉਹ ਖੁੱਲ੍ਹ ਗਈ ਲੇਕਿਨ ਉਹ ਐਵੇਂ ਲੈ ਜਾਂਦੇ ਹੁੰਦੇ ਨੇ ਤਦ ਪਤਾ ਲੱਗੂਗਾ ਸਖਾਨੂੰ ਕਿ ਇਹ ਲੋਕ ਕੌਣ ਨੇ ਕੀ ਕਹਿ ਰਹੇ ਨੇ ਸਾਨੂੰ ਕੀ ਸਮਝਾ ਰਹੇ ਨੇ ਐਸੇ ਮੂੰਹ ਹੁਲਾਣਗੇ ਕਿਦਾਂ ਬੁਲਾਉਣੇ ਨਹੀਂ ਝਕੜਾਂ ਆਉਂਦੀਆਂ ਨਾਲ ਕੋਹ ਕਹੂੰ ਮਦਰ ਬਾਣੀ ਕਹੂੰ ਛਿਦਰ ਕਹੂੰ ਬਦਰ ਬਾਣੀ ਬਦਰ ਬਾਣੀ ਹੁੰਦੀ ਹੈ ਸਮਝ ਲੋ ਵਾਲੀ ਭਲਾ ਸੋਚਣ ਵਾਲੀ ਬਣ ਉਤਰਾਤਮਾਂ ਦੀ ਆਵਾਜ਼ ਮਦਰ ਬਾਣੀ ਉਹ ਮਾਂ ਦੀ ਬਾਣੀ ਮਾਦੀ ਬੋਲੀ ਮਾ ਬੋਲੀ ਨਹੀਂ ਕਹਿੰਦੇ ਆ ਮਾਂ ਬੋਲੀ ਮਦਰ ਬਾਣੀ ਮਾਂ ਬੋਲੀ ਤੂੰ ਅੱਦਲਾ ਮਾਂ ਵੀ ਆ ਪਿਓ ਵੀ ਆ ਉਹਦੀ ਬੋਲੀ ਆ ਆਸਵਾਲ ਦੀ ਉਤਰਾਤਮਾਂ ਦੀ ਆਵਾਜ਼ ਆ ਜਿਹੜੀ ਮਦਰ ਹੋਈ ਹੈ ਉਹ ਮਦਰ ਨਿਆਂ ਤਾਂ ਦੇ ਨੂੰ ਕੜੀਆਂ ਤਾਂ ਦੱਦੇ ਨਾਲ ਹੈ ਦੱਦੇ ਨਾਲ ਮਾਂ ਬੋਲੀ ਐ ਇਹ ਐ ਮਾਂ ਬੋਲੀ ਸਾਡੀ ਪੰਜਾਬੀ ਨੂੰ ਮਾਂ ਬੋਲੀ ਕਹੀ ਜਾਂਦੇ ਨੇ ਕਹਨੇ ਮਾਂ ਬੋਲੀ ਅੰਤਰਰਾਸ਼ਟਰੀ ਬੋਲ ਕਿਹੜੇ ਸਿੱਖ ਵੀ ਬਦਲ ਮਾਂ ਬੋਲੀ ਕਹੀ ਜਾਂਦੇ ਪੰਜਾਬੀ ਨੂੰ ਮੂਰਖ ਨੇ ਉਹਨੂੰ ਪਤਾ ਹੀ ਨਹੀਂ ਸਿੱਖੀ ਦਾ ਅਧਿਆਪਨ ਲਈ ਉਹਨਾਂ ਨੂੰ ਗਿਆਨ ਹੈ ਸਿੱਖੀ ਕੀ ਹੈ ਇਹ ਤਾਂ ਬੋਲੀ ਬਦਲਦੀ ਰਹਦੀ ਹੈ ਮਾਂ ਬੋਲੀ ਇਹ ਤਾਂ ਅੰਗਰੇਜ਼ੀ ਦੇ ਲਫ਼ਜ਼ ਤੇ ਆ ਗਏ ਇਹਨਾਂ ਦੀ ਮਾਂ ਸੀ ਅੰਗਰੇਜ਼ੀ ਪਹਿਲਾਂ ਸੰਸਕ੍ਰਿਤੀ ਇੱਥੇ ਬੋਲੀ ਜਾਂਦੀ ਉਰਦੂ ਦੇ ਲਫ਼ਜ਼ ਆ ਗਏ ਵਿਚ ਇਹਦੇ ਖਾਰਸਾ ਲਫ਼ਜ਼ ਪੰਜਾਬੀ ਦਾ ਹੈ ਫਤੇ ਲਫਜ਼ ਪੰਜਾਬੀ ਦਾ ਹੈ ਮਾਂ ਬੋਲੀ ਕਿਵੇਂ ਹੋਗੀ ਨਾ ਦੀ ਇਹਨਾਂ ਦਾ ਇਹ ਵੀ ਨਹੀਂ ਬਤਾਇਆ ਦੀ ਮਾਂ ਠੀਕ ਹਾਲ ਕਿੱਥੇ ਸੀ ਸੀ ਵਿਦਵਾਨਾਂ ਨੂੰ ਮਾਂ ਲੈ ਨਹੀਂ ਬਤਾਬੜੀ ਜਵੇ ਕਿੱਥੇ ਸੀ ਸੀ ਕਿੱਥੇ ਹੁੰਦੀ ਹੈ ਕੀ ਹੁੰਦੀ ਹੈ ਗੁਰਬਾਣੀ ਮਾਂ ਨੂੰ ਬਿਉਰ ਪਰਦੀ ਰਿਹਾ ਸਸਾਰੀ ਨੂੰ ਸਿੱਖ ਵਿਦਵਾਨ ਨੇ ਰੋਣਾ ਭਾਈ ਜਨ ਪੱਲੇ ਥੋੜੇ ਥੇ ਲਾਲੀ ਰਹਿ ਇੱਕ ਅੰਤਰਾਦ ਮਾਂ ਦੀ ਆਵਾਜ਼ ਮਾਂ ਬੋਲੀ ਹੁੰਦੀ ਹੈ ਸਿੱਖਕ ਦੀ ਕਮ ਇਹ ਹੁੰਦੀ ਹੈ ਔਰ ਕਿਸੇ ਦੁਨੀਦ ਦੀ ਕੁਝ ਵੀ ਹੋਵੇ ਦੁਨੀਆ ਦੀ ਮਾਂ ਬੋਲੀ ਕੁਛ ਵੀ ਹੋਵੇ ਸਿੱਖਾਤਮ ਲੈਵਲ ਤੇ ਜੁਦਾ ਹੈ ਸੰਸਾਰੀ ਲੈਵਲ ਤੇ ਜੁਦਾ ਨਹੀਂ ਜਿਹੜਾ ਸੰਸਾਰੀ ਲੈਵਲ ਤੇ ਜੁਦਾ ਉਸੇ ਖੁੰਦਾ ਹੀ ਨਹੀਂ ਜੇ ਵਿਦਵਾਨ ਆਪਣੇ ਆਪ ਨੂੰ ਸਿੱਖ ਨਾਲ ਲਿਖਦੇ ਨੇ ਸਿੱਖ ਫਿਰ ਮਾਂ ਬੋਲੀ ਅੰਤਰਰਾਸ਼ਟਰੀ ਆਵਾਜ਼ ਹੈ ਨਹੀਂ ਸਿੱਖੀ ਤੋਂ ਖਾਰਜ ਹੋ ਕੇ ਜ਼ਬਰਦਸਤੀ ਬੋਲੀ ਜਾਓ ਸਿੱਖੀ ਤੋਂ ਖਾਰਜ ਹੋ ਕੇ ਜ਼ਬਰਦਸਤੀ ਬੋਲੀ ਜਾਓ ਅੱਜ ਦੀ ਪੰਜਾਬੀ ਉਹ ਨਹੀਂ ਹੈ ਪੰਜਾਬੀ ਦੀ ਪੰਜਾਬ ਦੀ ਆਵਾਜ਼ ਨਹੀਂ ਹੈ ਤੇ ਇਹ ਤਾਂ ਸਿਰ ਪੰਜਾਬੀ ਕੀ ਹੈ ਸ਼ੁੱਧ ਕਰਕੇ ਦੇ ਕੋਲੇ ਨੂੰ ਗੁਰਦਾਨਕ ਵੇਲੇ ਤਾਂ ਬੋਲੀ ਨਹੀਂ ਸੀ ਬੋਲੀ ਜਾਂਦੀ ਉੱਥੇ ਉੱਥੇ ਹੀ ਪਾਸ਼ਾ ਲਿਆਉਣ ਕਿਹੜੀ ਹੈ ਗੁਰਦਾਨਕ ਵੇਲੇ ਜੋ ਹੋਲੀ ਬੋਲੀ ਜਾਂਦੀ ਸੀ ਪੰਜਾਬ ਦੀ ਦਸਣ ਕਿਹੜੀ ਹੈ ਉਹ ਪਿੱਛੇ ਲਿਖੇ ਪੈਨਾ ਗ੍ਰੰਥ ਕੱਲੋਂ ਉਹਦੇ ਨਾਲ ਸ਼ੁੱਧ ਫਿਰ ਇਹ ਤਾਂ ਰੋਜ਼ ਬਦਲਦੀ ਹੈ ਬਾਹਰ ਕੋ ਤੇ ਜਾ ਕੇ ਬੋਲੀ ਬਦਲ ਜਾਂਦੀ ਹੈ ਅਸਲ 'ਚ ਇਹਨਾਂ ਨੇ ਇਹ ਦੇਖਿਆ ਵੀ ਸਾਨੂੰ ਅਸੀਂ ਠੰਗੇ ਜਾਣਗੇ ਸਾਡੀ ਬੋਲੀ ਆ ਨਾ ਪੰਜਾਬੀ ਅਸੀਂ ਪੜੇ ਹੋਇਆ ਆ ਅਬਦਰ ਅਜ਼ੀਬ ਬਣ ਜੀਏ ਸਾਡੀ ਪੁੱਛ ਹੋ ਜਵੇ ਗੱਲ ਦਾ ਰੋਟੀ ਦੀ ਐ ਇਹਨਾਂ ਨੇ ਮਾਗੋਲੀ ਤੇ ਲੈਣਾ ਕੀ ਐ ਇਹਨਾਂ ਨੇ ਸਿੱਖੀ ਤੇ ਲੈਣਾ ਕੀ ਐ ਨਾ ਲੋਕਾਂ ਹੋਰ ਇਹ ਝਗੜੇ ਪਾ ਰਖਦੇ ਨੇ ਸਰਕਾਰ ਨੂੰ ਕਹੂੰ ਮਦਰ ਬਾਣੀ ਕਹੂੰ ਛੇਦਰ ਸਰੂਪੰ ਕਹੂੰ ਨੇ ਛੇਦਰ ਸਰੂਪ ਸੀ ਨਾ ਉਹਨਾਂ ਦੀ ਕਿਸ਼ਤੀ ਬੇੜਾ ਚੱਜ ਰਾ ਫੁੱਟੇ 6000 ਇਹ ਅੰਦਰ ਆਤਮਾ ਦੀ ਆਵਾਜ਼ ਨਹੀਂ ਨਾ ਕਾਲਪਨਿਕ ਧਰਮ ਫੇਸ ਰੂਪ ਛਿੱਦਰ ਨੇ ਫੇਰ ਸਾਰਾ ਫਟਿਆ ਹੋਇਆ ਹੀ ਹੈ ਫਿਰ ਇਹ ਚ ਫੂਟੇ 6000 ਨੇ ਇਹ ਜਿੱਦਰ ਸਰੂਪ ਦੇਖੋ ਸਾਰੀ ਗੱਲਾਂ ਆਰਦੀ ਬਾਣੀ ਨਾਲ ਬਣੀ ਜਾਂਦੀ ਹੈ ਇਹਦੇ ਵਿਚ ਬੁਲਾਉਣੀ ਪੈਣੀ ਹੈ ਛਿੱਦਰ ਸਰੂਪੋਂ ਹੋਰ ਕੀ ਹੈ ਕੀ ਛਿੱਦਰ ਸਰੂਪ ਹੁੰਦਾ ਦੱਸੋ ਕਿਹਨੂੰ ਛਿੱਦਰ ਸਰੂਪ ਬਣੂਗਾ ਕਿਹਦਰ ਸਰੂਪ ਕਿਹਦੀ ਚੀਜ਼ ਨੂੰ ਹੱਲ ਹੋ ਗਏ ਕੀ ਮਦਰ ਬਾਣੀ ਹੋ ਕਿ ਜਿਤ ਕਿਛਦਰ ਸਰੂਪੂ ਕਿਹਦੀ ਚੀਜ਼ ਨੂੰ ਹੱਲ ਕਹੂੰ ਮਦਰ ਬਾਣੀ ਕਹੂੰ ਜਿਤਦਰ ਸਰੂਪੰ ਹੁੰਜੇ ਜਿਤਦਰ ਸਰੂਪੰ ਇਹਦੇ ਮਕਰ ਜਾਈਏ ਜਿਵੇਂ ਪੜਨ ਤੇ ਅਰਥ ਕੀਤੇ ਨੇ ਉਹ ਤਾਂ ਗੱਲੇ ਨਹੀਂ ਬਣਦੀ ਕੋਈ ਗੁਰਮਤ ਦਾ ਇਹਦਾ ਕੋਈ ਮੇਲੇ ਨਹੀਂ ਦਸਮ ਪਾਸ਼ਾ ਨੂੰ ਜਿਹੜੀਆਂ ਗੱਲਾਂ ਹੈ ਅਰਥ ਕਰਦਾ ਕੀ ਲੋਟ ਸੀ ਲੈਣ ਦੀ ਗੱਲ ਤਾਂ ਗੁਰਬਤ ਸੁਝਾ ਰਹੇ ਪਿੱਛੇ ਇਹ ਗਾਲੋਤ ਸੁਧਮ ਦੇ ਕਬੂਦ ਖਬ ਸਾਰੇ ਮਨ ਦੇ ਦਸ ਪਾਸ਼ਾ ਦੀ ਪਾਣੀ ਹੈ ਸਾਰੇ ਮਨ ਦੇ ਰੂਤ ਇਹਦਾ ਜਿਹੜਾ ਛਿੱਧ ਸਰੂਪੇ ਆਇਆ ਹੈ ਕਿ ਬਿਨਾ ਗੁਰਮਤ ਤੇ ਆ ਜਾਂਦੀ ਕੋਈ ਗੱਲ ਗਲ ਦਾ ਗਲ ਦੀ ਕਰ ਰਹੇ ਨੇ ਆਕਾਰ ਕੀ ਹੈ ਕਾਲ ਕੀ ਹੈ ਸਰਬ ਲੋਕ ਕੀ ਹੈ ਸਰਬ ਕਾਲ ਕੀ ਹੈ ਹਾਂ ਸਾਰਾ ਬਰਮ ਗਿਆਨੀ ਗੁਰਬਾਣੀ ਉਹ ਸਾਬਤ ਕਰ ਲੈਣਾ ਵੀ ਗੁਰਬਾਣੀ ਜਿਹਨੇ ਸਮਝ ਲਈ ਉਹ ਚਾਹੇ ਹੋਰ ਭਾਸ਼ਾ ਜੀ ਵੀ ਕੁਝ ਲਿਖੇ ਇਹਨੇ ਲਿਖੂਗਾ ਦੂਜੀ ਭਾਸ਼ਾ ਜੀ ਲਿਖ ਕੇ ਰਖਾਇਆ ਹੋਇਆ ਜਿਹੜੇ ਦੂਏ ਪੰਡਤ ਹੈ ਤੁਸੀਂ ਆ ਗੱਲਾਂ ਕਿਉਂ ਨਹੀਂ ਸੀ ਲਿਖ ਸਕਦੇ ਜੇ ਤੁਹਾਨੂੰ ਵੇਰਦੀ ਸਮਝ ਸੀ ਸ੍ਰੀਮਤੀਆਂ ਸ਼ਾਸਤਰ ਇਸ ਭਾਸ਼ਾ ਜੀ ਕਿਉਂ ਨਹੀਂ ਬਣ ਸਕਦੇ ਸਾਰੇ ਜੇ ਉਹਨਾਂ ਨੂੰ ਸਮਝ ਸੀ ਜਿਹੜਾ ਨੂੰ ਸਮਝਦਾ ਸੀ ਭੇਦ ਜਿਨ੍ਹਾਂ ਨੇ ਸ਼ਾਸਤਰ ਲਿਖੇ ਨੇ ਆ ਆਖ ਕਿਉਂ ਨਹੀਂ ਸੀ ਲਿਖ ਸਕਦੇ ਸ਼ਾਸਤਰ ਗਿਆਨ ਤੇ ਲਿਖ ਕੇ ਦਿਖਾਇ ਰੇ ਉਹ ਕਹਿੰਦੇ ਜੋ ਲਿਖਿਆ ਨਹੀਂ ਸੀ ਜਾ ਸਕਦਾ ਸੰਸਕ੍ਰਿਤ ਤੇ ਫਿਰ ਉਹ ਕਹਿੰਦੇ ਸ਼ਾਸਤਰ ਨਹੀਂ ਬਣਾ ਲਿਖਿਆ ਨਹੀਂ ਜਾ ਸਕਦਾ ਸੰਸਕ੍ਰਿਤ ਤੇ ਫਿਰਾਂ ਲਿਖ ਕੇ ਦਿਖਾਇਆ ਬ੍ਰਹਮ ਗਿਆਨ ਸੋਧ ਦੇ ਸ਼ਾਸਤਰ ਸਗਲ ਸੋਧ ਕੇ ਰੱਖੇ ਪਏ ਨੇ ਉਹ ਭਾਸ਼ਾ ਸੋਧੀ ਤਾਂ ਭਾਸ਼ਾ ਹੀ ਹੁੰਦੀ ਹੈ ਸੋਧੀ ਦਾ ਕੀ ਹੁੰਦਾ ਸੋਦੀ ਦਾ ਅੱਖਰ ਸੋਦੀ ਦੇਣ ਅੱਖਰ ਸੋਧਦੇ ਹਣ ਅੱਖਰ ਸੋਧ ਕੇ ਪਾਸ਼ਾ ਨਵੀ ਬਣਾਤੀ ਸ਼ਬਦ ਸੱਚੀ ਟਕਸਾਲ ਦੇ ਬਣਾ ਦਿੱਤੇ ਸੱਚੀ ਟਕਸਾਲ ਸੋਧਤੀ ਕੜੀਏ ਸ਼ਬਦ ਸੱਚੀ ਸੱਚੀ ਟਕਸਾਲ ਦੇ ਸ਼ਬਦ ਨੇ ਸਾਰੇ ਪਾਸ਼ਾ ਕਿਵੇਂ ਸੋਧਣੀ ਹੈ ਕਿਵੇਂ ਘੜਨੀ ਹੈ ਨਵੇਂ ਲਫ਼ਜ਼ ਕਿਵੇਂ ਘੜਨੇ ਨੇ ਇਹ ਗਾਹ ਉਹ ਦੱਸ ਦਿੱਤਾ ਸ਼ਾਸਨ ਨਾ ਦੇ ਵਿੱਚ ਕਸਾਲ ਵੀ ਦਰ ਤਕਸਾਲ ਲੈ ਜਿਹੜੀ ਹੈ ਸਾਲੀ ਤਕਸਾਲ ਦਾ ਗਿਆਨ ਵੀ ਦਿੱਤਾ ਹੋਇਆ ਦਾ ਸੁਦਰ ਦੇ ਵਿੱਚ ਆਹ ਉਹ ਗ੍ਰੰਥ ਸਵਜਰੀ ਗਿੜੇ ਸਵਜ जरूर ਨਵੇਂ ਬਣਾਏ ਨੇ ਤਕਸਾਲ ਕੀ ਹੁੰਦੀ ਹੈ ਕਿਵੇਂ ਬਣਦੇ ਨੇ ਲਖ ਇਹ ਵੀ ਦੱਸਦੇ ਉੱਥੇ ਜਾ ਕੇ ਆਹ ਲੋਕ ਗਾਂ ਤੇ ਗਾਂ ਬਣੀ ਜਦੋਂ ਆਹ ਵਿਦਵਾਨ ਬਣਾਉਂਦੇ ਰਹੇ ਕਿ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਿਤੇ ਵੇਦ ਵਿਦਿਆ ਕਤੇ ਕਾਵ ਰੂਪ ਕਾਵ ਰੂਪ ਵੀ ਕਪਟਾ ਲਿਖਣੀ ਹੈ ਜਿਹੜੀ ਕਾਵ ਇੱਕ ਕਾਵ ਰੂਪ ਹੈ ਸਾਡੇ ਕੋਲ ਕਾਵ ਰੂਪ ਇਹ ਕਾਵ ਰੂਪ ਦੇ ਵਿੱਚ ਵੇਦ ਵਿਦਿਆ ਵੀ ਹੁੰਦੀ ਹੈ ਜਿਹੜੇ ਵੇਦਾਂ ਦਾ ਅਰਥ ਸਿੱਧਾ ਉਦਾਂ ਲਿਖਣਾ ਜਿਵੇਂ ਸ਼ਾਸਤਰ ਲਿਖੇ ਹੋਏ ਨੇ ਸ਼ਾਸਤਰ ਵੇਦ ਵਿਦਿਆ ਜਿਹੜੀ ਲਿਖੇ ਨਾ ਕਾਵ ਰੂਪ ਜਿਹਨੀ ਹੈ ਸ਼ਾਸਤਰ ਕਥਾ ਕਾਂਢੀ ਦੇ ਵਿੱਚ ਜਿਵੇਂ ਕਥਾ ਕਾਂਢੀ ਲਿਖੀ ਹੋਈ ਜਿਹੜੀ ਉਹ ਦੂਜੀ ਭਾਸ਼ਾ ਚੋ ਤੇ ਨੂੰ ਚੇਸਤਾ ਚਾਰ ਚਿੱਤਰ ਸਰੂਪੰ ਕਉ ਚੇਸਤਾ ਚਾਰ ਚਿੱਤਰ ਸਰੂਪੰ ਕਿਤੇ ਇਹ ਚੇਸਤਾ ਚਿੱਤਰ ਸਰੂਪ ਹੋ ਜਾਣ ਦੀ ਚੇਸਤਾ ਚਾਰ ਚਿੱਤਰ ਸਰੂਪੰ ਯਾਨੀ ਸਰੀਰ ਤੋਂ ਉੱਦ ਆਇਆ ਵੀ ਜੋਤ ਦੇ ਜੋਤ ਸਰੂਪ ਹੋ ਜਾਣ ਦੀ ਚੇਸਤਾ ਹੈ ਅਚਲ ਅਜਾ ਹੋਵੇ ਚਾਰ ਅਚਲ ਚਤਨ ਸਰੂਪ ਦਾ ਜੋਤ ਸਰੂਪ ਹੋ ਕੇ ਰਹਿਣ ਦੀ ਚੇਸਤਾ ਹੈ ਜੋਤ ਸਰੂਪ ਹੋ ਕੇ ਜੀਵਨ ਪਤੀਤ ਕਰਨ ਦੀ ਚੇਸਤਾ ਸੀਤ ਰਹਿੰਦਾ ਹੋਇਆ ਵੀ ਸੀਤ ਤੋਂ ਉੱਤੇ ਉੱਠ ਕੇ ਜਿਉਣ ਦੀ ਇੱਛਾ ਬਰਮ ਕਹੂੰ ਪਰਮ ਪ੍ਰਾਨ ਕੋ ਪਾਰ ਭਾਵੈ ਕਹੂੰ ਪਰਮ ਪ੍ਰਾਨ ਕੋ ਪਾਰ ਪਰਪਰੰਪਰਾ ਇੱਕ ਪ੍ਰਾਣਿਕ ਪਰੰਪਰਾ ਨੇ ਪਰੰਪਰਾ ਨੇ ਉਹਨਾਂ ਦੇ ਲਿਖੇ ਹੋਏ ਪਰੰਪਰਾ ਨੇ ਸਾਡੇ ਗੁਰਬੰਦੀ ਚਾਏ ਹੋਏ ਉਹ ਵੀ ਸਾਖੀਆਂ ਨੇ ਪੋਥੀ ਪ੍ਰਾਣ ਬਾਜੀ ਜਿਹੜੇ ਪੋਥੀ ਚ ਸਾਖੀਆਂ ਹੋਈਆਂ ਨੇ ਗੁਰਬੰਧ ਜੋ ਪਰੰਪਰਾ ਨੇ ਸਾਸ ਕੀ ਦੁਖੀ ਸਸਰ ਕੀ ਪਿਆਰੀ ਜੇਠ ਕੇ ਨਾਮ ਡਰੂਰੇ ਇਹ ਪ੍ਰਾਣ ਸਾਖੀ ਹੈ ਤਰ ਬਰ ਇੱਕ ਅਨੇਕ ਢਾਰ ਸਾਖਾ ਸਮਝ ਜੀ ਇਹ ਸਾਰਾ ਪੁਰਾਣ ਸਾਖੀ ਦੀ ਹੋਈ ਹੈ ਕੂਲੀ ਜਗੜ ਬੰਕਾ ਭਾਈ ਦੋਇਬਰ ਕੋਟ ਤੇਬਰ ਖਾਈ ਇਹ ਸਭ ਸਾਖੀਆਂ ਨੇ ਸਾਖੀ ਬਣਾ ਕੇ ਪ੍ਰਮ ਗਿਆਨ ਸਮਝਾਇਆ ਹੋਇਆ ਇਹਨੂੰ ਪਰਮ ਪੁਰਾਣ ਕਹਿੰਦੇ ਜੀ ਰੋਇਆ RAM ਲਖਾੜਾ ਪਿਆ ਸੀਤਾ ਲਾਸ਼ ਨੂੰ ਪਿਛੜ ਗਿਆ ਰੋਇਆ ਦੈਸਰ ਲੰਕ ਕਵਾਏ ਐਸੀ ਦਰਗਾ ਬਲੇ ਸਜਾਏ ਦੈਸਰ ਲੰਕ ਕਵਾਏ ਰੋਇਆ ਉਹ ਕਦੋਂ ਰੋਇਆ ਉਹ ਤਾਂ ਰੋਇਆ ਹੀ ਨਹੀਂ ਪਹਿਲਾਂ ਤਾਂ ਰੋਇਆ ਹੀ ਨਹੀਂ ਉਹ ਲੰਕ ਕਵਾਏ ਉਹ ਤਾਂ ਤਾਂ ਹੁੰਦਾ ਜੇ ਲੰਕ ਕਵਾਏ ਤੇ ਬਾਝੋਂ ਦਾ ਰਹਿਦਾ ਜਿਉਂਦਾ ਵੀ ਰਹਿੰਦਾ ਜੇ ਮਰ ਗਿਆ ਉਹਨੇ ਕੀ ਰੋਣਾ ਸੀ ਉਹ ਤਾਂ ਮਰੇ ਦੇ ਬਾਅਦ ਲੰਕਾ ਛੱਡੀ ਹੈ ਇਹ ਕਿਸੇ ਹੋਰ 라ਵਣ ਦੀ ਗੱਲ ਕਰ ਰਹੇ ਨੇ ਦੈਸਰ ਦੀ ਐਦੀ ਦਰਗਾਹ ਮਲੇ ਸਜਾ ਫਿਰ ਦਰਗਾਹ ਸਜਾ ਬਣੀ ਜਿਹਨੂੰ ਦਾ ਸਹਾਰਾ ਚੰਦਰੀ ਦੀ ਦਿੱਤੀ ਇਹ ਵਚਨਾ ਸੀ ਇਹ ਗੱਲ ਹੋਰ ਹੈ ਉਹ ਗੱਲ ਹੋਰ ਹੈ ਕਿ ਤੁਹਾਨੂੰ ਪਤਾ ਲੱਗਦਾ ਨਾ ਵੀ ਉਹ ਦਾ ਨਾਂ ਤੇ ਫਿਰ ਦੀ ਗੱਲ ਗੱਲ ਕੀ ਹੋਈ ਫਿਰ ਸਾਡੇ ਕਿਸੇ ਹੋਰ ਆਪਣੀ ਦੀ ਗੱਲ ਹੈ ਗੱਲ ਕੁਝ ਹੋਰ ਹੈ ਇਹ ਜਿਹੜੀ ਗੱਲ ਹੈ ਇਹ ਉਹ ਪੋਥੀ ਪੁਰਾਣਾ ਪਰੰਪਰਾਣਾ ਗੁਰਬਾਣੀ ਜੋ ਆਇਆ ਹੈ ਪਰ ਪ੍ਰਾਣ ਕੋਤੀ ਪ੍ਰਾਣ ਨਹੀਂ ਹੈ ਸਾਡੇ ਆਰਾਮ ਸਭੇ ਘੜਨਾ ਬੁੱਲ ਉਹਨਾਂ ਦਾ ਆਰਾਮ ਹੋਰ ਹੋਊਗਾ ਕੋਈ ਸਾਡੇ ਆਰਾਮ ਨੇ ਸਾਰੀ ਰਚਨਾ ਸਾਧੋ ਰਚਨਾ ਆਰਾਮ ਬਣਾਈ ਉਹਨੇ ਬਣਾਈ ਹੈ ਉਹ ਜਸਰਾਧ ਦਾ ਪੁੱਤਰ ਜਸਰਾਧ ਦੇ ਵਿੱਚੋਂ ਪੈਦਾ ਹੁੰਦਾ ਹੈ ਜਸ ਜਸਨਾਵ ਚੜਾ ਹੈ ਭਵਸਾਗਰ ਤਰ ਗੁਰਬਾਣੀ ਜਸ ਇਹ ਜੋ ਆਰਾਮ ਦਾ ਪਛਾਨ ਹੋੜ ਇਹਦੇ ਵਿੱਚ ਆਰਾਮ ਆਰਾਮ ਕੀ ਅਬਰਮ ਗਿਆਨ ਰਾਉਂਦੀ ਡੈਫੀਨੇਸ਼ਨ ਦਿੰਦੀ ਰਾਜਾ ਆਰਾਮ ਨਾਮ ਉਹ ਰਭ ਗਿਆਨ ਕਬੀਰ ਨੇ ਕਹਤਾ ਫਰਮ ਗਿਆਨ ਨੂੰ ਰਾਜਾ ਰਾਮ ਕਿਹਾ ਹੋਇਆ ਮੇਰਾ ਸਾਡਾ ਰਾਜਾ ਆਰਾਮ ਉਹਦਾ ਫਰਮ ਗਿਆਨ ਆ ਸਾਡਾ ਤਾਂ ਉਹ ਇਹਦੇ ਵਿੱਚ ਹੈ ਗੁਰਬਾਨੀ 'ਚ ਗੁਰਬਾਨੀ ਜਿਹੜਾ ਨਾਮ ਸੁਆਇਆ ਹੋਇਆ ਉਹ ਹੋਈ ਰਾਜਾ ਰਾਮ ਸਾਡਾ ਉਹਨਾਂ ਦਾ ਕੋਈ ਹੋਰ ਹੋਊਗਾ ਅਸੀਂ ਕੀ ਲੈਣ ਕੋਈ ਕਿਸੇ ਨੂੰ ਬਣਾ ਲਵੇ ਉਹ ਆਪਣਾ ਪ੍ਰਾਨਾ ਕਿਉਂਕਿ ਜੇ ਉਹਨਾਂ ਨੂੰ ਸਮਝ ਹੁੰਦੀ ਆ ਪ੍ਰਾਣ ਬਰਵਰਦੀ ਲੋੜੀ ਸੀ ਸਭਪਰ ਤਾਂ ਬੇਦ ਪ੍ਰਾਣ ਪੁਕਾਰ ਨਾ ਪੋਥੀਆਂ ਨਾ ਸਭ ਕੂੜ ਗਾਲੀ ਹੋਈ ਉਹ ਲਿਖਤਾ ਦਿੱਤਾ ਸੀ ਵੀ ਕੂੜ ਹੈ ਤੇ ਜੇ ਦੁਬਾਰਾ ਰਾਮ ਵਾਰ ਉਹਨਾਂ ਦੀ ਗੱਲ ਕੀਤੀ ਹੈ ਤਾਂ ਇਥੇ ਸੱਚ ਦੀ ਕੀਤੀ ਹੈ ਕੂੜ ਦੀ ਨਹੀਂ ਕੀਤੀ ਸਾਡੇ ਹੋਰ ਗੱਲ ਅਸਲੀ ਗੱਲ ਕੀਤੀ ਹੈ ਉਥੇ ਨਕਲੀ ਸੀ ਕੋਈ ਇਹ ਅਸਲੀ ਨਕਲੀ ਇਹ ਉਹਨਾਂ ਨੂੰ ਵਿਦਵਾਨ ਨੂੰ ਕੀ ਸਮਝਾ ਵੀ ਕੀ ਗੱਲ ਹੈ ਸਾ ਲਈਏ 10 ਵੀ ਦਿੱਤੀ ਵੀ ਸੱਚ ਆ ਸੀ ਕੂੜ ਹੋ ਕਰਿਸ਼ਨਾ ਅਵਤਾਰ ਵੀ ਲਿਖ ਦਿੱਤਾ ਸਾਰੀ ਗੱਲ ਵੀ ਬਦਲ ਕੇ ਲਿਖ ਦਿੱਤੀ ਕਹੂੰ ਬੈਠ ਕੇ ਕੁਰਾਨ ਦੇ ਗੀਤ ਗਾਉਂਦੇ ਨੇ ਕੁਰਾਨ ਦੇ ਵਿੱਚ ਵੀ ਲਿਖੇ ਹੋਏ ਕਹੂੰ ਸ਼ੁੱਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਸ਼ੁੱਧ ਸੇਖ ਕਹਿੰਦੇ ਬਿਲਕੁਲ ਸ਼ੁੱਧ ਸੇਖ ਸ਼ੋਤੋ ਮੁਸਲਮਾਨ ਕਿਤੇ ਬ੍ਰਾਹਮਣ ਧਰਮ ਨਾਲ ਜੁੜਿਆ ਆ ਕਹੂੰ ਬ੍ਰਹਮ ਧਰਮ ਮੰਗ ਕਿਤੇ ਬ੍ਰਾਹਮਣ ਹੈ ਧਰਮ ਕਾ ਬ੍ਰਾਹਮਣ ਧਰਮ ਨਾਲ ਜੁੜਿਆ ਹੋਇਆ ਕਹੂੰ ਅਵਸਥਾ ਕਹੂੰ ਕਿਤੇ વૃਦ ਬਜ਼ੁਰਗੀ ਕੰਮ ਕਰਦਾ ਉਪਦੇਸ਼ ਕਰ ਰਿਹਾ ਕਿਤੇ ਜੋ ਬਾਲ ਕਰਮ ਕਰ ਰਿਹਾ ਬੱਚਿਆਂ ਵਾਲੇ ਕੰਮ ਜੋ ਪੜ ਰਹੇ ਧਰਮ ਮੁਸਲਮਾਨਾ ਜੀ ਵੀ ਹੈ ਹਿਦੂਆ ਜੀ ਵੀ ਹੈ ਸਿੱਖਾ ਜੀ ਵੀ ਹੈ ਉਦਾਈਆ ਤਾਂ ਕਹੂੰ ਜੁਆਸ ਰੂਪੰ ਜਰਾ ਰਹਿਤ ਦੇਹੰ ਕਿਤੇ ਜੁਆਸ ਰੂਪ ਹੈ ਜੋ ਜਵਾਲੀ ਹੈ ਦੇਹੀ ਨੂੰ ਜਰਾ ਰੋਗ ਵੀ ਹੈ ਨਹੀਂ ਜਰਾ ਰਹਿਤ ਦੇਹੰ ਦੇਹੀ ਬਿਲਕੁਲ ਵੀ ਜਰਾ ਰੋਗ ਨਹੀਂ ਹੈ ਜਰਾ ਰੋਗ ਦਾ ਨਿਸ਼ਾਨ ਨਹੀਂ ਹੈ ਜਿਹੜਾ ਜਰਾ ਰੋਗ ਹੁੰਦਾ ਝੂਡ ਨੂਦ ਸੱਚ ਨੂੰ ਨਹੀਂ ਹੁੰਦਾ ਸੱਚ ਦਾ ਗਿਆਨ ਹੈ ਉਹ ਜਰਾ ਰੋਗ ਨਹੀਂ ਹੁੰਦਾ ਕਹੂੰ ਨਾ ਦੇਹੂੰ ਕਹੂੰ ਤਿਆਗ ਗ੍ਰਹਿਣ ਕਹੂ ਰੇ ਗਏ ਕਹੂੰ ਨਾ ਦੇਹੂੰ ਕਿਤੇ ਦੇਹ ਦਾ ਕਿ ਇਹ ਦੇਹ ਹੈ ਤਾ ਗੇ ਨੂੰ ਕਿਤੇ ਸਰੀਰ ਦਾ ਬੋਹ ਹੈ ਕਹੂੰ ਤਿਆਗ ਗ੍ਰਹਿਣ ਕਿਤੇ ਤਿਆਗ ਹੈ ਸਰੀਰ ਦਾ ਕਹੂੰ ਜੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਰਾਗੰ ਕਹੂੰ ਜੋਗ ਭੋਗੰ ਕਿਤੇ ਜੋਗ ਜਿਹੜਾ ਜੋਗ ਹੈ ਜੋਗ ਜਿਹੜਾ ਕਿ ਤੇ ਉਹ ਖਰਾ ਖਾ ਰਿਹਾ ਕਹੂੰ ਤੇ ਪ੍ਰਮ ਗਿਆਨੀ ਖਰਾ ਖਾ ਰਿਹਾ ਪ੍ਰਮ ਗਿਆਨ ਪ੍ਰਮ ਗਿਆਨੀ ਦਾ ਭੋਜਨ ਗਿਆਨ ਹੈ ਨਾ ਇਹ ਜੋਗ ਦਾ ਭੋਗ ਹੈ ਜੁੜਨ ਵਾਸਤੇ ਉਹ ਖਰਾ ਕੀ ਹੈ ਗਿਆਨ ਭੋਜਨ ਹਾਂਜੀ ਕਹੂੰ ਰੋਗ ਰਾਗੰ ਕਹੋ ਰਾਗ ਤੋਂ ਰੋਗੀ ਹੋਇਆ ਬੈਠਾ ਕਿਤੇ ਰਾਗ ਨੇ ਰੋਗੀ ਬਣਾਤਾ ਰਾਗ ਦੇ ਰਾਗ ਦੇ ਰੋਗ ਤੋਂ ਗਰਸਦਾ ਇਹ ਰਾਗ ਦੇ ਰੋਗ ਤੋਂ ਗਰਸਦਾ ਅਦਰਸ਼ਨ ਦਾ ਰਾਗ ਦਾ ਹੀ ਰੋਗ ਤੋਂ ਖਰਾਸ ਹੋਇਆ ਹੋਇਆ ਤਾਂ ਬੋਲਦਾ ਇਹ ਛੇ ਤਾਂ ਹੀ ਖਲਾਫ ਹੋਵੇ ਵੀ ਦਰੂਗਲਾ ਦਸਵੰਗਨ ਤੇ ਰਾਗੀਆਂ ਤੋਂ ਖਲਾਫ ਐਸਲ ਚ ਇਹ ਤਾਂ ਨਾ ਖਲਾਫ ਹੋਵੇ ਕਿਤੇ ਇਹਦਾ ਰਾਗੀਆਂ ਨੂੰ ਰੋਗੀ ਕਹਿੰਦਾ ਤਾਂ ਉਹ ਖਰਾਫ ਹੈ ਤੇ ਉਹ ਐਡਾ ਬੜਾ ਰਾਗੀ ਇਹ ਕਹਿੰਦਾ ਉਹ ਰੋਗੀ ਹੈ ਇਹ ਕਹਿੰਦਾ ਇਹ ਅਸੀਂ ਬੰਦੇ ਦਸ ਪਾਸ਼ਾ ਦੇ ਨਹੀਂ ਲਿਖਿਆ ਹੋਇਆ ਜੇ ਜੇ ਇਹਨੂੰ ਆਂਦਾ ਫਿਰ ਉਹ ਰਾਗ ਨਹੀਂ ਕਰ ਸਕਦਾ ਉਹਨੇ ਉਹ ਛੱਡਣ ਦੀ ਬਜਾ ਨਾ ਸਭ ਨਾਲ ਉੱਥੋਂ ਦਾ ਰੋਟੀ ਖਾਦੀ ਹੈ ਹੁਣ ਰਾਗ ਕਰਕੇ ਤਾਂ ਉਹਦੀ ਮਾਨਤਾ ਹੈ ਉਹਨੂੰ ਆਪਣਾ ਅਦਾਰਾ ਹੋਰ ਗੱਲ ਕੁਛ ਦੀ ਹੈ ਉਹ ਕੀ ਆ ਰੋਗ ਹੈ ਉਹਦਾ ਰਾਗ ਨੂੰ ਰੋਗ ਬਣਿਆ ਹੋਇਆ ਇੱਥੇ ਹਾਂ ਉਹ ਰੋਗ ਰਹਤਾ ਕਹੂੰ ਭੋਗ ਥਿਆ ਕੰਮ ਕਿਤੇ ਰੋਗ ਦੋਰਾ ਹੈ ਤੋਇਆ ਹੈ ਭੋਗ ਦਾ ਤਿਆਗ ਹੈ ਖਾਣ ਦੀ ਜਿਹੜਾ ਰੋਗ ਦਾ ਤਿਆਗ ਹੈ ਜਿੱਥੇ ਜੇ ਰੋਗ ਹੈ ਨਹੀਂ ਤੋ ਦਵਾਈ ਕੀ ਖਣੀ ਦਵਾਈ ਖਾਣ ਦਾ ਲੋੜ ਉਦੋਂ ਤੱਕ ਰੋਗ ਹੈਗਾ ਰੋਗ ਰਹੇ ਤਾਂ ਉਹ ਦਵਾਈ ਦਾ ਤਿਆਗ ਹੈ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਿਤੇ ਰਾਜ ਸਾਜ ਦੇ ਸਿਹਤ ਹੈ ਕਿ ਰਾਜ ਦੀ ਰੀਤ ਅਨੁਸਾਰ ਚੱਲ ਰਿਹਾ ਰਾਜ ਸਹਿਤ ਹੈ ਟਿਕਿਆ ਹੋਇਆ ਬੁਲ ਟਿਕਿਆ ਹੋਇਆ ਥੇਰੇ ਬੋਲੂ ਮਨ ਫੇ ਰਾਜ ਹੁੰਦਾ ਉਹ ਰਾਜ ਸਾਜੰ ਕਹੂੰ ਰਾਜ ਰੀਤਨ ਅਜਾ ਰਾਜ ਦੀ ਰੀਤੀ ਪੜ ਰਿਹਾ ਵੀ ਬੁਲ ਟਕਾਵਾ ਕੇ ਮੇ ਇਹ ਰੀਤੀ ਐ ਨੀਤੀ ਦੀ ਦੇਖੋ ਇੱਕ ਨੀਤੀ ਹੁੰਦੀ ਖਰੀਤੀ ਹੁੰਦੀ ਰਾਜ ਹੋਰ ਚੀਜ਼ ਐ ਰਾਜ ਹੋਰ ਚੀਜ਼ ਰੀਤੀ ਕੋਰ ਕਿਹੜੇ ਵਿਧੀ ਨਾਲ ਲਿਖੂਗਾ ਯਾਰ ਆਜ ਰੀਤੀ ਹੈ ਰਾਜਨੀਤੀ ਨਹੀਂ ਹੈ ਰਾਜਨੀਤੀ ਨੂੰ ਤਾਂ ਕੋਣਾ ਕੁਝ ਰਾਜ ਰੀਤੀਏ ਪ੍ਰਾਪਤ ਕਰਨ ਨੂੰ ਆਪਣੇ ਆਪ ਤੋਂ ਪ੍ਰਾਪਤ ਕਰਨ ਇਹ ਆਪਣੇ ਆਪ ਤੋਂ ਹੀ ਪ੍ਰਾਪਤ ਕਰਨਾ ਬਾਹਰੋਂ ਕੁਝ ਨਹੀਂ ਪ੍ਰਾਪਤ ਕਰਨਾ ਉਹ ਕਿਸੇ ਤੋਂ ਕੋਣਾ ਇਹ ਆਪਣੇ ਆਪ ਦੇ ਅੰਦਰੋਂ ਪ੍ਰਗਟ ਕਰਨਾ ਅੰਮ੍ਰਿਤ ਜੋ ਪਾਈ ਹੈ ਇਹ ਆਪਸ ਤੋਂ ਪੜੂਏ ਹੈ ਇੱਕ ਨਹੀਂ ਦਾਤ ਆਪਸ ਦੇ ਜੋ ਪਾਈ ਹੈ ਇਹ ਦਾਤ ਉਹ ਹੈ ਜਿਹੜੀ ਆਪਸ ਵਿੱਚ ਅਤਲੀ ਪਰ ਘਟੋਲ ਲੈ ਜਾਂਦੇ ਨਾਲ ਕਸਾ ਕਰ ਮਾਤ ਸਾਇਬ ਪੂਰਨ ਪ੍ਰਗਿਆ ਕਹੂ ਪਰਮਪ੍ਰੀਤਨ ਕਿਤੇ ਪੂਰਨ ਪ੍ਰਗਿਆ ਪੂਰਨ ਪ੍ਰਮ ਗਿਆਨੀ ਹੈ ਆ ਪਰਮਪ੍ਰੀਤਨ ਹੈ ਕਿਤੇ ਜੋ ਪ੍ਰੀਤ ਹੋਈ ਹੈ ਪ੍ਰੀਤ ਤਾਂ ਪੂਰੀ ਐ ਅੰਦਰ ਪ੍ਰੇਮ ਤਾਂ ਪੂਰਾ ਐ ਅਜੋ ਮੰਜਲ ਤੇ ਨਹੀਂ ਪਹੁੰਚਿਆ ਕਿਤੇ ਪਹੁੰਚਿਆ ਹੋਇਆ ਕਿਤੇ ਜੋ ਮੰਜ਼ਲ ਤੋਂ ਬਾਅਦ ਤੋਂ ਰਾਹ ਦੇ ਵਿੱਚ ਐ ਪ੍ਰੀਤ ਪੂਰੀ ਕੋਈ ਪਹੁੰਚ ਗਿਆ ਫਰਕ ਥੋੜਾ ਹੀ ਐ ਹਾਂ ਕਹੂੰ ਆਰਬੀ ਤੋਰ ਹੋ ਕਿਤੇ ਆਰਬੀ ਹੋ ਅਰਬ ਦੇਸ਼ ਦੇ ਉੱਥੇ ਵੀ ਤਾਂ ਪਹੁੰਚਾਂਗੇ ਨਹੀਂ ਬਈ ਸਾਰੇ ਹੀ ਨਹੀਂ ਆਦਮੀ ਪ੍ਰਮਾਤਮਾ ਨੂੰ ਬਨਣਾ ਸਾਰੇ ਨਹੀਂ ਕਿਤੇ ਅਰਬ ਦੇਸ਼ ਤਾਂ ਤੂੰ トルキトルキアトルキスタン ਦੇ 파르ਸੀ ਹੋ ਕਿਤੇ 파르ਸੀ ਹੈ 파르ਸੀ ਖਾੜੀ ਦੇ ਨਿਵਾਸੀ ਉੱਥੇ ਵੀ ਆਦਮੀ ਨੇ ਬਈ ਪਰਮਾਤਮਾ ਖੁਦਾ ਵਾਲੂ ਸਾਰੇ ਜਾ ਰਹੇ ਨੇ ਇਹ ਨਹੀਂ ਵੀ ਇੱਥੋਂ ਸਾਰਿਆਂ ਦੇ ਵਿੱਚ ਹੀ ਚੰਗੇ ਆਦਮੀ ਹੈਗੇ ਨੇ ਧਰਮਕਾਤ ਨਹੀਂ ਸਾਰੀ ਦੁਨੀਆ ਰਾਂਦੇ ਲੋਕ ਨਾਲ ਜਿਹੜੇ ਉਹ ਬੋਲੀ ਹੈ ਉੱਥੇ ਦੀ ਉਹ ਬੋਲੀ ਦੇ ਵਿੱਚ ਹੀ ਮਤਲਬ ਹੈ ਉਹਨਾਂ ਨੇ ਗਿਆਨ ਸਬਜਟ ਰਿਹਾ ਹਾਂ ਗਾਨੋਸੇ ਬੋਲੀ ਚ ਹੈ ਉਹਨਾਂ ਦਾ ਉਹ ਜੀ ਪਸ਼ਤਵੀ ਪੈਤੋ ਅਫਗਾਨਿਸਤਾਨੀ ਦੇ ਪਸ਼ਤੋ ਪਸ਼ਤੀ ਦੇ ਵਿੱਚ ਵੀ ਗਿਆਨ ਸੰਸਕ੍ਰਿਤੀ ਉਹ ਕਰਿਆ ਦੋ ਸਾਡੀ ਸੰਸਕ੍ਰਿਤੀ ਵਾਲਾ ਸੰਸਕ੍ਰਿਤ ਸੰਸਕ੍ਰਿਤ ਪੜ੍ਹ ਸਮਝ ਕੇ ਉਹਦੇ ਨੂੰ ਜਾ ਕਹੂੰ ਦੇਸ਼ ਭਾਖਿਆ ਕਹੂੰ ਬਾਣੀ ਕੋ ਦੇਸ ਭਾਖਾ ਕਿਤੇ ਦੇ ਦੇਸ ਭਾਖਿਆ ਕਿਤੇ ਦੇ ਬਾਨੀ ਦੇਸ ਭਾਖਾ ਕੀ ਹੈ ਦੇਸ ਭਾਖਾ ਜੀ ਆਪ ਸੰਸਾਰ ਸੰਸਾਰੀ ਬੋਲੀ ਬਰ ਮੁਖਾ ਦੀ ਬੋਲੀ ਉਹ ਕੁ ਭੀ ਮਨ ਭਾਉ ਦੇਸ ਭਾਖਿਆ ਕਹੂੰ ਦੇ ਬਾਨੀ ਦੇ ਬਾਨੀ ਅੰਤਰਾਧਵਾਂ ਦੀ ਆਵਾਜ਼ ਹੈ ਕਿਤੇ ਅੰਤਰਾਧਵਾਂ ਦੀ ਆਵਾਜ਼ ਨਾਲ ਜੁੜਿਆ ਹੈ ਕਿਤੇ ਸੰਸਾਰ ਦੀ ਆਵਾਜ਼ ਨਾਲ ਜੁੜਿਆ ਹੈ ਸੰਸਾਰ ਦੇ ਆਵਾਜ਼ ਨਾਲ ਆ ਜਿਹੜੀ ਹੈ ਨਾ ਉਹ ਮੁੰਡੇ ਜੀ ਉਹ ਨਸ਼ਾ ਖਾਂਦੇ ਨੇ ਇਹ ਦੇਸ਼ ਭਾਗ ਹੈ ਇਹ ਬੇਵਿਵਹੜੀ ਨਹੀਂ ਹੈ ਬੇਵਿਵਹੜੀ ਨਹੀਂ ਹੈ ਉਤਰ ਆਦਮਾਨੀ ਵਾਇਜ਼ ਨਹੀਂ ਹੈ ਇਹ ਲੋਕ ਤਾਂ ਇਹਦਾ ਜੀ ਦੂਏ ਦਾ ਸਮਾਂ ਲੈ ਆਪਣਾ ਕੀ ਸਮਾਂ ਲੈ ਖਬਰਾਂ ਸਮਾਂ ਰਿਆ ਹੋਰੇ ਬਾੜ ਲੈ ਦੂਏ ਦਾ ਕੀ ਪਤਾ ਵਿਗਾੜ ਰਹੇ ਸਮਾਂ ਲੈ ਇਹ ਦੇਸ਼ ਭਾਗ ਹੈ ਸਭ ਤੋਂ ਘਾਗੋ ਦੇਸ਼ ਭਾਗ ਹੈ ਦੋਈ ਬਾਣੀ ਨਹੀਂ ਹੈ ਨਾ ਉਤਰਾਟ ਦੀ ਆਵਾਜ਼ ਨਾਲ ਕੋਈ ਨਹੀਂ ਜੁੜਿਆ ਹੋਇਆ ਸਭ ਦੇਸ਼ ਪੱਖੇ ਬਾਹਰ ਮੁਖੀ ਗੱਲਾਂ ਨੇ ਸਾਰੀਆਂ ਦੱਤਾ ਪਿੰਡ ਤਲ ਦਾ ਲਾਜੋ ਫਲਾਣਾ ਟਿੱਪਾ ਬਹਾਲਣੇ ਰੌਲਾ ਬਗੜਾ ਸਭ ਦੇਸ਼ ਪੱਖੇ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਰਾਜ ਵਿਦਿਆ ਰਾਜ ਵਿਦਿਆ ਕੀ ਹੈ ਅਗੁਰਮਤ ਰਾਜ ਵਿਦਿਆ ਹੈ ਇਹ ਵਿਦਿਆ ਪੜ੍ਹ ਕੇ ਰਾਜ ਕਰਨ ਆਪਣਾ ਰਾਜ ਨੂੰ ਪ੍ਰਾਪਤ ਕਰਨ ਕੋ ਰਾਜਧਾਨੀ ਦੇ ਕੋ ਰਾਜਧਾਨੀ ਕਿਹਾ ਹੋਇਆ ਰਾਜਧਾਨੀ ਉਹ ਬਣ ਗਿਆ ਜਿੱਥੇ ਸਚਖੰਡ ਨਿਵਾਸੀ ਹੋ ਗਿਆ ਸਚਖੰਡ ਵਸੇ ਨਿਰੰਕਾਰ ਨਿਰাকার ਨਿਰੰਕਾਰ ਅਸਲ ਵਸਦਾ ਉਹ ਸਚਖੰਡ ਹੈ ਸਚਖੰਡ ਕੋਈ ਵੱਖਰਾ ਥੁਖਰੀ ਇੱਥੇ ਨਿਰੰਕਾਰ ਵਸਦਾ ਜਿੱਥੇ ਨਿਰੰਕਾਰ ਵਸਦਾ ਉਹਦਾ ਨਾਮ ਸਚਖੰਡ ਹੈ ਉਹ ਰਾਜਧਾਨੀ ਨਿਰੰਕਾਰ ਹੈ ਰਾਜਧਾਨੀ ਹੈ ਜਦ ਇਹ ਨੰਕਾਰ ਹੋ ਗਿਆ ਫੇ ਰਾਜਤਾਲੀ ਬਣ ਗਿਆ ਸਾਡੇ ਤਾਂ ਇੱਥੇ ਰਾਜਤਾਲੀ ਜਾ ਕੇ ਬਹਿਂਦੇ ਨੇ ਲੋ ਜਿੱਤੇ ਇਹ ਬੈਠਾ ਹੋ ਰਾਜਤਾਲੀ ਇਹਦੇ ਹਿਰਦੇ 'ਚ ਬੈਠਾ ਹਿਰਦੇ ਰਾਜਤਾਲੀ ਬਣ ਗਿਆ ਕਿੱਦਾਂ ਇਹ ਤਖਤ ਬਣ ਗਿਆ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰਣ ਮੰਤਰ ਵਿਦਿਆ ਕਹੂੰ ਮੰਤਰ ਵਿਦਿਆ ਐਸੀ ਵਿਦਿਆ ਹੈ ਜਿਹਦੇ ਨਾਲ ਮਨ ਤਰੇ ਮਾਰਾ ਆਇਆ ਤਾਂ ਉੱਪਰ ਉੱਠੇ ਉਹ ਹੀ ਦੇਖੋ ਬੰਤਰ ਬਿਧਿਆ ਕੀ ਅਜੂਰੀ ਗੁਰਬਾਣੀ ਹੈ ਇਹ ਬੰਤਰ ਬੰਖਣ ਕੀ ਜਿਹੜੀ ਬਾਣੀ ਹੁੰਦੀ ਹੈ ਇਹ ਸਾਰੀ ਬੰਤਰੇ ਹੁੰਦੀ ਹੈ ਗੁਰਬਾਣੀ ਸਾਰੀ ਮੰਤਰ ਹੈ ਜਿਹੜਾ ਮੰਤਰੇ ਉੱਪਰ ਨੂੰ ਆਵੇ ਮਾਇਆ ਤੋਂ ਪਰੇ ਹੋਵੇ ਛੱਡੇ ਮਾਇਆ ਜਿ ਫਸਾਉਣ ਵਾਲਾ ਬੰਤਰ ਨਹੀਂ ਹੁੰਦਾ ਮਾਇਆ ਜਿਹੜਾ ਮੰਤਰੇ ਕਹੂੰ ਤੰਤਰ ਸਾਰੰ ਕਉ ਤੰਤਰ ਸਾਰੰ ਕਉ ਤੰਤਰ ਸਾਰ ਰੂਪ ਤੰਤਰ ਹੈ ਕਹੂ ਜੰਤਰ ਰੀਤੰ ਕਹੂ ਸ਼ਾਸਤਰ ਧਾਰੰ ਹੈ ਜੰਤਰ ਕਿਵੇਂ ਬਣਾਈਦਾ ਜੰਤਰ ਕੀ ਹੁੰਦਾ ਇਹਦੀ ਰੀਤ ਹੈ ਕਹੂ ਤੰਤਰ ਕਹੂ ਸ਼ਾਸਤਰ ਧਾਰੰ ਸ਼ਾਸਤਰਾਂ ਦੀ ਧਾਰ ਹੈ ਸ਼ਾਸਤਰਾਂ ਦੀ ਧਾਰ ਕਹੂ ਪੂਜਾ ਕਹੂ ਵਰਚਾ ਕਹੂ ਘਰੋਂ ਪੂਜਾ ਕਹੂੰ ਦੇਵਰਚਾ ਇਹ ਤਾਂ ਬਹੁਤ ਹੋ ਗਿਆ ਫਿਰ ਤਾਂ